ਬੈਰਣ ਜੀ ਹਿੱਸੇ ਨੇ ਕਿਹਾ ਮੈਂ ਖਲਾ ਹੁਣੇ ਲੱਭਦੇ ਆਂ ਕੱਲ ਦੇ ਲੱਗੇ ਹੋਇਆ ਹੁਣ ਹੱਥ ਆਈ ਹੈ ਅੱਜ ਦੀ ਲੋਕ ਸੱਤ ਦੇ ਵਿੱਚ ਇਹੋ ਕਰਨਾ ਗੱਲਾਂ ਬਾਤਾਂ ਗੀਤ ਸੰਗੀਤ ਸੁਣਗਦੇ ਮਸਲੇ ਤੇ ਗੱਲਬਾਤ ਹੋਣੀ ਹੈ ਪਹਿਲੇ ਹਿੱਸੇ ਦੇ ਵਿੱਚ ਤੁਹਾਡੇ ਖਬਰਾਂ ਸਨਮੁਖ ਕਰਾਂਗੇ ਇੱਕ ਗੀਤ ਤੇ ਨਾਲ ਸਨੇਹਾ ਦੇਣ ਲਈ ਸ਼ੁਕਲਾ ਜੀ ਨੇ ਆਉਣਾ ਤੇ ਉਹੂਜਾ ਜੀ ਨੇ ਵੀ ਆਉਣਾ ਦੋਨਾਂ ਨੇ ਆਉਣਾ ਤੇ ਗੱਲਬਾਤ ਦੱਸ ਕੇ ਜਾਣਗੇ ਇੱਕ ਤਾਂ ਲੋੜੀ ਬੰਪਰ ਦੀ ਤੇ ਦੂਜੇ ਬੰਨੇਓ ਆਸਟ੍ਰੇਲੀਆ ਦਾ ਢੇਡਾ ਮਾਰ ਕੇ ਆਨੇ ਸ਼ੁਕਲਾ ਜੀ ਆਸਟ੍ਰੇਲੀਆ ਦੇ ਆਪਣੇ ਸੁਣਨ ਵਾਲਿਆਂ ਦੀ ਉਹ ਫਤ ਤੇ ਬੁਲਾਉਣੀ ਚਾਹੁੰਦੇ ਆ ਕਿਹੋ ਜਿਹਾ ਉੱਥੇ ਮਾਹੌਲ ਹੈ ਕਿਹੋ ਜਿਹਾ ਉਹਨਾਂ ਦਾ ਸਫ਼ਰ ਉਹ ਦੱਸ ਕੇ ਜਾਣਗੇ ਅਗਲੇ ਹਿੱਸੇ 'ਚ 12 ਤੋਂ 1 ਵਜੇ ਤੱਕ ਖਬਰਾਂ ਦੇ ਨਾਲ ਨਾਲ ਜਾਇਦਾਦ ਦੇ ਮੁਲਾਂਕਣ ਬਾਰੇ ਗੱਲ ਜਿਹੜੀ ਸਿਟੀ ਅਫਸਰੀ ਤੋਂ ਮੈਨੂੰ ਪਤਾ ਲੱਗਿਆ ਉਸ ਗੱਲਬਾਤ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਟੌਮ ਗਿਲ ਸ਼ਾਮਲ ਹੋਵੇ ਉਹਨਾਂ ਨੇ ਕਿਹਾ ਕਿ ਕਾਉਂਸਲਰ ਟੌਮ ਗਿਲ ਨਾਲ ਆਉਣਗੇ ਮੇਰੇ ਦੱਸਣਗੇ ਕਿ ਵਧੀਆਂ ਹੋਈਆਂ ਅਸੈਸਮੈਂਟ ਦਾ ਕਿੰਨਾ ਕੁ ਇਫੈਕਟ ਪੈਣਾ ਤੁਹਾਡੇ ਪ੍ਰਾਪਰਟੀ ਟੈਕਸ ਤੇ ਗੱਲ ਮੈਨੂੰ ਲੱਗਦਾ ਥੇਹ ਪੈ ਜਾਣੀ ਹੈ ਚੇਂਜ.org ਤੇ ਪਟੀਸ਼ਨ ਇੱਕ ਚੱਲ ਰਹੀ ਆ ਉਹਦਾ ਬੇਸ ਨਹੀਂ ਮੈਨੂੰ ਲੱਭਿਆ ਹਾਲੇ ਵੀ ਕਰਨ ਤੋਂ ਪਹਿਲਾਂ ਵੇਖਿਆ ਕਰੀਏ ਕਿ ਉਹ ਕੀ ਹੈ origin ਕੀ ਹੈ ਕਿਉਂਕਿ ਉੱਥੇ ਤੁਹਾਡਾ ਐਡਰੈਸ ਵਗੈਰਾ ਜਾਣਾ ਥੋੜਾ ਜਿਹਾ ਖਿਆਲ ਨਾਲ ਆਪਾਂ ਚੱਲੀਏ ਬੜੀ ਸੰਸਨੀਖੇਜ ਖਬਰ ਹੈ ਚੀਨ ਦੇ ਜਿੰਨੇ ਵੀ ਲੋਕ ਨੇ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 YouTube ਤੇ ਪੈਸੇ ਵੀ ਬਣ ਜਾਂਦੇ ਆ ਅੱਜਕੱਲ। 1844247 1550 ਇਹ ਨੰਬਰ ਹੈ 1844247 1550 ਵਾਹਿਤ ਮਾਨ ਯਾਰਬਾਰ ਬਤਵੀਨ ਅਰਬ ਸਬਾ ਵਾਹਿਦ ਖਮ ਸਖਮ ਸ ਸਿੱਖ ਹਦਕ ਅਰਬੀ erpradio.com ਤੇ ਸਿੱਧਾ ਪ੍ਰਸਾਰਣ ਤੁਸੀਂ ਸੁਣਦੇ ਹੋ ਤੇ ਨਾਲ ਐਪ ਡਾਊਨਲੋਡ ਕਰ ਸਕਦੇ ਹੋ ਤੇ ਹਰਜੀਤ ਸਿੰਘ ਗਿੱਲ ਦੀ Facebook ਦਾ ਪੇਜ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 बोलਦੇ ਆ ਬਾਪੂ ਦੇ ਹੱਥ ਚ ਖੁੰਡਾ ਫੜਿਆ ਤੇ ਉਹ ਗੱਲਾਂ ਦੱਸਦਾ ਹੈ ਸ਼ਹੀਦ ਖਤਵੰਦ ਸਿੰਘ ਦੇ ਵਿਆਹ ਦੀਆਂ ਜਦੋਂ ਪਹਿਲਾਂ ਸਰਦਾਦੀ ਨੂੰ ਵੇਖਣ ਗਿਆ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਏ ਤੇ ਫਿਰ ਜਦੋਂ ਕਹਿੰਦੇ ਕਹਿੰਦੇ ਮੈਂ ਕਿਹਾ ਵੀ ਤੂੰ ਨਾਂ ਪੰਗਾ ਪਾ ਲਈ ਕੋਈ ਇਹ ਔਖਾ ਕੰਮ ਐ ਇਹ ਕਈ ਵਾਰ ਚੱਲਦੀ ਹੈ ਨਹੀਂ ਉਹ ਕਹਿੰਦਾ ਨਾਂ ਬਾਪੂ ਜੇ ਨਾਂ ਚੱਲੀ ਹੱਥ ਵੇਖ ਲੈ ਫੁੱਟ ਫੁੱਟਦੇ ਆ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 ਉਹ ਕਹਿੰਦਾ ਤੁਹਾਨੂੰ ਕਰਦਿਆਂ ਨੂੰ ਸੰਗ ਨਹੀਂ ਆਈ ਨੇ ਕਿਸੇ ਨੇ ਕਰਨੀ ਹੁੰਦੀ ਐ ਕਿਸੇ ਦੇ ਹੱਥ ਆਉਂਦੀ ਐ ਕਹਾਣੀ ਜਿਹੜੇ ਸਾਡੇ ਕੌਮ ਦੇ ਇਹ ਸ਼ਹੀਦ ਨੇ ਚਾਹੇ ਉਹ ਜਿਹੜੀ ਵੀ ਸਦੀ ਦੇ ਮਰਜੀ ਨੇ ਉਹਨਾਂ ਦੀ ਗੱਲ ਹੋਣੀ ਐ ਔਰ ਕਰਾਂਗੇ 1844 247 1550 ਉਹਨੇ ਨੰਬਰ ਹੈ YouTube ਤੇ L O K S A D W T ਲੋਕ ਸੱਤ ਤੇ ਸਾਰੇ ਸ਼ੋਪ ਐਨੇ ਇਹ ਵੰਦੇ ਦਾ ਧੰਨਵਾਦ ਹੈ ਲਗਰੇ ਕੱਚੀਏ ਲਾਲ ਕਰੂੰਬਲ ਗੰਦਲੇ ਸੌਫ ਦੀਏ ਤੇਰਾ ਸੋਹਜ ਕਰਿੰਦਾ ਸਰਦਾਰੀ ਤੇਰੀ ਚੁੰਨੀ ਤੇੋਂ ਲਾਲ ਲਕੀਰਾਂ ਵੱਜੀਆਂ ਨੇ ਬਈ ਜੀਕਣ ਮੂਗ ਦੇ ਫੁੱਲਾਂ ਉੱਤੇ ਧਾਰੀ ਤੇਰੀ ਸੇਲੀ ਤਾਂ ਜੋ ਡਾਰ ਹੋਵੇ ਕੋਈ ਚਿੜੀਆਂ ਦੀ ਜਿਹੜੀ ਪਛੋਂ ਦੇ ਵੱਲ ਉੱਡ ਜਾਏ ਮਾਰ ਉਡਾਰੀ ਹਵਾ ਦੇ ਬੁਲੇ ਨਾਗ ਵਲੇ ਮਾਂ ਪਾਲੰਦੇ ਚੰਨ ਤੱਕ ਕਾ ਚਾਨਣ ਹਿੱਕ ਤੇ ਕਦੇ ਸਵਾਰੀ ਤੋਪੇ ਧਾਗੇ ਫੁੱਲ ਸਰਾਣੇ ਚੁੱਲ੍ਹੇ ਚਰਖਿਆਂ ਤੇ ਤੇਰੇ ਹਸਣ ਹੰਸਣੀਆਂ ਜਏ ਦੀ ਮਖਤਿਆਰੀ ਤੇਰੇ ਸਾਹਾਂ ਦੇ ਵਿੱਚ ਰੋਹੀ ਗਿੱਦਾ ਪੌਂਦੀ ਏ ਨਹੀਂ ਕੋਈ नाग ਲਾ ਗਿਆ ਅੜੀਏ ਕੁੰਝ ਕੁਆਰੀ ਤੇਰੀ ਧੂਣੀ ਜੇੜ ਫਕੀਰੀ ਮੌਤੋਂ ਪਿਆਰੀਏ ਨਹੀਂ ਪਾ ਕੇ ਦਰਸ਼ਨ ਹੋਗੀ ਧੁੱਪ ਭੀ ਤੜਕਣਹਾਰੀ ਇਆਂ ਸੌਂਡ ਕੇ ਰੁੱਤਾਂ ਖਾਣ ਪੰਜੀਰੀਆਂ ਮੌਸਮ ਕੰਨ ਪੜਵਾਉਣ ਦੀ ਕਰਦੇ ਫਿਰਨ ਤਿਆਰੀ ਰੇਤਾ ਟਿੱਬਿਆਂ ਦਾ ਓਲੇ ਬੈਠੇ ਕੱਲੀ ਕਾਰੀ ਜਿਹਦੀ ਯਾਦ ਦਾ ਪਾਣੀ ਬੰਨ ਤੋੜ ਕੇ ਚੜ ਗਿਆ ਨਹੀਂ ਮੁੰਡਾ ਕੱਚੀਆਂ ਸੇਬਾਂ ਦਾ ਸ਼ੈਲ ਖਦਾਰੀ ਪਹਿਲਾਂ ਪਤਨਾ ਉੱਤੇ ਸ਼ਮਕਾਂ ਦੇ ਨਾਲ ਕੁੱਟਿਆ ਤੂੰ ਮਗਰੋਂ ਸਾਦ ਬਣੇ ਨੂੰ ਡੌਂਦੀ ਫਿਰੇ ਪੰਗਨਵਾਰੀ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 ਸਰਵੱਤ ਖਾਲਸਾ ਹੋਇਆ ਸੀ ਮੈਨੂੰ ਤਾਂ ਇਉਂ ਪਤਾ ਲੱਗਿਆ ਵੀ ਨੇੜੇ ਨੇ ਇਹ ਪਰ ਉਹਦੇ ਭਾਈ ਆਪ ਹੁਦਰੀ ਗੱਲ ਕਿਵੇਂ ਹੋ ਗਈ ਇਹ ਗੱਲ ਔਖੀ ਹੈ ਪਰ ਫੇਰ ਵੀ ਯਾਦ ਰੱਖਿਓ ਇਹ ਦਾ 'ਚ ਜੇਲ੍ਹ ਗਏ ਬੰਦੇ ਜਦ ਬਾਹਰ ਆਉਂਦੇ ਨੇ ਤਾਂ ਉਹ ਨੇਤਾ ਬਣ ਕੇ ਆਉਂਦੇ ਨੇ ਸਾਡੇ ਸਾਹਮਣੇ ਜੋਧਪੁਰ ਵਾਲਾ ਇਤਿਹਾਸ ਹੈ ਮਰਜੀਬੜੇ ਜਿਹੜੇ ਗਏ ਸੀ ਉਹ ਮਰਜੀਬੜੇ ਉਸ ਤਰ੍ਹਾਂ ਰਹਿ ਗਏ ਘਰਾਂ ਦੇ ਵਿੱਚ ਘਾਹ ਉੱਗ ਖੜਿਆ ਪਰ ਜਾਦਮ ਤੋਂ ਨਿਕਲੇ ਵਸੇ ਬਲਟੋਲੇ ਆਉਣੀ ਮਹਿਤੇ ਚਾਵਲੇਉਣੀ ਹਰਮਿੰਦਰ ਗਿੱਲ ਸੰਧੂ ਆਉਣੀ ਤੇ ਨਾਲ ਹੀ ਗਰਚਨ ਗਰੇਵਾਲ ਆਉਣੀ ਅੱਜ ਉਹ ਨੇ ਫਿੱਟ ਕਰਕੇ ਚਿੱਪਾਂ ਸਿਰ ਦੇ ਵਿੱਚ ਅੰਦਰੋਂ ਕੱਢੇ ਇਸ ਤਰ੍ਹਾਂ ਇਹ ਅੰਦਰ ਜਾਣਗੇ ਕੋਈ ਅੰਦਰ ਜਾਊ ਬਾਹਰ ਨੇਤਾ ਬਣ ਕੇ ਆਉ ਤੇ ਮੁਰਤੇ ਕੱਲ ਨੂੰ ਪੁਹ ਦੇਖਦਾ ਉਹ ਐਮਐਲ ਆ ਜਿਵੇਂ ਆ ਬਣੇ ਹੋਏ ਨੇ ਜਿਨ੍ਹਾਂ ਦੇ ਨਾਮ ਦੱਸਿਆ ਮੈਂ ਤੁਹਾਨੂੰ ਇਹਨਾਂ ਨੂੰ ਪਿੱਛੇ ਸੁਨੇਹਾ ਲਿਓ ਅਕਲ ਦੋ ਪਿੰਡਾਂ 'ਚ ਜਿੱਥੇ ਤੁਹਾਡੀ ਜਗ੍ਹਾ ਇਸ ਸਤਕਾਰ ਸਹਿਤ ਵੋਟਾਂ ਪਾਓ ਡਲੇ ਨਾ ਮਾਰੋ ਜੁੱਤੀਆਂ ਨਾ ਮਾਰੋ ਪੁੱਠੀ ਪੈ ਤੂੰ ਹਾਰ ਜਾਉਂਗੇ ਕੋਈ ਵੀ ਵਿਰੋਧੀ ਆ ਚਾਹੇ ਉਹ ਕਾਂਗਰਸੀਆ ਚਾਹੇ ਆਪ ਕਾਇਮ ਰੱਖੋ ਬਜ਼ੁਰਗ ਨੇ ਉਹ ਵੱਡੇ ਨੇ ਸਾਡੇ ਧਰਮ ਦੇ ਵਿੱਚ ਸਾਡੇ ਸਭਿਆਤਾ ਦੇ ਵਿੱਚ ਵੱਡਿਆਂ ਦਾ ਸਤਕਾਰ ਹੈ ਗੁਰੂਵਾਲ ਵੇਖੋ ਉਹੀ ਗੁਰੂ ਜਿਹੜਾ ਇੱਕ ਬਾਜ਼ ਦੇ ਪਿੱਛੇ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 ਫਿਰ ਆਮ ਆਦਮੀ ਪਾਰਟੀ ਵਾਲੇ ਬਚਨੇ ਨਹੀਂ ਆਵੀ ਗੱਲ ਨਹੀਂ ਹੈ ਬੀਬਾ ਕਿਉਂ ਵੀ ਠੀਕ ਨਹੀਂ ਆਵੀ ਗੱਲ ਉੱਚੀ ਹੈ ਜਿਵੇਂ ਕੋਲੇਆ ਵਾਲੀ ਵਾਲਾ ਕਹਿੰਦਾ ਸੀ ਵੀ ਕੜੇ ਲਿਹਾਵਾ ਦਾਂਗੇ ਵਿਤੋਂ ਵੱਧ ਨਹੀਂ ਗੱਲ ਕਰੀਦੀ ਅੱਤ ਖੁਦਾ ਦਾ ਵੈਰ ਹੈ ਹੁੰਜੇ ਸੁੱਟ ਲੈਂਦਾ ਉਹ ਦਰੀਏ ਡਾਡੇ ਤੋਂ ਜਰਨੈਲੀਆਂ ਜੰਮੂਲੀਆਂ ਸਭ ਰੁਲ ਜਾਂਦੀਆਂ ਇੱਜ਼ਤ ਦੀ ਗੱਲ ਹੈ ਜਿੱਥੇ ਉਧਰ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 ਹਰਾ ਪੰਜਾਬ ਇੰਸ਼ੋਰੈਂਸ ਤੋਂ ਸ਼ੇਰ ਜੰਗrana ਜੀ ਅੜਿਕ ਰਹੇ ਨੇ ਲੋਹੜੀ ਬੰਪਰ ਬਾਰੇ ਉਹਨਾਂ ਨੇ ਗੱਲਬਾਤ ਕਰਨੀ ਹੈ ਸ਼ੇਰ ਜੰਗrana ਜੀ ਤੁਹਾਡਾ ਸਤਿ ਸ੍ਰੀ ਅਕਾਲ ਅੱਪਾ ਜੀ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਭੈਣ ਭਰਾ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੇ ਲੋਹੜੀ ਦੀਆਂ ਐਡਵਾਂਸ ਦੇ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਜੀ ਤੇ ਕਿਹੜਾ ਜਿਹੜਾ ਬੰਪਰ ਡਰਾ ਦੀ ਗੱਲ ਦੱਸ ਕੇ ਗਿਆ ਸੀ ਪਿਛਲੇ ਦਿਨ ਉਹ ਜੀ ਤੇ ਉਹਦੇ ਬਾਰੇ ਕੁਝ ਹੋਰ ਤੁਸੀਂ ਗੱਲ ਦੱਸਣੀ ਚਾਹੁੰਦੇ ਹੋ ਜ਼ਰੂਰ ਜੀ ਮੈਂ ਮੈਸੇਜ ਹੀ ਦੇਣਾ ਚਾਹੁੰਦਾ ਆਪਣੀ ਸਾਰੀ ਕਮਿਊਨਿਟੀ ਨੂੰ ਇਨਵਾਈਟ ਕਰਨਾ ਚਾਹੁੰਦਾ ਵੀ ਪੈਂਟਰਾਮ ਨੇ ਅੱਜ ਤੱਕ ਆਪਣੇ ਬੱਚਿਆਂ ਦਾ ਜਿਹੜਾ ਪੰਜਾਬ ਇਸ਼ੂਰੈਂਸ ਦਾ 10th ਅਨਵਰਟੀਟੀ ਆਪਣੇ ਪਹਿਲੇ ਗੁਰੂ ਸਾਹਿਬ ਗੁਰਨਾਨਕ ਦੇਵ ਜੀ ਨੇ ਸਾਨੂੰ 13 ਕਰਦੇ ਹੋਏ ਅਸੀਂ ਆਪਣੀ ਕਮਿਊਨਿਟੀ ਦਾ ਧੰਨਵਾਦ ਕਰਨਾ ਸੀ ਪੂਰੇ ਕੈਨੇਡਾ ਦੇ ਪੰਜਾਬ ਇੰਸ਼ੂਰੈਂਸ ਆਪਣਾ ਨਾਮ ਬਣਾਇਆ ਆਪਣੀ ਕਮੇਟੀ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਤੇ ਜਿਹੜਾ ਪ੍ਰਾਈਜ਼ ਆਪਾਂ ਕੱਢ ਰਹੇ ਹਾਂ ਫਰਾਈਡੇ ਨੂੰ ਬੁੱਧਵਾਰ ਵਾਲੇ ਦਿਨ ਜਿਹੜਾ ਫਾਈਨਲ ਪ੍ਰਾਈਜ਼ ਹੋਏਗਾ ਦੋ ਫੈਮਲੀਆ ਲਈ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਲਿਸਟਨ ਸੁ ਕਹਾਂਗਾ ਆਪਣਾ ਪੈਨ ਤੇ ਪੇਪਰ ਰੈਡੀ ਰੱਖੋ ਮੈਂ ਬੜਾ ਸੌਖਾ ਜਿਹਾ ਨੰਬਰ ਦੱਸਣਾ ਹੈਗਾ ਤੁਸੀਂ ਸਿਰਫ ਆਪਣੇ ਬੱਚਿਆਂ ਦਾ ਨਾਮ ਤੇ ਡੇਟ ਆਫ ਬਰਥ ਸੰਟੈਕਸਟ ਕਰ ਦੋ ਜਾਂ ਕਾਲ ਕਰ ਲਓ ਤੇ ਤੁਹਾਡਾ ਨਾਮ ਇਸ ਡਰਾ ਫਰੀ ਵਾਲੇ ਡਰਾ ਵਿੱਚ ਐਂਟਰ ਹੋ ਜਾਊਗਾ ਤੇ ਨੰਬਰ ਹੈਗਾ ਜੀ 604 603 1313 ਪਿਛਲਾ ਨੰਬਰ ਅਸੀਂ ਸਪੈਸ਼ਲੀ ਇਹੀ ਲਿਆ ਹੈਗਾ ਜਿਹੜਾ ਸਾਡਾ ਡਰਾਅ ਸੀਗਾ 604 613 13 13 ਜਾਂ ਸਾਡੀ ਵੈਬਸਾਈਟ ਹੈ ਜੀ ਪੰਜਾਬ ਇੰਸ਼ੂਰਸ.ਸੀਏ ਸਾਡੀ ਵੈਬਸਾਈਟ ਤੇ ਜਾ ਕੇ ਡਾਇਰੈਕਟਲੀ ਵੀ ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਕੱਢਣਾ ਗੱਲ ਦੱਸਦੇ ਆ ਕਿਉਂਕਿ ਜਦੋਂ ਆਪਾਂ 13 ਵੀਕ ਪਹਿਲਾਂ ਕੀਤਾ ਸੀ ਹਰ ਵੀਕ ਬਹੁਤ ਵਧੀਆ ਕੱਢੇ ਜਿੱਦਾਂ ਆਈਪੈਡ ਕੱਢੇ ਸੀਗੇ ਦਾ ਗਿਫਟ ਕਾਰਡ ਸੀਗਾ ਫਿਰ Uh, 500 ڈالر ਦਾ ਵੀਜ਼ਾ ਸੀਗਾ ਆਪਣੇ ਇਸ ਤੋਂ ਬਾਅਦ ਕੀ ਵੀ ਸੀਗੇ ਕਾਫੀ ਚੀਜ਼ਾਂ ਸੀ ਜਿਹੜੇ ਬੱਚਿਆਂ ਨਾਲ ਰਿਲੇਟਿਡ ਸੀਗੇ ਤੇ ਉਦੋਂ ਆਪਾਂ ਨੂੰ ਇਹ ਉਮੀਦ ਹੁੰਦੀ ਸੀ ਕਿ ਕੋਈ ਨੀ ਅਗਲੇ ਵੀਕ ਆਪਣੇ ਕੋਲ ਵਰਲਡ ਦਾ ਇੱਕ ਟੂਰ ਹੈਗਾ ਇਨ ਸੈਕੰਡ ਹੈਗਾ ਜੀ ਲਾਸ ਵੈਗਸ ਦਾ ਜਿਹੜੇ ਬੱਚੇ ਵਿਨ ਕਰਨਗੇ ਉਹਨਾਂ ਦੀ ਸਾਰੀ ਫੈਮਿਲੀ ਨੂੰ ਪੰਜਾਬ ਇੰਸ਼ੂਰੈਂਸ ਵੱਲੋਂ ਇਹ ਟ੍ਰਿਪ ਜਿਹੜਾ ਹੈਗਾ ਫ੍ਰੀ ਦੇ ਵਿੱਚ ਜਿਹੜਾ ਅਰੇਂਜ ਕੀਤਾ ਗਿਆ ਹੈਗਾ ਸੋ ਜਿਹੜਾ ਲੱਕੀ ਬੱਚਾ ਹੋਏਗਾ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 ਲੇਕਿਨ ਜਿਹੜਾ ਉਹਨਾਂ ਦਾ ਡ੍ਰੀਮ ਸੀ ਕਿਉਂਕਿ ਕਾਫੀ ਬਿਲੀਅਨਸ ਦਾ ਜਿਹੜਾ ਇਹ ਪ੍ਰੋਜੈਕਟ ਸੀਗਾ ਮੈਨੂੰ ਤਿੰਨ ਵਾਰੀ ਜਾਣ ਦਾ ਮੌਕਾ ਮਿਲਿਆ ਤੇ 110 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਜਿਹੜੇ ਆਪਣੇ ਜਿਹੜੇ ਗਏ ਨਹੀਂ ਮੈਂ ਦੱਸਣਾ ਚਾਹੁੰਦਾ ਵੀ ਬੈਂਕ ਦੇ ਵਿੱਚ ਬ੍ਰਦਰ ਜਾਂਦੇ ਸੀਗੇ ਵੀ ਅਸੀਂ ਇਦਾਂ ਡ੍ਰੀਮ ਨੂੰ ਫੁੱਲਸੇਲ ਕਰਨਾ ਹੈ ਇਸ ਕਰੋ ਕਿਸੇ ਨੇ ਵੀ ਇਸ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਹਿੰਦੇ ਤੁਹਾਡਾ ਡ੍ਰੀਮ ਬੜਾ ਵਧੀਆ ਡ੍ਰੀਮ ਨੂੰ ਸਪੋਰਟ ਕਰਦੇ ਪਰ ਅਸੀਂ ਫਾਈਨਾਂਸ ਨਹੀਂ ਕਰ ਸਕਦੇ ਕਿਉਂਕਿ ਦੁਨੀਆ ਤੇ ਇਦਾਂ ਦੀ ਕੋਈ ਪਰ ਤਾਂ ਵੀ ਦੋਨਾ ਬ੍ਰਦਰਸ ਨੇ ਖੁੱਲ੍ਹਾਨੀ ਛੱਡਿਆ 1965 ਵਿੱਚ ਤੇ 1971 ਦੇ ਵਿੱਚ 6 ਸਾਲਾਂ ਦੇ ਵਿੱਚ ਨੂੰ ਆਪਣਾ ਬਣਾ ਕੇ ਤੇ 1971 ਦੇ ਵਿੱਚ ਅੱਜ 52 ਮਿਲੀਅਨ ਤੋਂ ਜ਼ਿਆਦਾ ਵਿਜ਼ਟਰ ਹਰ ਸਾਲ ਜਿਹੜਾ ਹੈ ਕਿ ਵਿਜ਼ਿਟ ਕਰਦੇ ਤੇ ਆਪਣੇ ਬੱਚੇ ਉੱਥੇ ਇੰਜੋਏ ਕਰਦੇ ਨੇ ਤੇ ਪੰਜਾਬ ਇੰਸ਼ੂਰੈਂਸ ਨੇ ਉਪਰਾਲਾ ਕੀਤਾ ਕਿਉਂਕਿ ਪੰਜਾਬ ਇੰਸ਼ੂਰ ਨੂੰ ਸਾਡੀ ਕਮਿਊਨਿਟੀ ਨੇ ਆਪਣੇ ਦਿਲ ਵਿੱਚ ਜਗ੍ਹਾ ਦਿੱਤੀ ਜਿਹੜੀ ਬਹੁਤ ਘੱਟ ਲੋਕਾਂ ਨੂੰ ਮਿਲਦੀ ਹੈ ਸਾਨੂੰ ਉਹਨਾਂ ਨੇ ਅਕਸੈਪਟ ਕੀਤਾ ਜਿਹੜੀਆਂ ਸਾਡੀਆਂ ਸਰਵਿਸਿਜ਼ ਸੀਗੀਆਂ ਪੂਰੇ ਕੈਨੇਡਾ ਵਾਈਡ ਉਹਨਾਂ ਨੇ ਅਕਸੈਪਟ ਕੀਤਾ ਟੋਰਾਂਟੋ ਹੈੱਡ ਆਫਿਸ ਚਾਹੁੰਦੇ ਸੀਗੇ ਮੈਂ ਆਪਣੇ ਸਾਰੇ ਲਿਸਟ ਸੁਸੂ ਕਵਾਂਗਾ ਤੁਸੀਂ ਆਪਣੇ ਬੱਚਿਆਂ ਦਾ ਨਾਮ ਇਸ ਡਰਾਅ ਫ੍ਰੀ ਵਾਲੇ ਡਰਾਅ ਕਰੋ ਉੱਥੇ ਜਾ ਕੇ ਜਿਹੜਾ ਨਜ਼ਾਰਾ ਹੈਗਾ ਭਾਜੀ ਬਹੁਤ ਹੀ ਵਧੀਆ ਹੈਗਾ ਇਸ ਤੋਂ ਇਲਾਵਾ ਜਿਹੜੇ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 ਸੈਕੰਡ ਹੈ ਡਿਜ਼ਨੀ ਹਾਲੀਵੁੱਡ ਸਟੂਡੀਓ ਤੇ 3 ਹੈ ਤੇ ਜਿਹੜਾ ਉੱਥੋਂ ਦਾ ਸਿੰਡਰੇਲਾ ਕੈਪਸਲ ਤੇ ਬੜਾ ਹੀ ਮਨਮੋਹਕ ਹੁੰਦਾ ਹੈ ਬਿਕਾਜ਼ ਜਿਹੜੇ ਆਪਣੇ ਬੱਚੇ ਨੇ ਉਹ ਉਸ ਦੁਨੀਆ ਚਲੇ ਮਿਨੀ ਡੋਨਲਡ ਸਾਰੇ ਉੱਥੇ ਘੁੰਮ ਰਹੇ ਹੁੰਦੇ ਨੇ ਜਿਹੜੇ ਆਪਣੇ ਛੋਟੇ ਬੱਚੇ ਨੇ ਉਹਨਾਂ ਨੂੰ ਐ ਲੱਗਦਾ ਹੁੰਦਾ ਜਿਹੜਾ ਇਹ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 ਨੰਬਰ ਗੇਮ ਸੀ ਮੈਂ ਜੀ 604 603 13 13 604 603 13 13 ਇਸ ਤੋਂ ਇਲਾਵਾ ਮੈਂ ਲੱਕੀ ਨੇ ਹਰ ਹਰ ਬੱਚਾ ਜਿਹੜਾ ਤੇ ਆਇਆ ਹੈਗਾ ਇੱਥੇ ਲੱਕੀ ਪਰ ਇੱਕ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਹੈਗਾ ਜਿੱਦਾਂ ਬਿਊਟੀ ਕੰਟੈਸਟ ਹੁੰਦੇ ਨੇ ਜਿੱਦਾਂ ਮੰਨ ਲਓ ਮਿਸ ਵਰਲਡ ਮਿਸ ਵਰਲਡ ਵਗੈਰਾ ਕਾਫੀ ਇਦਾਂ ਦੇ ਕੰਟੈਸਟ ਹੁੰਦੇ ਨੇ ਇਹ ਨਹੀਂ ਹੈਗਾ ਵੀ ਜਿਹੜੇ ਲੋਕ ਉਹਦੇ ਵਿੱਚ ਕਰਦੇ ਨੇ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 ਗਰਦਨ ਦੀ ਸੰਗਲੀ ਟੁੱਟੂ ਤੇਗਵੀਰ ਹਲੇ ਹੋੜਾ ਪਰ ਜੁਆਕ ਹੈ ਉਸ ਨੂੰ ਲਕੀਮੀਆਂ ਹੋਇਆ ਅਕਤੂਬਰ ਦੇ ਵਿੱਚ ਪਤਾ ਲੱਗਿਆ ਮਹੀਨੇ ਤਿੰਨ ਹੋਏ ਨੇ ਟੱਬਰ ਹਾਲ ਪਾਰਿਆਂ ਦੀ ਕਰ ਰਿਹਾ ਛੋਟਾ ਹੈ ਉਹਨੂੰ ਬੋਨ ਮੈਰੋ ਚਾਹੀਦੀ ਹੈ ਤੇ ਇਹਦੇ ਲਈ ਜਿਹੜਾ ਸਵਾਭ ਇੱਕ ਟੈਸਟ ਹੈ ਜਿਹੜਾ ਖਾਸਾ ਦਵਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਵਿੱਚ ਐਤਵਾਰ ਨੂੰ 11 ਤੋਂ 4 ਵਜੇ ਦੇ ਵਿੱਚ ਹੋਣਾ ਸਾਰੋਂ ਤੋਂ 35 ਸਾਲ ਦੀ ਉਮਰ ਚਾਹੀਦੀ ਹੈ ਤੇ ਪ੍ਰੋਵਿੰਸ਼ੀਅਲ ਜਿਹੜਾ ਹੈਲਥ케ਅਰ ਕਾਰਡ ਆ ਉਹ ਚਾਹੀਦਾ ਸੋ ਇਸ ਦੇ ਲਈ ਕੈਨੇਡੀਅਨ ਤੇ ਤੇ ਉਸ ਦਾ ਕਰਦਾ ਤੇ ਮਿਹਨਤ ਕਰਦਾ ਹੈ ਇੱਕ ਵੀਰ ਦੀ ਜਾਨ ਬਚਾਉਣ ਲਈ ਬੇਨਤੀ ਆ 11 ਤੋਂ 4 ਵਜੇ ਤੱਕ ਐਤਵਾਰ ਨੂੰ ਖਾਲਸਾ ਦਵੰਸ ਸੁਸਾਇਟੀ ਪਹਿਲਾ ਗੁਰੂ ਘਰ ਆਪਣਾ ਬਜ਼ੁਰਗਾਂ ਦਾ ਉੱਥੇ 17 ਤੋਂ 35 ਸਾਲ ਦੇ ਮਰਦ ਤੇ ਇਸਤਰੀਆਂ ਨੂੰ ਬੇਨਤੀ ਆ ਕਿ ਪਹੁੰਚ ਤੇ તાਕੇ ਤੇਗ ਵੀਰ ਦੀ ਜਾਨ ਆਪਾਂ ਬਚਾ ਸਕੀ। ਇਹ ਭਾਈਚਾਰਾ ਆਪਣਾ ਹੈ ਕਿਤੇ ਵੀ ਹੋ ਸਕਦਾ ਹੈ। ਆਪਾਂ ਮਦਦ ਕਰੀਏ। ਸ਼ੁਕਲਾ ਜੀ ਸਤਿ ਸ਼੍ਰੀ ਅਕਾਲ। ਅ ਪ੍ਰੋਗਰਾਮ ਸੁਣਨ ਵਾਲੇ ਸਾਰੇ ਪਿੰਡਾਂ ਪਰਵਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਗੇੜਾ ਆਸਟ੍ਰੇਲੀਆ ਦਾ ਵਧੀਆ ਰਿਹਾ ਤੇ ਉੱਥੇ ਦੀ ਦਿਓ ਖਬਰ ਦੂਰ ਬਸਿੰਦੇ ਸੱਜਣਾ ਦੀ। ਹਾਂਜੀ ਬਿਲਕੁਲ ਆਸਟ੍ਰੇਲੀਆ ਸਾਡਾ ਆਪਣਾ ਸ਼ੋਅਰੂਮ ਅਸੀਂ ਖੋਲ੍ਹ ਦਿੱਤਾ ਹੈਗਾ ਸਭ ਤੋਂ ਪਹਿਲਾਂ ਤਾਂ ਭਰਾਵਾਂ ਦਾ ਧੰਨਵਾਦ ਕਰਦਾ ਆਸਟ੍ਰੇਲੀਆ ਵਾਲਿਆਂ ਦਾ ਕਿ ਬਹੁਤ ਹੀ ਸਾਡੀ ਗ੍ਰੈਂਡ ਓਪਨਿੰਗ ਸ਼ੋਅਰੂਮ ਚ ਆਏ ਔਰ ਬਹੁਤ ਹੀ ਅੱਛਾ ਰਿਸਪੌਂਸ ਹਮਨ ਮਿਲਿਆ ਔਰ ਬੜੇ ਖੁਸ਼ੀ ਆ ਕੇ ਅਸੀਂ ਸੁਣਦੇ ਹੁੰਦੇ ਸੀ ਕਿ ਉਹ ਸਾਡਾ ਫੋਟੋ ਆਨ ਦੀ ਹੁਣ ਸਾਡੇ ਆਪਣੇ ਸ਼ਹਿਰ ਚ ਮਿਲਣ ਲੱਪੇ ਆ ਆਈ ਬੋਟ ਹੀ ਅਚੀਆਲਾ ਜਿਸਰ ਨਾਲ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਤੁਹਾਡੇ ਬਹੁਤ ਸਿਆਣ ਹੈਗੇ ਆ ਬਹੁਤ ਹੀ ਪੈਨਪ੍ਰਾਸ ਦਾ ਪ੍ਰੋਗਰਾਮ ਚਸਾਂਦੇ ਹੈਗੇ ਆ ਔਰ ਮੈਂ ਦੱਸ ਕਿ ਸਾਡਾ ਹਨ ਸ਼ੋਰੂਮ ਬ੍ਰਿਸਬਨ ਦੇ ਵਿੱਚ ਹੈਗਾ ਇਹਦਾ ਐਡਰੈਸ ਹੈਗਾ ਯੂਨਿਟ ਨੰਬਰ 15 549 ਅੰਡਰਵੁੱਡ ਰੋਡ ਰੌਚਟੋ ਸ਼ੋਪਿੰਗ ਵਿਲੇਜ ਦੇ ਵਿੱਚ ਹੈਗਾ ਔਰ ਇਹ ਬ੍ਰਿਸਬਨ ਦੇ ਵਿੱਚ ਹੈਗਾ ਉੱਤਰਨਾ ਟੈਲੀਫੋਨ ਜਿਸ ਨਾਲ ਜਿਹੜੇ ਕੇ ਆਸਟ੍ਰੇਲੀਆ ਵਾਲੇ ਪੈਨਪ੍ਰਾਸ ਹੁੰਦੇ ਹੈਗੇ ਆ ਏਰੀਆ ਕੋਡ 73341 5336 esto a tusy sade jinne vi products sare mother india de lai sakde han aur isi hi asi store ton jinna pura australia new zealand te cgi cover karde han jinne sade mail order aande sake asi hun sare oh australia brisbane de office ch cover karange agar kisi vi pramanam nu hor अच्छा जी आ, मेरे ख्याल 5-6 दिन ਆ ਕਿਹੜੇ-ਕਿਹੜੇ ਜਗ੍ਹਾ ਤੁਸੀਂ ਘੁੰਮ ਤੇ ਕਿਉਂ ਜਿਹਾ ਲੱਗਿਆ ਤੁਹਾਨੂੰ ਦੇਸ਼ ਜੀ ਪਹਿਲੀ ਵਾਰ ਗਏ ਹੋ ਕਹਿੰਦੇ ਆਸਟ੍ਰੇਲੀਆ ਵਧੀਆ ਬਹੁਤ ਹੈ ਭਾਈਚਾਰਾ ਸਾਡਾ ਬਹੁਤ ਵਧੀਆ ਉੱਥਾਂ ਜੀ ਹਾਂ ਮੈਂ ਐਕਚੁਅਲੀ ਕਾਫੀ 20-25 ਸਾਲ ਤੋਂ ਉੱਥੇ ਜਾਨਦਾ ਹਾਂ ਲੇਕਿਨ ਹਮੇਸ਼ਾ ਫੈਮਿਲੀ ਨਾਲ ਜਾਂਦਾ ਸੀਗਾ ਇਸ ਵਾਰ ਅਸੀਂ ਦੇਸ ਉਸਕਾਰ ਗਏ ਸੀਗੇ ਮੈਨੂੰ ਜਾਣ ਦਾ ਮੌਕਾ ਮਿਲਿਆ ਬ੍ਰਿਸਬਨ ਸਿਡਨੀ ਨਾਓਰ ਐਕਚੁਅਲੀ ਪਹਿਲੇ ਜਨਵਰੀ ਨੂੰ ਮੈਂ ਗੁਰੂ ਘਰ ਦੋਜਾ ਗਿਆ ਬ੍ਰਿਸਬਨ ਦੇ ਵਿੱਚ ਬਹੁਤ ਹੀ ਅੱਛਾ ਲੱਗਾ ਉੱਥੇ ਇੰਨਾ ਰਸਤੀ ਭਾਰਤੀ ਨਹੀਂ ਸੀ ਮਿਲਦੀ ਔਰ ਬੱਚੇ ਬਜ਼ੁਰਗ ਬਹੁਤ ਹੀ ਤਦਾਦ ਵਿੱਚ ਜੰਗਾਇ ਸੀਗਾ ਉਦੋਂ ਤੱਕ ਦੇ ਸਾਲ ਨਵੇਂ ਸਾਲ ਤੋਂ ਔਰ ਉੱਥ ਦਾ ਵਾਤਾਵਰਣ ਵੀ ਬਹੁਤ ਅੱਛਾ ਹੈ ਮਿਲਸਾਰ ਲੋਕ ਹੈ ਗਿਆ ਬੜੇ ਬੜੇ ਲੋਕਾਂ ਨੇ ਕਾਰਜ ਪਾਇਆ ਹੈਗੇ ਆ ਬੜੀਆਂ ਅੱਛੀ ਸੀਮ ਕਾਰਾਂ ਰੱਖੀਆਂ ਹੈਗੀਆਂ ਬੜੇ ਖੁਸ਼ਹਾਲ ਆ ਪੰਜਾਬੀ ਉੱਥੇ ਆਪਣੀ ਭੈਣ ਭਰਾ ਜਿੰਨੇ ਵੀ ਬਿਜ਼ਨਸ ਵੀ ਕਰਦੇ ਹੈਗੇ ਆ ਰੈਸਟੋਰੈਂਟ ਆ ਗ੍ਰੋਸਰੀ ਸਟੋਰ ਆ ਜਾਂ ਜਿਹੜੇ ਬਹੁਤ ਹੀ ਅੱਛਾ ਕਰ ਰਹਾ ਹੈ। ਅੱਛਾ ਜੀ ਤੇ ਹੋਰ ਪ੍ਰੋਡਕਟ ਇਸ ਸਾਲ ਦੇ ਸ਼ੁਰੂ ਦੇ ਵਿੱਚ ਪਹਿਲੀ ਤਾਂ ਗੱਲ ਛੋਟਾ ਪੈਕ ਇੱਕ ਬਣਾਉਣਾ ਸੀ ਤੁਸੀਂ ਬਸਮੇ ਦਾ ਉਹ ਡਾਈ ਦਾ ਤੇ ਉਸ ਦੀ ਗੱਲ ਦੱਸੋ ਵੀ ਉਹ ਕਦ ਬਣੂਗਾ ਤੇ ਹੋਰ ਜਿਹੜੇ ਪ੍ਰੋਡਕਟ ਨੇ ਨਵੇਂ ਇਸ ਸਾਲ ਬਾਰੇ ਆਏ ਉਹਨਾਂ ਬਾਰੇ ਦੋ ਜਾਣਕਾਰੀ। ਹਾਂਜੀ ਪਹਿਲਾਂ ਤਾਂ ਮੈਂ ਦੱਸੂਗਾ ਹੈਡ ਆਈ ਬਾਰੇ ਇਹ ਡਰੱਪ ਦੀ ਤਾਂ ਕਿਹ ਗੱਲ ਕੀਤੀ ਆ ਉਹ ਮੈਂ ਹਮੇਸ਼ਾ ਹੀ ਲਾਸਤਾਂ ਦੀ ਜਿਕੇ ਅਸੀਂ ਵੀ ਅੰਦਰ ਫਰਵੀ ਦੇ ਵਿੱਚ ਸਾਡਾ ਅੰਦਰ ਪ੍ਰੋਸੈਸ ਹੈ ਇਹ ਆ ਜਾਏਗਾ ਲੇਕਿਨ ਜਿਨ੍ਹਾਂ ਭੈਣ ਭਰਾਵਾਂ ਨੇ ਸਾਡਾ ਮਦਰ ਇੰਡੀਆ ਹਰਬਲ ਹੈਡ ਆਈ ਸ਼ੈਂਪੂ ਵਾਈਟ ਲਈ ਯੂਜ਼ ਕੀਤਾ ਮੈਂ ਉਹਨਾਂ ਨੂੰ ਦੱਸ ਕਿ ਤੁਸੀਂ ਕਈ ਵਾਰ ਕੁਐਸਚਨ ਪੁੱਛਦੇ ਆ ਕਿ ਵੀ ਸਿਰਫ ਭੈਣਾ ਵਾਸਤੇ ਜਾਂ ਭਰਾਵਾਂ ਵਾਸਤੇ ਹੈ ਇਹ ਵਾਲਾ ਵਾਸਤੇ ਹੈ ਕੋਈ ਵੀ ਭੈਣ ਭਰਾ ਲਾ ਸਕਦਾ ਹੈਗਾ ਦਾੜੀ ਨੇ ਵੀ ਲਾ ਸਕਦੇ ਆ ਮੁੱਛਾਂ ਨੇ ਵੀ ਲਾ ਸਕਦੇ ਆ ਆਈਬ੍ਰੋਨ ਵੀ ਲਾ ਸਕਦੇ ਆ ਇਹ ਬਹੁਤ ਹੀ ਅੱਛਾ ਪ੍ਰੋਡਕਟਸ ਆ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 ਜਦ ਕੱਲ ਦੇ ਅਪ੍ਰੋਕਸੀਮੇਟਲੀ ਉਹ 1 ਮਹੀਨਾ ਰਹਿੰਦਾ ਹੈਗਾ ਦਾੜੀ ਵਿੱਚ 2 ਵੀਕਸ ਪਲੱਸ ਲੇਕਿਨ ਵਾਲਾਂ ਵਿੱਚ 1 ਮਹੀਨਾ ਔਰ ਟਾਈਮ ਸਿਰਫ 6 ਡਾਰਕ ਬ੍ਰਾਊਨ ਆਏਗਾ ਇਹਦੇ ਵਿੱਚ ਤੁਹਾਨੂੰ ਨੇਚਰਲ ਬਲੈਕ ਤੇ ਬਰਗੰਡੀ ਵੀ ਤੁਹਾਨੂੰ ਕਲਰ ਮਿਲ ਸਕਦਾ ਹੈਗਾ ਇਹ ਅੱਜ ਤਕਰੀਬਨ ਕ੍ਰਾਸ ਕੈਨੇਡਾ ਵਿੱਚ 250 ਲੋਕੇਸ਼ਨ ਤੇ ਉਪਲਬਧ ਹੈਗਾ ਅਮਰੀਕਾ ਦੇ ਵਿੱਚ ਵੀ ਵੈਲਿੰਘਮ ਤੁਸੀਂ ਸਿਆਟਲ ਚਲ ਜਾਓ ਸੈਕਰਾਮੈਂਟ ਜਲ ਜੋ ਉਥੇ ਤੁਹਾਨੂੰ ਪ੍ਰੋਡਕਟ ਨੰਬਰ ਦਾ ਹੁਣ ਤਾਂ ਆਸਟ੍ਰੇਲੀਆ ਨਿਊਜ਼ੀਲੈਂਡ ਸੀਜੀ ਰਚੀ ਮਿਲਦਾ ਹੈਗਾ ਅਗਰ ਤੁਹਾਡੇ ਕਾਲ ਕਰੋ ਜਾਂ ਸਾਨੂੰ ਫੋਨ ਕਰੋ 604 4306072 ਅਸੀਂ ਤੁਹਾਡੇ ਘਰ ਕਰਦੇ ਅਖੀਰ ਦੇ ਵਿੱਚ ਜੀ ਕੋਈ ਹੋਰ ਸਨੇਹਾ ਦੇਣਾ ਹੋਵੇ ਤੇ ਹੁਣ ਮਦਰ ਇੰਡੀਆ ਦਾ ਜਿਹੜਾ ਮੰਗਲਵਾਰ ਤੋਂ ਬਿਨਾ ਤੇ ਉਸ ਦੇ ਬਾਰੇ ਤੇ ਅਖੀਰ ਦੇ ਵਿੱਚ ਹੋਰ ਕੁਝ ਕਹਿਣਾ ਚਾਹਾਂ ਹਾਂ ਜੀ ਅਗੇ ਸਭ ਸਾਡਾ ਸਟੋਰ ਜਿਹੜਾ ਮੇਨ ਤੇ ਹੈਗਾ 6649 ਮੇਨ ਸਟਰੀਟ ਮੇਨ ਐਂਡ ਸਿਫਟੀ ਅਸੀਂ ਮੰਡੇ ਟੂ ਸੰਡੇ ਖੋਲਦੇ ਹਾਂ 10:06 ਟੀਜ਼ ਦੇ ਬੰਦ ਹੁੰਦਾ ਹੈਗਾ ਤੁਸੀਂ ਸਾਨੂੰ ਕਿਸੇ ਟਾਈਮ ਵੀ ਕਾਲ ਕਰ ਸਕਦੇ ਹੈਗੇ ਆ ਲੇਕਿਨ ਟੋਰਾਂਟੋ ਵਿੱਚ ਮੈਂ ਦੱਸਣਾ ਸਾਡਾ ਹੈਗਾ ਕੈਲਗਰੀ ਦੇ ਵਿੱਚ ਬਹੁਤ ਫੋਨ ਕਾਲ ਆਉਤਾਂ ਹੈਗੀਆਂ ਉੱਥੋਂ ਤੁਹਾਨੂੰ ਫਰੂਟੀ ਕਨਨ ਤੇ ਓਕੇ ਜਨਰਲ ਫੋਟੋ ਵੀ ਇਹ ਪ੍ਰੋਡਕਟ ਮਿਲ ਸਕਦਾ ਹੈਗਾ ਜਿਹੜੀ ਸਾਡੀ ਸੇਲ ਚੱਲ ਰਹੀ ਬਾਏ 1 ਗੈਟ 50% ਆਫ ਉਹ ਥੋੜੇ ਦਿਨ ਮੈਨੂੰ 10-12 ਦਿਨ ਹਾਲੀਡੇ ਤੇ ਜਾਣ ਕਰਕੇ ਉਹ ਕਾਫੀ ਪਣ ਪਰਾਵੰ ਦਾ ਫੋਨ ਆ ਸੀ ਅਸੀਂ ਆਈ ਸੀ ਸ਼ਹਿਰ ਤੇ ਤੁਹਾਨੂੰ ਅਸੀਂ ਮਿਸ ਕਰ ਗਏ ਲੇਕਿਨ ਉਹਨਾਂ ਵਾਸਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਉਹ ਸੇਲ ਕੰਟੀਨਿਊ ਅੰਟਿਲ ਐਂਡ ਆਫ ਜਨੂਅਰੀ ਤੁਸੀਂ ਇੱਕ ਆਈਟਮ ਕੋਈ ਵੀ ਲਓ ਸੈਕੰਡ ਆਈਟਮ ਤੁਹਾਨੂੰ 50% ਆਫ ਮਿਲੇਗੀ ਆ ਤੁਸੀਂ ਕਿਸੇ ਟਾਈਮ ਵੀ ਆ ਸਕਦੇ ਆ ਸਾਡਾ ਸਟੋਰ ਐਵਰੀ ਡੇ 6 ਵਜੇ ਤੱਕ ਖੁੱਲ੍ਹਾ ਹੁੰਦਾ ਹੈਗਾ ਤੁਸੀਂ 50s ਦੇ ਅਸੀਂ ਬੰਦ ਹੁੰਦੇ ਹੈਗੇ ਹਾਂ ਧੰਨਵਾਦ ਜੀ ਥੈਂਕ ਯੂ ਤੇ ਫੇਰ ਗੱਲਬਾਤ ਹੋਏਗੀ ਹਾਂ ਜੀ ਗੱਸਾ ਥੈਂਕ ਯੂ ਮਦਰ ਇੰਡੀਆ ਤੋਂ ਆਸਟ੍ਰੇਲੀਆ ਘੁੰਮ ਕੇ ਆਏ ਨੇ ਸਿੰਘ ਜੀ ਲਾਈਨ ਨੰਬਰ 3 ਸਿੰਘ ਜੀ ਬਾਕ ਪਾਰਕਸ ਤੋਂ ਤਾਕਤਵਰ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 ਹੋਇਆ ਕਰਮੀਆਂ ਵਾਈਟ ਹਾਊਸ ਦੀ ਉਹਦੇ ਵਿੱਚ ਪ੍ਰੈਸ ਸੈਕਟਰੀ ਜਾਉਂਦਾ ਮੈਨੂੰ ਨਹੀਂ ਲੱਗਦਾ ਹੁਣ ਮੱਥੇ ਲੱਗੂਗਾ ਆਪਣਾ ਅਲੱਗ ਢੰਗ ਹੈ ਦੇ ਕੰਮ ਕਰਨ ਸਾਰੇ ਜਿਨ੍ਹਾਂ ਦੇ ਅੰਦਰ ਲਿਖਿਆ ਹੈ ਕਹਿੰਦੇ ਰਹੇ ਕੱਲ ਕਮੇਟੀ ਦੇ ਮੂਹਰੇ ਜਮਾਈ ਮੁਕਰ ਰਹੇ ਨੇ ਉਹ ਕਹਿੰਦਾ ਮੈਂ ਤਾਂ ਇਹ ਗੱਲੇ ਨਹੀਂ ਕਰਦਾ ਮੈਂ ਤਾਂ ਇਹ ਪੁੱਠੀ ਗੱਲ ਕਦੇ ਵੀ ਨਹੀਂ ਕਰਦਾ ਜਿਵੇਂ ਪੰਜਾਬੀ ਬੰਦੇ ਕਹਿੰਦੇ ਹੁੰਦੇ ਤੇ ਉਹਨਾਂ ਤੇ ਦੋਸ਼ ਨੇ ਉਹ ਹਾਲੇ ਵੀ ਇਹ ਮੰਨ ਨਹੀਂ ਰਿਹਾ ਕਿ ਇਹ ਗੱਲ ਠੀਕ ਹੈ 트럼ਪ ਕਾ ਨਾਮ ਆਏ ਬੇਸਲੈਸ ਹੈ ਇਹ ਦੇ ਪਿੱਛੇ ਕੋਈ ਹੈ ਨਹੀਂ ਕਨਫਲਿਕਟ ਆਫ ਇੰਟਰਸਟ ਦੇ ਨਾਂ ਤੇ ਗੱਲਾਂ ਤੇ ਫੇਰ ਗੱਲ ਬਣੂ ਗੱਲ ਜਿੱਤਣ ਤੱਕ ਸੀ ਬੰਦਾ ਜਿੱਤ ਗਿਆ ਇਹਦੇ ਪਿੱਛੇ ਰਸ਼ੀਆ ਨੇ ਕੁਝ ਕਰ ਲਿਆ ਉਹਨੂੰ ਹੈਕ ਕਰਕੇ ਇਨਫੋਰਮੇਸ਼ਨ ਕੱਢ ਦਿੱਤੀ ਜਾਂ ਕੁਝ ਵੀ ਹੋ ਗਿਆ ਇਹ ਫੇਰ ਵੀ ਹੁਣ ਜਿਹੜਾ ਕਿਲਰਸਾਨਾ ਮੋਬਿਲ ਦਾ ਸੀਓ ਐਕਸਨ ਮੋਬਿਲਸ ਦੇ ਸੀਓ ਰੈਕਸ ਟਿਲਰਸਾਨ ਜੀ ਨੇ ਉੱਥੇ ਵੱਡੀਆਂ ਰੈਫਾਇਨਰੀਆਂ ਦੇ ਨਾਲ ਪੁੱਤ ਨਾਲ ਉਹਦੀਆਂ ਫੋਟੋਆਂ ਨੇ ਇਕੱਠੇ ਹੱਸਦੇ ਆ ਖੇਡਦੇ ਮੇਨ ਸੂਤਰ ਧਾਰ ਅਸਲ ਰਿਹਾ ਉੱਥੇ ਕੁਝ ਰੈਫਾਇਨਰੀ ਲਾਉਣ ਲਈ ਉਹ ਵੀ ਕਹਿੰਦਾ ਕਹਿੰਦਾ ਆਪਣੀ ਤਾਂ ਗੱਲੇ ਹੈ ਨਹੀਂ ਜਮਈ ਆਪਣਾ ਕੋਈ ਹੈ ਨਹੀਂ ਪਰ ਰਸ਼ੀਆ ਤੋਂ ਖਤਰਾ ਬਹੁਤ ਅਸਨ ਹੁਣੇ ਸਭ ਤਰਕਾਟੋ ਮੈਂ ਚੜਾਂ ਵਾਲੀ ਕਹਾਣੀ ਹੈ ਤੇ ਇਸ ਦੇ ਵਿੱਚ ਕੁਝ ਨਹੀਂ ਗੱਲ ਸੱਚ ਇਹ ਹੈ ਕਿ ਬਿਲਕੁਲ ਰਸ਼ੀਆ ਦੀ ਤਰਜ਼ਾ ਡੋਨਲਡ ਨਾਲ ਰਲਦੀ ਹੈ ਰਲਦੀ ਹੈ ਤੇ ਨਹੀਂ ਤਾਂ ਹਿਲਰੀ ਦੇ ਕੰਪਿਊਟਰਾਂ ਦੇ ਵਿੱਚ ਲਾਉਣਾ ਸੀ ਸੋਸ਼ਲ ਮੀਡੀਆ ਤੇ ਉਹਨੇ ਬੜਾ ਰੌਲਾ ਪਿਆ ਪਰ ਜਿਸ ਤਰ੍ਹਾਂ ਫੌਜੀ ਮਸ਼ਕਾਂ ਦੇ ਲਈ 4000 ਤੇ ਬਹੁਤ ਟੈਂਕ ਹੋਰ ਹਮਲਾ ਫੈਲਾ ਬਹੁਤ ਯੂਕਰੇਨ ਦੇ ਵਿੱਚ ਚਲੇ ਗਿਆ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 ਉਹ ਹਲੇ ਗੱਲਬਾਤ ਚੱਲ ਰਹੀ ਐ ਬੜੀ ਕਰੜੀ ਪੱਤਰਕਾਰਾਂ ਦੀ ਗੱਲ ਪਰ ਸਵਾਲ ਉਹਨੇ ਕਿ ਪੁੱਛਣ ਕਰਕੇ ਵੀ ਹਾਂ ਤੂੰ ਪੁੱਛ ਫੇਰ ਗੱਲ ਬਣਦੀ ਆਖਰੀ ਜਿਹੜੀ ਕੱਲ ਸਪੀਚ ਸ਼ਿਕਾਗੋ ਦੇ ਵਿੱਚ ਦਿੱਤੀ ਬਰਾਕ ਆਵਾਮਾ ਨੇ ਜਦ ਆਪਣੀ ਘਰ ਤੇ ਬੱਚੀਆਂ ਦਾ ਨਾਮ ਲਿਆ ਛੋਟੀਆਂ ਬੱਚੀਆਂ ਸੀ ਕਹਿੰਦਾ ਜਿਹੜਾ 8 ਸਾਲ ਪਹਿਲਾਂ ਮੈਂ ਵਾਈਟ ਹਾਊਸ ਚ ਬੜਿਆ ਇਦਿਕ ਜ਼ਿੰਦਗੀ ਦੀਆਂ ਤਲਖ ਸਚਾਈਆਂ ਸੀ ਕਿ ਮੇਰੇ ਤੋਂ ਸਮਾਨਾ ਦੇ ਹੋਇਆ ਅੱਖਾਂ ਚੋਂ ਤੇ ਨਾਲ ਉਹਨੇ ਸਾਫ ਕੀਤੇ ਰੋ ਰਹੀ ਸੀ ਤੇ ਉਸਨੇ ਕਿਹਾ ਕਹਿੰਦਾ ਕਹਾਣੀਆਂ ਕੋਈ ਨਹੀਂ ਬੜੀ ਗੱਲ ਉਹਨੇ ਪਤੇ ਦੀ ਕਲ ਪ੍ਰੈਜ਼ੀਡੈਂਟ ਹਵਾਮਾ ਨੇ ਕਹੀ ਕਹਿੰਦਾ ਤੁਹਾਡੇ ਭੇਜਿਓਏ ਬੰਦੇ ਜੇ ਨਹੀਂ ਕੰਮ ਕਰਦੇ ਕਲਿੱਪਬੋਰਡ ਲਾਓ ਉਹਦੇ ਤੇ ਲਿਖੋ ਇਹਨੇ ਕੀ ਕੀ ਨਹੀਂ ਕੀਤਾ ਤੇ ਆਪ ਕੁੱਦੋ ਤੇ ਉਸ ਸੀਟ ਤੇ ਜਾ ਕੇ ਬੈਠੋ ਕਹਿੰਦਾ ਦੇਖੋ ਮੇਰੇ ਵੱਲ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 ਉਹ ਤੁਹਾਡੇ ਤੇ ਜ਼ੋਰ ਅਜ਼ਮਾਈ ਕਰ ਰਹੇ تھے۔ ਸਭ ਤੋਂ ਵੱਡੀ ਆ ਗੱਲ ਪੱਕੀ ਹੋਣੀ ਚਾਹੀਦੀ ਹੈ। ਜਰਵਾਣੇ ਦਾ ਜ਼ੁਲਮ ਕਰਨਾ ਤੇ ਉਸ ਨੂੰ ਸਹਿਣਾ ਉਹ ਕਹਿੰਦਾ ਜ਼ੁਲਮ ਕਰਨਾ ਉਹਨਾ ਮਾੜਾ ਨਹੀਂ ਸਹਿਣਾ ਉਹਨਾ ਮਾੜਾ ਹੈ। ਜਦ ਤੱਕ ਤੁਸੀਂ ਬੋਲਦੇ। ਸੁਬਰਾਕ ਬਾਮਾ ਨੇ ਬਹੁਤ ਵਧੀਆ ਕੱਲ ਜਿਹੜਾ ਭਾਸ਼ਣ ਦਿੱਤਾ ਹਰ ਇੱਕ ਚੀਜ਼ ਉਹ ਕਹਿੰਦਾ ਮੈਂ ਟਰਾਈ ਬੈਸਟ ਕੀਤੀ।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 ਡੋਲਰ ਟਰੰਪ ਨਹੀਂ ਆ ਸਕਦਾ ਵਾਈਟ ਹਾਊਸ ਦੇ ਵਿੱਚ ਇਹ ਗੱਲ ਪੱਕੀ ਸੀ ਹਲੇ 55% ਰੇਟਿੰਗ ਹੈ ਰਾਖ ਮਹਮਦ ਬਹੁਤ ਵੱਡੀ ਗੱਲ ਕੇ 8 ਮਿੰਟ ਠੰਡ ਪੂਰਾ ਪਵਾਂ ਪੈ ਰਹੀ ਹੈ ਪਰ ਇਹ ਮੌਸਮ ਨੇ ਸੂਰਜ ਨੇ ਮਹੀਨਾ ਹੋ ਗਿਆ ਬਸ ਰੱਖ ਲੇ ਨਹੀਂ ਤਾਂ ਗੋਡੇ ਸੀਟੀਆਂ ਮਾਰ ਲੱਗ ਗਏ ਸੀ ਇੰਨਾ ਮੀਂਹ ਪੈਂਦਾ ਸੀ ਇਹੋ ਜਿਹੇ ਜਿਹੜਾ ਆ ਮੌਸਮ ਹੈ ਇਹੋ ਜਿਹੇ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 ਦੇ ਨਾਲ ਹੀ ਵਾਕਵੇ ਸਾਈਡ ਵਾਲਾ ਉਹ ਘਰ ਠੀਕ ਰੱਖੋ ਜੇ ਕੋਈ ਮਾੜਾ ਬੰਦਾ गिर ਗਿਆ ਉਹਨੇ ਉੱਥੋਂ ਉੱਠਣਾ ਨਹੀਂ ਜਦ ਤੱਕ ਐਂਬੂਲੈਂਸ ਨਹੀਂ ਆਉਂਦੀ ਯਾਦ ਰੱਖ ਲਿਓ ਉੱਥੇ ਲਾ ਕੇ ਬੈਠੋ ਵੀ ਹੁਣ ਐਂਬੂਲੈਂਸ ਆਉ ਤਾਂ ਲਿਜਾਓ ਇੱਕ ਵਾਰ ਅੱਗੇ ਵੀ ਤੁਹਾਨੂੰ ਗੱਲ ਸੁਣਾਈ ਹੈ 124 ਤੇ 68 ਵਾਲੇ ਤੇ ਗੁਰਦੁਆਰਿਆਂ ਸਕੂਲਾਂ ਦੇ ਵੀ ਕਿਉਂ ਭਾਈਚਾਰਾ ਬਹੁਤ ਵਸਤਾਂ ਦੋ ਕੱਠੀਆਂ ਗੱਡੀਆਂ ਫੋਰਵੇ ਸਟਾਪ ਤੋਂ ਇਕੱਠੀਆਂ ਚੱਲ ਗਈਆਂ ਕੋਲ ਜਾ ਕੇ ਖੜ ਗਈਆਂ ਬੇਬੇ ਪਿੱਛੇ ਡਿਗੀ ਪਿੱਛੇ ਬੈਠੀ ਗਈ ਬੇਬੇ ਗੱਡੀ ਤਾਂ ਲੱਗੀ ਨਹੀਂ ਕਹਿੰਦੇ ਅੱਜ ਚੰਗਾ ਕਰ ਦਿੰਦੇ ਆ ਆਉਂਦੇ ਨੂੰ ਗਰਦਰ ਫੜਨੀ ਆ ਇਹ ਉਹਨਾਂ ਕਰਿਆ ਕਰੋ ਬਹੁਤ ਕੁਸ਼ੇ ਦੇਸ਼ ਨੇ ਆਪਾਂ ਨੂੰ ਦਿੱਤਾ ਸੱਚ ਵੀ ਬਿਨਾ ਤੇ ਖੜ ਕੇ ਪਰਿਵਾਰਾਂ ਨੂੰ ਰੋਟੀ ਬਰੋਜੀ ਦਿੱਤੀ ਫਰਿਜਾਂ ਥੋਡੀਆਂ ਪੈਂਟਰੀਆਂ ਭਰੀਆਂ ਸਿਰ ਤੇ ਛੱਤਾਂ ਗੱਡੀ ਬਾਹਰ ਖੜੀ ਆ ਤੇ ਤੁਸੀਂ ਸੇਤਿਆਬ ਐ ਬਸ ਬਸਾ ਪਿੱਛੇ ਨਾ ਭੱਜੋ ਬਸ ਸਟੈਂਡ ਤੇ ਖੜੋ ਦੂਜੀ ਬਸ ਆ ਉਹ ਉੱਤੇ ਚੜਜੋ ਰੱਬ ਨੇ ਸਭ ਨੂੰ ਕੋਈ ਵੀ ਮਾੜਾ ਨਹੀਂ ਕਦੇ ਪਿਛਲੀ ਜ਼ਿੰਦਗੀ ਚੰਗੇ ਹਰੇਕ ਨੂੰ ਹੀ 50 ਕਿੱਲੇਾਂ ਦੇ ਆਲੇ-ਦਾਲੇ ਸਿੰਧ ਦੀ ਘੋੜੀ ਹਣਕ ਦਿਖਦੀ ਐ ਮੇਰੇ ਵਰਗਾ 5 ਵੀ 50 ਕਿੱਲੇ ਕਹਿੰਦਾ ਉਹ ਬਸ ਉੱਥੇ ਫਿਰ ਜੈਨ ਦਾ ਆਪਣੀ ਖਾਸੀ ਐ ਰਗਮ ਉਥੋਂ ਲੈ ਆਉਣੀ ਆਪਾਂ ਫੇਰ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 ਇੱਕ ਹੋਰ ਗੱਲ ਕੱਲ ਰਾਤੀ ਅਸੀਂ ਗੱਲ ਕਰ ਰਹੇ ਵੀਰ ਗੈਰੀ ਕਲਾਰਖਣਾ ਪਾਜੀ ਜ਼ਿੰਦਗੀ ਆਪਣੇ ਥੰਮਿਆ ਨਹੀਂ ਥੰਮਣੀ ਕਈ ਵਾਰ ਪਤੇ ਦੀ ਗੱਲ ਕਰਦਾ ਆਪਣੇ ਬਲ ਕੋਸ਼ਿਸ਼ ਕਰਿਆ ਕਰੋ ਕਿ ਵਧੀਆ ਕਰ ਲਈਏ ਬਸ ਇਹੋ ਵੀ ਨਾ ਸੋਚਿਆ ਕਰੋ ਫਲਾਣ ਨੇ ਮੈਨੂੰ ਐ ਕਹਿਤਾ ਫਲਾਣ ਨੇ ਮੈਨੂੰ ਐ ਕਹਿਤਾ ਇਹ ਚਿੰਗ ਫੁੰਗਲੀਆਂ ਐਂ ਆਲੇ ਦੁਆਲੇ ਤੁਰਦੀ ਫਿਰਨੀ ਐ ਤੇ ਨਾਲ ਕੋਸ਼ਿਸ਼ ਕਰੀਏ ਕਿ ਆਪਾਂ ਵਧੀਆ ਰਹੂਗੀ ਕ ਤੇ ਬਾਕੀ ਹੋਰ ਇੱਕ ਮਨਪੀਤ ਸਿੰਘ ਬਰਾੜ ਜਨਮ ਦਿਨ ਹੈ ਰਾਜੋਵਾਲਾ ਪਿੰਡ ਐ ਫਰੀਦਕੋਟ ਜ਼ਿਲ੍ਹਾ ਮਿਸ਼ਨ ਚ ਨੇ 5-10 ਜਾਂ ਫੇਸਬੁਕ ਤੇ ਬੰਦੀ ਸਾਲ ਹਾਜ਼ਰੀ ਰਹਿੰਦੇ ਵੱਡੇ ਭਾਈ ਸਤਿਕਾਰ ਲੈਂਦੇ ਆ ਇਹ ਨਿੱਕੇ ਦੇ 5-7 ਰਵਨਦੀਪ ਜਵੰਦਾ ਵੀ ਉਹਦੇ ਚੋ ਹੈ ਤੇ ਇਹ ਛੋਟੇ ਭਾਈਆਂ ਦੀ ਇੱਕ ਫੌਜ ਆਪਣੀ ਵਾਲੇ ਵਾਲੇ ਐਨ ਕਨਾਤਰੇ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 ਕੋਈ ਨਹੀਂ ਆਪਣੇ ਆਪ ਨੂੰ ਕਹਿੰਦਾ ਹੀਰ ਗੁਆਰਡ ਚ ਵਧੀਆ ਲੱਗਦੀ ਆ ਘਰੇ ਹੀਰ ਨਹੀਂ ਵਧੀਆ ਲੱਗਦੀ ਪਰ ਜਿਗਰੇ ਦੇ ਨਾਲ ਬੋਲਣਾ ਇਹ ਬਹੁਤ ਵਧੀਆ ਗੱਲ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਅਮਨ ਖੜਕੜ ਪ੍ਰੋਗਰਾਮ ਦੇ ਸਪான்ਸਰ ਨੇ 6 4825 13 14 ਕੋਈ ਵੀ ਕਿਸੇ ਕਿਸਮ ਦੀ ਤੁਸੀਂ ਲੈਣੀ ਹੈ ਤਾਂ ਅਮਨ ਖੜਕੜ ਦੇ ਤਿੰਨ ਦਫ਼ਤਰ ਨੇ ਸਰੀਆ ਬੈਨਕੂਵਰ ਦੇ ਵਿੱਚ ਤੇ ਜਿੱਥੇ ਤੁਸੀਂ ਮੋਰਗੇਸ ਦੇ ਲਈ ਉਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਫੋਨ 6048251314 ਹੈ ਅਮਨ.ca ਉਹਨਾਂ ਦੀ ਵੈਬਸਾਈਟ ਹੈ ਪ੍ਰਾਪਰਟੀ ਜਿਹੜੀ 1583840 ਐਵਨਿਊ ਤੇ 99 ਕਿੱਲੇ ਤੇ 22 ਲੱਖ 80 ਹਜ਼ਾਰ ਦੀ ਹੈ ਨਾਗਰਾ ਦਾ ਨੰਬਰ ਹੈ ਤੇ ਬਿਲਕੁਲ ਲੈਵਲ ਕੋਈ ਵਿੱਚ ਦੀ ਤਰੀਕ ਨਹੀਂ ਕੋਈ ਵੀ ਜਗਾ ਵੇਸਟ ਨਹੀਂ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 ਉਹ ਮੈਂ ਕਿਹਾ ਸਕੂਲ ਪਾਉਣਾ ਹੈ ਇਹ ਪ੍ਰਾਇਮਰੀ ਸਕੂਲ ਖੋਲਣਾ ਹੈ ਉਹ ਦਿੱਲੀ ਸਾਡੇ 6 ਰੱਖਿਓ ਇਹਨਾਂ ਸਕੂਲਾਂ ਚ ਸਿੱਖਿਆ ਕੀ ਆਊ ਇਹਨਾਂ ਸਕੂਲਾਂ ਚੋਂ ਗਾਂ ਨੂੰ ਕਿੱਥੇ ਨੂੰ ਲੋਕ ਜਾਣਗੇ ਤੇ ਇਹਨਾਂ ਨੂੰ ਥੱਬੇ ਦੇ ਦੇ ਉੱਥੋਂ ਭੇਜ ਕੌਣ ਰਿਹਾ ਥੋੜੀ ਜੀ ਨਿਗ੍ਹਾ ਰੱਖਿਓ ਇਹ ਚੱਲਣ ਲੱਗੇ ਆ ਹੋਇਆ ਹੁਣ ਕੰਮ ਇਹ ਸਕੂਲਾਂ ਦੇ ਪਿੱਛੇ ਲੋਕ ਪਏ ਹੋਏ ਨੇ ਹੁਣ ਤੇ ਜੇ ਜੇ ਸਿੰਘ ਗਾਲਾਂ ਕੱਢ ਰਿਹਾ ਅਸੀਂ ਐਉਂ ਕਰ ਦਿੰਨੇ ਆ ਅਸੀਂ ਫਰਾਕ ਕਰ ਦਿੰਨੇ ਆ ਅਸੀਂ ਸਿੰਘਾਂ ਵਾਲਾ ਕੰਮ ਕਰਦੇ ਹਾਂ ਹਰ ਗੱਲ ਬੰਦਾ ਇਹ ਕਮਿਸ਼ਨਡ ਪੜ੍ਹਾਈ ਕੀਤੀ ਲਾ ਕੇ ਅਕਲ ਜਿਹੜੀ ਆ ਖੂਚ ਛਿੱਟ ਕੇ ਬੰਦਾ ਗਾਲਾਂ ਕੱਢ ਰਿਹਾ ਅਲਦਾਲੇ ਬੰਦੇ ਬੈਠਿਆ ਅਸੀਂ ਤਾਂ ਕਹਿੰਦੇ ਆ ਨਾ ਬਈ ਧੁੰਨੀ ਤੇ ਕਿਸ ਮਾਰਨਾ ਬੈਲਟ ਤੋਂ ਸੱਲੇ ਕਿਸ ਮਾਰਨਾ ਕਹਿੰਦਾ ਮੈਂ ਨਹੀਂ ਛੜਦਾ ਮੂੰਹੇ ਜਿਹੜਾ ਸਾਊ ਆ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 ਉਨੇ ਖੱਬੀਆਂ ਕੋਲ ਚੱਕ ਕੇ ਫਿਰ ਗੱਲ ਕਰਨੀ ਹੈ ਤੇ ਨਾਲ ਇਹ ਜਿਹੜਾ ਪਿੱਛੇ ਆਪਾਂ ਪਿਆ ਹੋਇਆ ਹੈ ਹਲੇ ਤੱਕ ਦੋਨੇ ਐਮਪੀ ਦੀਆਂ ਇਲੈਕਸ਼ਨਾਂ 'ਚ ਵੀ ਇਹ ਹੋਇਆ 15 ਦਿਨ 15 ਦਿਨ ਪਹਿਲਾਂ ਇਹਨਾਂ ਦੇ ਨਾਂ ਆਉਣਗੇ ਫਿਰੇ ਭੱਜੇ ਫਿਰਨਗੇ ਕੁਛ ਨਹੀਂ ਵੱਟੀ ਦਾ ਤੇ ਨਵਜੋਤ ਵੀ ਉਧਰ ਤਿਆਰੀ ਹੈ ਇਧਰਲੇ ਬੰਨੇ ਕਦੇ-ਕਦੇ ਕੇਸਦੀਵਾਲ ਵਾਲੇ ਵੀ ਲੋਕ ਕਹਿੰਦੇ ਨੇ ਕਿ ਜਿਹੜੀ ਐਨਜੀਓ ਚਲਾਈਆ ਵਿਵੇਕਾਨੰਦ ਫਾਊਂਡੇਸ਼ਨ ਦਾ ਡਾਇਰੈਕਟਰ ਮੁੱਦਲਾ ਇਹ ਰਿਹਾ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 ਇਨਕਮ ਟੈਕਸ ਦੇ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ ਨੇ 2000 ਤੋਂ 2010 ਤੱਕ ਐਨਜੀਓ ਚ ਕੰਮ ਕੀਤਾ 2010 ਦੇ ਨੇ ਰਾਜਨੀਤੀ ਸ਼ੁਰੂ ਕੀਤੀ ਆ ਇਹ ਪ੍ਰੀਪਲਾਨਡ ਚੀਜ਼ਾਂ ਨੇ ਮੰਨਣਾ ਪਊ ਠੀਕ ਹੈ ਤੀਜੀ ਢੇਰਾ ਪਰ ਸੱਚ ਤੋਂ ਪਿੱਛੇ ਨਾ ਵਟਿਆ ਕਰੋ ਜਿਹੜੀ ਗੱਲ ਸੱਚ ਹੈ ਸੱਚ ਹੈ ਉਹ ਮੈਂ ਇਉਂ ਕਹਿੰਦਾ ਵੀ ਐਨਜੀਓ ਚ ਵੋਲਕਰ ਨਾਲ ਚ ਕੰਮ ਕਰਕੇ ਉਹ ਪ੍ਰਿਸ਼ਟ ਅ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 ਆਮ ਆਦਮੀ ਪਾਰਟੀ ਦੇ ਉੱਪਰਲੇ ਅਫੀਸ਼ੀਅਲਸ ਦਾ ਕੰਮ ਇਹ ਹੈ ਵੀ ਜੇ ਸਾਡਾ ਹੱਥ ਪਹ ਤੇ ਜਾਂ ਕੇਜਰੀਵਾਲ ਆ ਉਹਨਾਂ ਦਾ ਪੰਜਾਬ ਦਾ ਨਿਸ਼ਾਨਾ ਔਰ ਕੇਜਰੀਵਾਲ ਦਿੱਲੀ ਚ ਬਹਿਣਾ ਚਾਹੁੰਦਾ ਇਹ ਬਹੁਤ ਲੰਮਾ ਜਿਹੜਾ ਰਸਤਾ ਹੈ ਉਹਨਾਂ ਦਾ ਔਰ ਕੋਸ਼ਿਸ਼ ਚੱਲ ਰਹੀ ਹੈ ਔਰ ਕੰਮ ਕਰ ਰਹੇ ਨੇ ਪਰ ਇਉਂ ਵੀ ਨਹੀਂ ਹੈ ਵਿਸ਼ਪਾਰ ਦੇ ਮੇਲੇ ਨੂੰ ਕਬੀਸ਼ਰ ਲੋਕ ਬੈ ਲੋਕ ਪਿੱਛੇ ਤੁਰ ਗਏ ਨਹੀਂ ਉਹ ਕਰ ਵੀ ਰਹੇ ਨੇ ਇੱਕ ਚਪੜਾਸੀ ਦੇ ਪੁੱਤ ਨੂੰ ਇੱਕ ਚੌਕੀਦਾਰ ਦੇ ਪੁੱਤ ਨੂੰ ਗੁਰਪ੍ਰੀਤ ਨਹੀਂ ਬਣ ਸਕਦਾ ਚੌਕੀਦਾਰ ਦਾ ਪੁੱਤ ਬਰਾਬਰ ਦੇ ਟੱਬਰ ਇੰਨੇ ਆ ਜਾਂਦੇ ਨੇ ਪਰ ਮੁੰਡਾ ਉਹਨੇ ਧੁੱਕੀ ਕੱਢੀ ਪਈ ਸਾਡੇ ਏਰੀਆ 'ਚ ਇੰਨਾ ਕੰਮ ਕੀਤਾ ਉਹ ਤੇ ਉਹਦੀ ਘਰ ਵਾਲੀ ਇਸ ਤਰ੍ਹਾਂ ਹੀ ਸਮਰਾਲੇ ਤੋਂ ਸਰਵੰਦ ਸਿੰਘ ਮਾਨਕੀ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 ਇਹਨਾਂ ਚ ਕੱਖ ਨਹੀਂ ਇਹ ਬਿਲਕੁਲ ਭਰਾ ਮਾਰੂ ਜੰਗ ਚ ਨਹੀਂ ਪੈਣਾ ਨਾ ਉੱਥੇ ਨਾ ਇੱਥੇ ਇਹ ਬੇਨਤੀ ਮੰਨ ਲਿਓ ਹੱਥ ਜੋੜ ਕੇ। ਅਗਰੰ ਦਾ ਫਿਸ਼ ਤੇ ਚਿਕਨ ਜਲ ਤੋਰੀ ਦਾ ਪਕੌੜਾ ਤੇ ਮੁਰਗਾ ਤੁਹਾਨੂੰ ਦਿੰਦੇ ਆ ਤੇ ਸਪੈਸ਼ਲ ਓਪਨਿੰਗ ਦੇ ਲਈ ਬਹੁਤ ਵਧੀਆ ਖਾਣਾ ਹੈ ਦਾ ਬੜਾ ਮਸ਼ਹੂਰ ਮਹਿਕ ਰੈਸਟੋਰੈਂਟ ਹੈ ਨਵੀ ਮੈਨੇਜਮੈਂਟ ਥੱਲੇ ਆ 94 ਤੇ ਸਕਾਟ ਤੇ 6045853331 ਬਾਰਕਸ ਨੈਸ਼ਨਲ ਵਾਲ ਬਾਰਕਸੋਂ ਨੇ ਆ ਖਬਰਾਂ 'ਚ ਕੁਝ ਗੱਲ ਕਰਦਾ ਤੇ ਨਾਲ ਜਾਇਦਾਦ ਦੇ ਮਲੰਕਣ ਦੀ ਕਲ ਦੀ ਗੱਲ ਚੱਲੀ ਆ ਜਿਹੜੀ ਉਹਨੂੰ ਅੱਗੇ ਤੋਰਨਾ ਤਰੰਜਣ ਬਲੋਂ ਮੁੰਡੇ ਕੁੜੀ ਦੀ ਜਿਹੜੀ ਲੋੜੀ ਹੈ ਉਹ ਇਸ ਵੀਕਐਂਡ ਤੇ ਐ ਤੇ ਕੱਲ ਨੂੰ ਐਮੀ ਘੁੰਮਣ ਸਾਰਾ ਤੇ ਉਸਦੀ ਜਾਣਕਾਰੀ ਦੇਣਗੇ ਕਿ ਇਹ ਕਿਸ ਤਰ੍ਹਾਂ ਹੋ ਰਿਹਾ ਕੀ ਕੀ ਇਸ ਪ੍ਰੋਗਰਾਮ ਦੇ ਵਿੱਚ ਹੋਣਾ ਹੈ ਕੱਲੋਂ ਉਹ ਗੱਲ ਕਰਨਗੇ ਐਮੀ ਘੁੰਮਣ ਹੋਣੀ ਇੱਕ ਬਹੁਤ ਵਧੀਆ ਇਹ ਹੈ ਉਪਰਾਲਾ ਜਿਹਦੇ ਵਿੱਚ ਬੱਚੀਆਂ ਤੇ ਬੱਚੇ ਦੋਨਾਂ ਦੀ ਧੀਆਂ ਪਹਿਲਾਂ ਤੇ ਫਿਰ ਪੁੱਤ ਇਹ ਬਰਾਬਰੀ ਦੀ ਗੱਲ ਹੈ ਅੱਗੇ ਚੱਲਾਂ ਤਾਂ ਉਦੋਂ ਪਹਿਲਾਂ ਕੁਝ ਸਕਾਲਰ ਨੇ ਜੀ ਸਿਮਰਨ ਸਿੰਘ ਜੀ ਲਾਈਨ ਨੰਬਰ 3 ਤੁਸੀਂ ਯਰ ਜੀ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 ਤੁਹਾਡਾ ਸ਼ਾਹ ਤੋਂ ਲੈ ਚਾਚਾ ਜੀ ਪਿਛਲੇ ਦਿਨੀ ਆ ਕੇ ਨੇ ਸੌਰੀ ਡਿਸਕਨੈਕਟ ਹੋ ਗਏ ਮੈਂ ਗੱਲ ਕਰਨੀ ਚਾਹੁੰਦਾ ਸਾਂ ਤੇ ਪਰ ਹਕੀਕਤ ਕੀ ਹੈ ਉਹਦੇ ਬਾਰੇ ਸਿਮਲਰ ਹੋਣੀ ਜਾ ਕੇ ਆਏ ਆ ਕਿ ਬਾਕੀ ਕਹਿੰਦੇ ਬਹੁਤ ਘੱਟ ਆਮ ਆਦਮੀ ਪਾਰਟੀ ਦਾ ਲੋਕਾਂ ਚ ਹਲਾਰਾ ਬਹੁਤ ਹੈ ਹਲਾਰਾ ਪੰਜਾਬੀਆਂ ਦਾ ਜਿਹੜਾ ਇਹ ਮੈਂ ਇਸ ਤੋਂ ਡਰਦਾ ਹੈ ਕਈ ਵਾਰ ਹਲਾਰੇ ਹੁੱਲੇ ਹਲਾਰੇ ਜੋਗੀ ਰਹਿ ਜਾਂਦੇ ਆ ਕੁਲਵੰਤ ਸਿੰਘ ਜੀ ਲਾਈਨ ਨੰਬਰ 4 ਤੁਸੀਂ ਇਰ ਤੇ ਹਾਂਜੀ ਸਤਿ ਸ੍ਰੀ ਅਕਾਲ ਜਨਾਬ ਤੁਸੀਂ ਗੱਲ ਕੀਤੀ ਸੀ ਕੇਸਰੀਵਾਲ ਸਾਹਿਬ ਦੀ ਹੁਣੇ ਕਾਲਰ ਆ ਗਿਆ ਕਿ ਬੜਾ ਜੋਰ ਹੈ ਪੰਜਾਬ ਦੇ ਅੰਦਰ ਮੈਂ ਦੋ ਤਿੰਨ ਗੱਲਾਂ ਸੋਚਦਾ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 ਪੰਜਾਬ ਵਾਲਦੋਈ ਮੂੰਹ ਕੀਤਾ ਸਿਰਫ ਕਿਉਂਕਿ ਪੰਜਾਬ ਦੇ ਅੰਦਰ ਲੋਕ ਜਿਹੜਾ ਅੱਕੇ ਪਿਆ ਕਾਂਗਰਸ ਤੋਂ ਵੀ ਤੇ ਅਕਾਲੀ ਦਲ ਤੋਂ ਵੀ ਜਿੱਦਾਂ ਕਹਿੰਦੇ ਕੋੜੀ ਬੰਦਾ ਕਪੜੇ ਬਦਲ-ਬਦਲ ਕੇ ਤੰਗ ਆ ਜਾਂਦਾ ਉਸ ਤਰੀਕੇ ਨਾਲ ਉਹ ਕੋੜੀ ਬੰਦੇ ਜਿਹੜੇ ਤੰਗ ਆਏ ਹੋਏ ਆ ਵੀ ਅਸੀਂ ਕੋਈ ਹੋਰ ਲੈ ਕੇ ਆਣੇ ਬੰਦਾ ਸਿਰਫ ਇਹ ਹੀ ਦਿਮਾਗ ਜਾਂਦੇ ਗੱਲ ਹੈ ਚਾਹੇ ਤੀਜਾ ਕੋਈ ਬੰਦਾ ਹੋਵੇ ਸੋ ਇਸ ਕਰਕੇ ਜਿਹੜਾ 4 MP ਦੀਆਂ ਸੀਟਾਂ ਨੂੰ ਉੱਥੇ ਮਿਲ ਗਈਆਂ ਤਾਂ ਜਿੱਦਾਂ ਕਹਿੰਦੇ ਆ ਕਿ ਉਂਗਲ ਪਕੜਾਈ ਤੇ ਬਾਹ ਫੜਨ ਨੂੰ ਫਿਰਦੇ ਆ ਸੋ ਉਹ ਹਾਲਤ ਹੋ ਰਹੀ ਆ ਆਦਰਵਾਇਸ ਜੇ ਤੁਸੀਂ ਸੋਚੋ ਕਿ ਵੀ ਇਮਾਨਦਾਰ ਬੰਦੇ ਆ ਜਾਂ ਕੋਈ ਇਹ ਕੁਝ ਕਰਕੇ ਦਿਖਾ ਲੈਣਗੇ ਤੋਂ ਮੈਨੂੰ ਨਹੀਂ ਨਜ਼ਰ ਆਉਂਦਾ ਕੋਈ ਉਹ ਗੱਲ ਜੇ ਇਮਾਨਦਾਰ ਹੁੰਦੇ ਨੇ ਯੂਪੀ 'ਚ ਖੜੇ ਹੁੰਦੇ ਉਹ ਜਾਂ ਹੋਰ ਸਟੇਟਾਂ 'ਚ ਵੀ ਖੜੇ ਹੁੰਦੇ ਪਰ ਪਿਆਰ ਨਹੀਂ ਕਿ ਪੰਜਾਬ 'ਚ ਮੈਂ ਸਿਰਫ ਦੇਖਿਓ ਚੱਲ ਜਾਂਦਾ ਕੇਸਰੀਵਾਲ ਸਾਹਿਬ ਬਾਰੇ ਕਿ ਇਹ ਬੰਦਾ ਮੌਕਾ ਪ੍ਰਸਤ ਬੰਦਾ ਸਿਰਫ ਮੌਕਾ ਪ੍ਰਸਤ ਜਿਨੂੰ ਕਹਿ ਸਕਦਾ ਮੈਂ ਇਮਾਨਦਾਰੀ ਵਾਲੀ ਗੱਲੇ ਦੇ ਅੰਦਰ ਕੋਈ ਨਹੀਂ ਆ ਗਈ ਸਿਰਫ ਮੌਕਾ ਤੇ ਕੈਸ਼ ਕਰ ਲਿਆ ਮੌਕਾ ਉਹਨੇ ਲੋਕਾਂ ਦੀ ਜਿਹੜੀ ਪੀੜ ਸੀ ਉਹਨੂੰ ਸੰਭਾਲ ਲਿਆ ਤੇ ਫਿਰ ਸਾਰੇ ਮੌਕਾ ਚੱਕਦੇ ਆ ਸਾਰੇ ਲੀਡਰ ਹੋਰ ਖੜਕਾਉਂਦੇ ਉਹ ਵੀ ਮੌਕਾ ਹੀ ਚੱਕਦੇ ਆ ਤੇ ਕੇਜਦੀਵਾਲ ਨੇ ਚੱਕ ਲਿਆ ਫੇਰ ਕੀ ਔਖਾ ਹੋ ਗਿਆ ਇੱਦਿ ਦੇਖੋ ਇਹ ਹੋ ਗਿਆ ਮੈਂ ਗੱਲ ਤੁਹਾਨੂੰ ਇਹ ਮੋਟੀ ਜਿਹੀ ਸਮਝਾਣਾ ਚਾਹੁੰਦਾ ਵਾਂ ਕਿ ਇਮਾਨਦਾਰ ਜਿਸ ਤਰ੍ਹਾਂ ਅਸੀਂ ਸੋਚਦੇ ਆ ਕਿ ਵੀ ਇਮਾਨਦਾਰ ਬੰਦਾ ਇਮਾਨਦਾਰ ਨਹੀਂ ਹੈ ਮੌਕਾ ਵੋਟ ਮਿਲ ਜਾਣੀ ਸੀਗੀ ਜਾਂ ਹੋਰ ਕਿਹੜਾ ਜਿਹਾ ਹੋ ਰਹੀਆਂ ਉਹ ਓਕੇ ਜੀ ਥੈਂਕ ਯੂ ਜੀ ਧੰਨਵਾਦ ਤੁਹਾਡੀ ਗੱਲ ਮੈਂ ਸਮਝ ਗਿਆ ਸਾਹਿਬ ਸਾਬ ਪਰ ਰਾਜਨੀਤਿਕਤਾ ਹੈ ਰਾਜਨੀਤੀ ਉਹ ਕਰਦੇ ਆ ਕਈ ਵਾਰ ਸ਼ੁਰੂ ਸ਼ੁਰੂ ਚ ਬਹੁਤ ਬੜਾ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 ਲੋਕ ਉੱਥੇ ਹੀ ਆਉਂਦੇ ਆ ਤੁਸੀਂ ਸਿਆਣੇ ਆ ਤੁਸੀਂ ਉੱਥੇ ਹੀ ਗੱਲ ਕਰਨੀ ਚਾਹੁੰਦੇ ਹੋ ਜਿੱਥੇ ਸਿਆਣੇ ਤੁਹਾਡੀ ਗੱਲ ਸੁਣ ਮੇਰੇ ਖਿਆਲ ਇਹ ਹੀ ਕਾਰਨ ਹੋ ਸਕਦਾ ਹੈ ਕਿ ਕਿਵੇਂ ਨਾ ਕਿਵੇਂ ਹਰਜੀਤ ਸਿੰਘ ਦੀ ਲਾਈਨ ਸਿੰਘ ਜੀ ਅਰ ਜੀ ਯੂਪੀ ਜੀ ਨਹੀਂ ਲੜੇ ਦੇਖੋ ਇਹ ਪਾਰਟੀ 2-3 ਸਾਲ ਪਹਿਲੇ ਬਣੀਆ ਤੇ ਚੋਣਾਂ ਲੜਨ ਲਈ ਥੰਡ ਚਾਹੀਦਾ ਉੱਥੇ 400 ਸੀਟਾਂ ਨੇ ਉੱਥੇ ਟਰੱਕ ਨੋਟਾਂ ਦਾ ਚਾਹੀਦਾ ਉੱਥੇ ਲੈਕਚਰ ਲੜਨ ਲਈ ਤੇ ਇਹਨਾਂ ਸੌਕਾਂ ਨੇ ਵੀ ਲੜ ਲਓ ਤੇ ਬਾਕੀ ਦੂਜੀ ਗੱਲ ਦੋ ਤਿੰਨ ਘਟਨਾਵਾਂ ਹੋਈਆਂ ਨੇ ਇਹਦੇ ਵਿੱਚ ਦੇਖੋ ਇੱਕ ਪਾਸੇ ਤਾਂ ਕਈਆਂ ਨੇ ਭਗਵਾਨ ਤੁਹਾਨੂੰ ਨੂੰ ਤਾਂ ਐਵੇਂ ਲਤੀਵੇ ਸੌਣ ਜਾਂਦੇ ਆ ਲੋਕ ਉਹਦੇ ਪਿੱਛੇ ਬੋਟ ਵਾਰ ਨਹੀਂ ਪਾਉਣੀ ਤੇ ਉਹਦੇ ਕਹੇ ਤੇ ਵੀ ਬਟਨ ਦੱਬ ਕੇ ਬੋਟ ਨਹੀਂ ਪਾ ਸਕਦਾ ਉਹਦੇ ਕਹੇ ਤੇ ਚਾ ਕੇ ਡੜਾ ਸੁੱਕੇ ਮੈਨੂੰ ਇਹ ਨਹੀਂ ਸਮਝ ਲੱਗਦੀ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 ਆਪਾਂ ਅਵਸਰ ਤੇ ਹੋਣ ਵਾਲੇ ਵਿੱਚ ਇਨਸਾਨ ਲੈਂਦੇ ਰਹੇ ਪਿੰਡਾਂ ਦੇ ਵਿੱਚ ਲੋਕ ਇੰਨਾ ਜਾਵੇ ਅੰਗਰੇਜ਼ ਨਹੀਂ ਹੁੰਦੇ ਵੀ ਇੱਕ ਦੂਜੇ ਨੂੰ ਕੁੱਟਣ ਮਾਰਨ ਲੱਗ ਜਾਣ ਉਹਨਾਂ ਦਾ ਵਿਰੋਧ ਸ਼ੁਰੂ ਕਰ ਦਿੰਦੇ ਆ ਲੀਡਰ ਆਏ ਤਾਂ ਉਹਦੇ ਰੋੜੇ ਮਾਰਨ ਲੱਗ ਜਾਣ ਵਿਰੋਧ ਜ਼ਰੂਰ ਹੁੰਦਾ ਪਰ ਇਹ ਮੈਨੂੰ ਲੱਗਦਾ ਕੋਈ ਸ਼ਾਸਤ ਸ਼ਾਸਤ ਹੈ ਦੇ ਵਿੱਚ ਕੋਈ ਇੰਨੀ ਵੱਡੀ ਗੱਲ ਨਹੀਂ ਨਾਲੇ ਦੂਜਾ ਇਹ ਸਰਕਾਰੀ ਬੰਦੇ ਦੇ ਛੇ ਮੋੜੇ ਮਲਾਹ ਕੁੱਤੇ ਦੇ ਕੋਈ ਛੋਟੀ ਨਹੀਂ ਮਾਰਦਾ ਹੈਗਾ ਪੰਜਾਬ ਦੇ ਵਿੱਚ ਇਹ ਚੀਫ ਨੈਸਰ ਦੇ ਮਾਰਿਆ ਵੀ ਇਹ ਬਹੁਤ ਵੱਡੀ ਕੋਈ ਲੱਗਦਾ ਪਲਾਨ ਹੌਲੀ ਹੌਲੀ ਪਤਾ ਲੱਗੂ ਜੀ ਦਾ ਥੈਂਕ ਯੂ ਜੀ ਬਿਲਕੁਲ ਜੀ ਇੱਕੋ ਭਾਈ ਅਮਰੀਕਾ ਦੇ ਨਾਲੇ ਦਾ ਮੈਂ ਹੂੰ ਦਰਦਾ ਆਣਦਾ ਰਜਵੀਰ ਸੇ ਅਰਾਜਵੀਰ ਸਿੰਘ ਜੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਛੋਟਕ ਆ ਪਹਿਲਾਂ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 ਆ ਬਾਈ ਪਹਿਲਾਂ ਬਹੁਤ ਵਧੀਆ ਗੱਲ ਕਰ ਰਿਹਾ ਕਿ ਮੈਂ ਇਹੀ ਕਹਿਣੀ ਸੀ ਉਹਦਾ ਕੰਮ ਵੀ ਉਹ ਭਗਵਾਨ ਦਾ ਮਨ ਉਹਨੂੰ ਐਵੇਂ ਲਤੀਫੇ ਸੁਣਨ ਜਾਂਦੇ ਆ ਹੁਣ ਕਹਿੰਦੇ ਉਹਦੇ ਕਹਿਣ ਤੇ ਰੋੜੇ ਮਾਰਦੇ ਜੇ ਬਾਈ ਉਹਦੇ ਕਹਿਣ ਤੇ ਰੋੜੇ ਮਾਰਦੇ ਤੇ ਵੋਟਾਂ ਵੀ ਅਗਲੇ ਠੋਕ ਪਾਉਣਗੇ ਤੇ ਬਾਕੀ ਹਰ ਨੇ ਬੜੇ ਦੂਜਾ ਕਹਿੰਦੀ ਆ ਵੀ ਜੇ ਕਹਿ ਤਾਂ ਕਾਲਿਆਂ ਨੂੰ ਵੀ ਇਹਨਾਂ ਨੇ ਮੂੰਹ ਦਿਖਾਉਣ ਦੇ ਕਾਬਲ ਨਹੀਂ ਇਹਨਾਂ ਨੂੰ ਤਾਂ ਜਾਨੋਂ ਮਕਾ ਦੇਣਾ ਉਹਨੂੰ ਬਹੁਤ ਵੱਡੀ ਗਲਤਫਹਿਮੀ ਜਿ ਫੈਰਦੀ ਆ ਉਹਨੂੰ ਕਹਾਂ ਉਹ ਬਾਦਲ ਜਦੋਂ ਸੰਗਤ ਦਰਸ਼ਨ ਕਰਨ ਆਉਂਦਾ ਮੂਰੇ 56 ਜਿਆ ਹਜੇ ਲੱਗਾ ਹੁੰਦਾ ਉਹਦੇ ਉਹਨੂੰ ਕਹ ਉਹ ਚੱਕ ਕੇ ਸੰਗਤ ਦਰਸ਼ਨ ਕਰੇ ਜੇ ਇੰਨੀ ਹਿੰਮਤ ਆ ਆਪਣੇ ਦਾ ਜਾਣ ਇਹ ਤੇ ਇੰਨੀ ਫੋਰਸ ਫਿਰਦੇ ਆ ਇਹਨਾਂ ਤਾਂ ਵਜਦੇ ਆ ਛੇਤਰ ਆਲਾ ਨਾ ਦੇਖਣ ਇਹ ਵੇਖਣ ਵਜਦੇ ਕਾ ਤੋਂ ਆ ਨਹੀਂ ਤਾਂ ਕਹਨ ਕੋਈ ਪਰਵਾਹ ਹੀ ਨਹੀਂ ਉਹ ਆਉਂਨਾ ਫਿਰਦੇ ਆਮ ਆਦਮੀ ਪਾਰਟੀ ਵਾਲੇ ਤੇ ਕੋਈ ਹੱਥ ਲਾ ਕੇ ਦਿਖਾਵੇ ਜਦੋਂ ਹਮਲਾ ਕਰਾਇਆ ਵੀ ਇਹਨਾਂ ਨੇ ਕਰਾਉਣਾ ਕੰਮ ਖਰਾਬ ਕਰਾਉਣਾ ਸੋਖਾ ਜ਼ਾਦਰਾ ਵੋਟਾਂ ਗੱਲ ਸਾਬ ਪੈ ਜਾਣ ਤਾਂ ਵੀ ਚੰਗਾ ਲੱਗਦਾ ਨਹੀਂ ਹੈ ਹਿਸਾਬ ਨਾਲ ਥੈਂਕ ਯੂ ਸੋ ਮਚ ਧੰਵਾਦ ਜੀ ਦਰੇ ਹੀ ਹੈ ਕਿ ਹਲੇ ਮੌਜੂਦਾ ਸਰਕਾਰ ਹੈ ਉਹ ਚੋਣ ਹੈ ਤੇ ਕੋਈ ਜੇਹੀ ਗੱਲ ਕੰਮ ਸਰ ਕੋ ਮੰਗਤਾ ਜੀ ਲਾਈਨ ਨੰਬਰ 4 ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਮੈਂ ਆਹਾ ਮੈਂ ਵੀ ਇਹੀ ਗੱਲ ਕਾਣੀ ਸੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਜਿੱਤੀ ਪਈ ਆ ਨਾ ਉਹਨ ਸਾਰੇ ਲੀਡਰ ਕਹਿ ਰਹੇ ਕਾਂਗਰਸੀਏ ਵੀ ਅਕਾਲੀ ਦਲ ਦੇ ਵੀ ਇਹੇ ਬਹੁਤ ਮਾੜਾ ਹੋਇਆ ਬਹੁਤ ਮਾੜਾ ਮਾੜਾ ਇਹਨਾਂ ਨੂੰ ਉਦੋਂ ਨਹੀਂ ਦੱਸਿਆ ਜਿੱਦਾਂ ਕਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਬਾਕੀਆਂ ਪਾਰਟੀਆਂ ਜਦੋਂ ਇਹਨੇ ਸਾੜੀ ਆ ਜਾਂ ਦਰਬਾਰ ਸਾਹਿਬ ਤੇ ਅਟੈਕ ਦੇ ਬੇਲੇ ਇੰਦਰਾ ਗਾਂਧੀ ਤੋਂ ਜਸ ਇਹਨਾਂ ਤੋਂ ਦਸਤ ਇਹਨਾਂ ਨੇ ਦਸਤਖਤ ਕੀਤੇ ਜਾਂ ਇਹ ਆਨੇ ਮਤਲਬ ਉਹਲਾ ਇਹਨਾਂ ਨੂੰ ਇਹ ਨਹੀਂ ਪਤਾ ਸੀ ਆਪ ਫਾਰਮ ਹੋ ਤੇ ਉਧਰ ਕਿਤੇ ਚਲ ਗਿਆ ਹਿੜਿਆਣੇ ਵਾਲ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 ਵੇ ਆ ਕੁਛ ਇਹ ਲੀਡਰ ਕਰਦੇ ਆ ਤੇ ਹੁਣ ਇਹ ਸਾਰੇ ਲੀਡਰ ਇੱਕ ਹੋ ਜਾਈਏ ਆ ਉਹ ਕਹਿੰਦੇ ਜਿਹੜੀ ਆ ਮਾਰੀ ਆ ਇਹ ਬਹੁਤ ਗਲਤ ਕੰਮ ਆ ਇਹ ਇਦਾਂ ਨਹੀਂ ਚਾਹੀਦਾ ਹੁਣ ਇਸ ਵੇਲੇ ਪੋਲਿਟਿਸ਼ੀਅਨ ਕਾਦੀ ਹੋਈ ਇਹ 90 ਸਾਲ ਦਾ ਜਿੱਦਾਂ ਹੋ ਕੇ ਵੀ ਉਹ ਇਦਾਂ ਲੋਕਾਂ ਦਾ ਰਜਾਇਨ ਕਾਦੇ ਨਹੀਂ ਪਹਿਲਾਂ ਕੀਤਾ ਇਹਨੇ ਵੀ ਹੁਣ ਇਹੀ ਗੱਲ ਨਹੀਂ ਹੋਣੀ ਆ ਲੋਕਾਂ ਦਾ ਵਿੱਚ ਲੋਕ ਮੇਰੇ ਹਿਸਾਬ ਦੇ ਨਾਲ ਉੱਥੇ ਦਬਾਇਓ ਆ ਲੋਕਾਂ ਨੂੰ ਮੁੱਦੇ ਅਜੇ ਵੀ ਦੇਦੇ ਆ ਪੰਜਾਬ ਦੇ ਧਾਰਮਿਕ ਦੇ ਤੌਰ ਤੇ ਜਿੰਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਜੇਲਾਂ ਦੇ ਵਿੱਚ ਬੰਦਾਂ ਜਿਹੜੇ ਉਹਨਾਂ ਦੇ ਵਿੱਚ ਗੁੱਸਾ ਹੈਗਾ ਪਰ ਸਿਕورٹی ਲੈ ਕੇ ਦਬਾ ਕੇ ਰਾਜਨੀਤੀ ਕਰਨੀ ਲੰਮੀ ਹਰ ਕਿਤੇ ਪਰਚਾ ਹੋਇਆ ਲੋਕਾਂ ਨੂੰ ਕਹਿੰਦੇ ਕਿ ਕਾਲੀ ਦਲ ਤੇ ਵੋਟ ਆ ਤਾਂ ਤੁਹਾਡੇ ਤੇ ਪਰਚਾ ਹੋਊਗਾ ਹੁਣ ਗਰੀਬ ਬੰਦਾ ਪਠਾਣੇ ਦੇ ਵਿੱਚ ਪਰਚਾ ਚੱਲ ਸਕਦਾ ਉਹਨਾਂ ਥੋੜੇ ਜਿਹਾ ਪੈਸੇ ਹੁੰਦੇ ਆ ਉਹ ਦਬਾਅ ਦੀ ਰਾਜਨੀਤੀ ਇਹ ਕਾਰਨ ਪ੍ਰਕਾਸ਼ ਸਿੰਘ ਬਾਦਲ ਤਾਂ ਇਹ ਮੇਰੇ ਹਿਸਾਬ ਦੇ ਨਾਲ ਬਹੁਤ ਵਧੀਆ ਇਹ काम ਹੋਇਆ ਵੀ ਇਹਨਾਂ ਦੇ ਜਿੱਦਾ ਵਿੱਚ ਦਿੱਤੀ ਪਈ ਇੱਥੇ ਵੀ ਜੇ ਹੁਣ ਇੱਥੇ ਖੜੀ ਕੇ ਆ ਜਾਣ ਨਾ ਇੱਥੇ ਆੜ ਕੇ ਦਿਖਾ ਤੇ ਪ੍ਰਕਾਸ਼ੂ ਬਾਦਲ ਤੇ ਇੱਥੇ ਦੇਖ ਉਹਨਾਂ ਦੇ ਕੀ ਹੁੰਦਾ ਇੱਥੇ ਹਾਲ ਲੋਕਾਂ ਇੱਥੇ ਆਜ਼ਾਦੀ ਆ ਨਾ ਥੋੜਾ ਜਿਹਾ ਰੱਖਣ ਦੀ ਚੰਗਾ ਮੈਂ ਕਹਿੰਦਾ ਇਸ ਕਰਕੇ ਕਹਿੰਦਾ ਵੀ ਬਹੁਤ ਵਧੀਆ ਹੋਇਆ ਜੀ ਧੰਨਵਾਦ ਧੰਨਵਾਦ ਜੀ ਧੰਨਵਾਦ ਸਿੰਘ ਰੰਦਾਵਾ ਜੀ ਹਾਂਜੀ ਜੀ ਸਰ ਲਾਈਨ ਡਿਸਕਨੈਕਟ ਹੋ ਗਈ ਸੀ ਸੋ ਆਪਾਂ ਗੱਲ ਕਰ ਰਹੇ ਸੀ ਤੇ ਤੁਸੀਂ ਸਾਰੇ ਖਿੱਤੇ ਦੇ ਤੇ ਲੋਕ ਜਾਣਦੇ ਆ ਮਾਝੇ ਤੇ ਤੁਹਾਡਾ ਆਪਣਾ ਵਰਗ ਹੈ ਜਿਹਦੇ ਵਿੱਚ ਵਕੀਲ ਨੇ ਪੜ੍ਹੇ ਲਿਖੇ ਨੇ ਲੋਕ ਕੀ ਸੋਚਦੇ ਆ ਅੰਦਰ ਕੀ ਆ ਦਿਲ ਕੀ ਆ ਜੀ ਸਰ ਜੋ ਮੈਨੂੰ ਲੱਗਦਾ ਆ ਉਹ ਇਵੇਂ ਆ ਕਿ ਜਿਹੜੀ ਜਿਹੜਾ ਕਾਂਗਰਸ ਦਾ ਪੱਕਾ ਵੋਟ ਬੈਂਕ ਸੀ ਨਾ ਜਿਹੜੇ ਜਿਹੜੇ ਸ਼ੈਡਿਊਲ ਕਾਸਟ ਮੱਦੀਸ ਇੱਕ ਲੋਕ ਸੀ ਜਾਂ ਜਿਹੜਾ ਕਾਂਗਰਸ ਦਾ ਪੱਕਾ ਵੋਟ ਦੇ ਵਿੱਚ ਲੋਕਾਂ ਨੂੰ ਗੈਸ ਵੰਡਦੇ ਰਹੇ ਆ ਸੋ ਆਮ ਲੋਕਾਂ ਦੇ ਕਹਿਣ ਦੀ ਇਹ ਗੱਲ ਆ ਕਿ ਸਾਨੂੰ 60 ਸਾਲਾਂ ਚ ਅੱਗੇ ਕੋਈ ਮਿਲਿਆ ਸਾਨੂੰ ਆਟਾ ਦਾਲ ਮਿਲ ਜਾਂਦਾ ਆ ਤੇ ਸਾਡੀ ਬਹੁਤ ਵੱਡੀ ਗੱਲ ਇਹ ਮਤਲਬ ਟਰੱਕਾਂ ਦੇ ਟਰੱਕ ਉਹਨਾਂ ਨੇ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 ਤੋ ਕਾਂਗਰਸ ਸਸਾਈ ਦੀ ਰੇਡ ਕੋ ਸਰਕਾਰ ਬਣਾਉਣ ਦੀ ਸਥਿਤੀ ਚ ਨਹੀਂ ਲੱਗ ਰਹੀ ਬਿਲਕੁਲ ਵੈਰੀ ਗੁੱਡ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਬੰਦੇ ਅ ਪਰਿਵਾਰ ਆਪ ਇਹਨਾਂ ਨਿਮਾ ਜੀ ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ ਜੀ ਸਾਹਿਬ ਸਤਿ ਸ਼੍ਰੀ ਅਕਾਲ ਭਾਈ ਤੁਹਾਡੇ ਕੋਲੇ ਹਾਜੀ ਰਿਮੋਟ ਹੁੰਦਾ ਜਦੋਂ ਗੱਲ 'ਚ ਕੱਟਣ ਪਾਉਣ ਨੂੰ ਜ਼ਿਆਦਾ ਨਾ ਹੋਵੇ ਮਾੜਾ ਤੁਸੀਂ ਟਾਈਮ ਦਾ ਦੇਖਿਆ ਕਰੋ ਅਜੀ ਵੀ ਲਾਈਨ ਤੇ ਲੱਗੀ ਹੈ ਲਾਈਨ ਮੈਨੂੰ ਅੱਧਾ ਅੱਧਾ ਘੰਟਾ ਹੋ ਗਿਆ ਜੀ ਡਾਇਲ ਕਰਦੇ ਨੂੰ ਦੂਜੀ ਗੱਲ ਹੋਣਾ ਸੌਰੀ ਜੀ ਸੌਰੀ ਜਿਹੜੀ ਆਣਾ ਜਿਹੜੀ ਜੁੱਤੀ ਸਤਿਕਾਰ ਕਰਨਾ ਚਾਹੀਦਾ ਜਿਹੜਾ ਗੁੱਪਗਵਾਰ ਕੱਟਣਾ ਵੋਟਾਂ 'ਚ ਕੱਢਣਾ ਦੂਜੀ ਗੱਲ ਅੱਖਾਂ ਮੀਚ ਕੇ ਵੀ ਆਮ ਆਦਮੀ ਪਾਰਟੀ ਦੇ ਪਿੱਛੇ ਨਾ ਤਰਪੋ ਜਿਹੜੇ ਵਧੀਆ ਬੰਦੇ ਆ ਉਹਨਾਂ ਨੂੰ ਵੋਟ ਪਾਓ ਜਿਹੜਾ ਲੱਗਦਾ ਵੀ ਸਾਡੇ ਹੁਣੇ ਰਾਏ ਕੋ ਇੱਕ ਦੋ ਹਲਕੇ ਹੈਗੇ ਆ ਜਿਹੜੇ ਪਤਾ ਵੀ ਏ ਉਹ ਬੰਦੇ ਵਧੀਆ ਉਹਨਾਂ ਬੰਦਿਆਂ ਨੂੰ ਨਾ ਵੋਟ ਪਾਓ ਅੱਖਾਂ ਵਿੱਚ ਕੇ ਨਾ ਪਿੱਛੇ ਉਹ ਜਿਹੜੇ ਆਯਾਦ ਵੀ ਖੜੇ ਐ ਇੱਕ ਭਾਈ ਸਾਹ ਆਪਣੇ ਲੇ ਬੰਦੇ ਨਾਲ ਮੈਂ ਫੋਨ ਤੇ ਵੀ ਗੱਲਬਾਤ ਕੀਤੀ ਤੇ ਕੈਂਚੀ ਚੋਨ ਨਿਸ਼ਾਨ ਯਾਰ ਇਹ ਵੀ ਖੜਾ ਕੋਈ ਜਿਹੜਾ ਵਧੀਆ ਬੰਦਾ ਉਹਨਾਂ ਨੂੰ ਵੋਟ ਪਾਓ ਉਸ ਤੋਂ ਬਾਅਦ ਚੋ ਗੱਲ ਆ ਜਾਂਦੀ ਐ ਜਿਹੜੇ ਡਾਲਰ ਸਸਤੀ ਦੁੱਧ ਵੀ ਖੇਲਾਂ ਲੈਣ ਲਈ ਲਾਈਨਾਂ 'ਚ ਖੜੇ ਹੁੰਦੇ ਆ ਅਮਰੀਕਾ ਤੋਂ ਲੈ ਕੇ ਆਉਂਦੇ ਆ ਕੈਨੇਡਾ 'ਚ ਰਹਿੰਦੇ ਆ ਕੰਮ ਕਰਦੇ ਆ ਕੈਨੇਡਾ 'ਚ ਉਹ ਪੰਜਾਬ ਦੀ ਆਰਥਿਕ ਤਸ਼ਾਹ ਸੁਧਾਰਨ ਤੁਰੇ ਆ ਉਹੜਾ ਮੜਾ ਮੋਟਾ ਕੱਲ ਨੂੰ ਹੱਥ ਮਾਰ ਕੇ ਚੱਲਿਓ ਐਵੇਂ ਕਮਲਿਆ ਨੂੰ ਅੱਖਾਂ ਮੀਚ ਕੇ ਨਾ ਤੁਰਿਓ ਤੇ ਐਂ ਕਹਣਾ ਸੀ ਧੰਨਵਾਦ ਵੀਰੇ ਚੰਦਵਾਦ ਜੀ ਐ ਪਾਲ ਜੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਸਤਿ ਕਾਲ ਜੀ ਜੀ ਭਾਈ ਅਖਿਲਾ ਆਪਾਂ ਗੱਲ ਕਰਦੇ ਸੀ ਇੰਨਾ ਅੱਗੇ ਦੇਖਿਆ ਆਪਣਾ ਲੋਕਾਂ ਦਾ ਗੁੱਸਾ ਉਹ ਗੁੱਸਾ ਪੇਟੀ ਵੀ ਦੇਖਿਆ ਗਿਆ ਜਿਹੜੀਆਂ ਫੋਰਸਸ ਪਾਰਟੀ ਦੇ ਹੋ ਅਗੇਂਸਟ ਸਾਰਾ ਕੁਝ ਖੜਾ ਹੋਇਆ ਸੀ ਤੇ ਹੁਣ ਵੀ ਜਿਹੜੀ ਬੇਅਦਵੀ ਹੋਈ ਹੈ ਉਹੀ ਆਪਣੀਆਂ ਸਰਚਾਂ ਦੇ ਵਗੈਰਾ ਜਿਹੜੇ ਇਹਨਾਂ ਨਾਲ ਹੈਗਾ ਜਿਹੜੀ ਕਾਦੀ ਪਾਰਟੀ ਉਹ ਕਿਸਾਨਾਂ ਵਾਸਤੇ ਵੀ ਸੋਸ਼ਲ ਫੈਮਿਲੀ ਖੜੀਆਂ ਕਰ ਰਹੀ ਹੈ ਤੇ ਉਹਨਾਂ ਨੂੰ ਵਿਆਜੀ ਵੀ ਉਹਨਾਂ ਲੋਕਾਂ ਨੂੰ ਪ੍ਰੂਫ ਕਰਨ ਵਾਸਤੇ ਵੀ ਇਹ ਨਾ ਕਿਸਾਨਾਂ ਨੂੰ ਜੀਏ ਕੋਈ ਬਚਾ ਸਕਦੇ ਇਹਨਾਂ ਨੂੰ ਉਹੀ ਪਾਵਰ ਆਈ ਕਰਨਾ ਚਾਹੀਦਾ ਬਾਕੀ ਜਿਹੜੀਆਂ ਕੋਰਟਾਂ ਵੀ ਹੁਣ ਜੋਰ ਲਾਇਆ ਕੋਰਟਾਂ ਵੀ ਕਈ ਤੁਸੀਂ ਫੈਮਿਲੀ ਸੋਸ਼ਲ ਰਿਲੀਜੀਅਸ ਸੈਂਸ ਦੀ ਗੱਲ ਨਹੀਂ ਕਰ ਸਕਦੇ ਉਹ ਵੀ ਕੋਰਟਾਂ ਦੇ ਵਿੱਚ ਵੀ ਉਹ ਵੱਡੀਆਂ ਵੱਡੀਆਂ ਤਾਲ ਸੀ ਇਹਨਾਂ ਨੂੰ ਖਤਮ ਕਰਨਾ ਚਾਹੀਦੀਆਂ ਜਿਹੜੀਆਂ ਰੈਜਿਸ ਬੇਸ ਪੋਲੀਟਿਕਲ ਜਿਹੜੀਆਂ ਪਾਰਟੀਆਂ ਆਈਆਂ ਬਾਕੀ ਰੋ ਤਾਂ ਵੀ ਨੀ ਗੱਲ ਕਰਦੇ ਸੀ ਬਾਜ਼ਲਾਂ ਦਾ ਬਿਜ਼ਨਸ ਹੈਗਾ ਤੇ ਬਿਜ਼ਨਸ ਤਾਂ ਹੋਰ ਵੀ ਹੋਣਗੇ ਭਗਵੰਤ ਜੀ ਮਾਨ ਦੀ ਪ੍ਰਾਪਰਟੀ ਦੇਖ ਲਓ ਵੀ ਉਹਨੇ ਕਿੰਨੇ ਲੱਭੋ ਲੱਭੋ ਕੁਝ ਲੱਭ ਕੇ ਭੇਜੋ ਮੈਨੂੰ ਅੰਕੜਾ ਕਿਹੜਾ ਮਹਿਲ ਬਣਾਇਆ ਤੇ ਕਿਹੜੀ ਬਸ ਚੱਲਦੀ ਹੈ ਤੇ ਕਿੰਨੀ ਜ਼ਮੀਨ ਖਰੀਦੀ ਹੈ ਫਿਰ ਆਪਾਂ ਗੱਲ ਕਰ ਲਾਂਗੇ ਯੋ ਜੀ ਅਜੋ ਅਸ਼ੋਕਾ ਹੋਟਲ ਤੇ ਵੀ ਅਸੀਂ ਕਰਦੇ ਆਂ ਜੀ ਲੱਭਦੇ ਆਂ ਓਕੇ ਪਤਾ ਕਰਦੇ ਆਂ ਇਹ ਅਵਤਾਰ ਸਿੰਘ ਜੀ ਲਾਈਨ ਨੰਬਰ 4 ਸਤਿਗੁਰਾਲ ਜੀ ਸਤਿਕਾਰ ਜੀ ਔਰ ਬੜਾ ਧੰਨਵਾਦ ਤੁਹਾਡਾ ਤੁਸੀਂ ਗੱਲ ਦਾ ਕਰਦੇ ਸਾਡੇ ਅਰਗਿਆ ਕਈ ਵਾਰੀ ਨਿਕੰਮਾ ਦਾ ਬੋਲ ਜਾਂਦੇ ਆ ਮੈਂ ਉਹ ਕਹਿੰਦਾ ਏਡਾ ਨਹੀਂ ਜੁੱਤੀ ਮਾਰਨੀ ਕਿਸੇ ਚੰਗੀ ਨਹੀਂ ਹੈਗੀ ਚਾਹੇ ਕੋਈ ਵੀ ਲੀਡਰ ਹੋਵੇ ਇਹ ਕਰਨੀ ਚਾਹੀਦੀ ਫੇ ਬੰਦਾ ਆਪ ਦੇਖ ਲੈਣ ਲਈਦਾ ਬੰਦੇ ਨੂੰ ਆਪਣੇ ਅੱਲ ਭੇਜੇ ਜਿਹਦੇ ਮੇਰੇ ਵਰਗੇ ਦਾ ਆਪਣਾ ਘਰ ਦੋ ਦੋ ਵਾਰੀ ਵਿਆਹ ਕੇ ਕਰਨਾ ਇੱਕ ਵੀ ਸਾਹਮ ਹੋਈ ਹੋਵੇ ਨਹੀਂ ਨਹੀਂ ਆਪਾਂ ਗੱਲ ਦੇ ਘਰ ਨਹੀਂ ਫਿਰ ਤਾਂ ਸਿਆਤ ਵਿੱਚ ਫਿਰ ਕੀ ਜਾ ਸਕਦਾ ਜੇ ਆਪਣਾ ਘਰ ਹੀ ਨਹੀਂ ਆਪਾਂ ਸਮਝਾਦੇ ਭਾਈ ਜੁੱਤੀ ਮਾਰਨ ਨੂੰ ਇਤਸ਼ਾਪ ਨਹੀਂ ਕਰਨਾ ਚਾਹੀਦਾ ਕਿਸੇ ਵੀ ਕਿਸੇ ਕਰਦੇ ਨਹੀਂ ਪਤਾ ਵੀ ਨਹੀਂ ਲੱਗਦਾ ਜਿਨ੍ਹਾਂ ਦੇ ਜੁੜੇ ਵੀ ਹੋਇਆ 90% ਘਾਟੋ ਕੋਲੇਸ਼ ਹੁੰਦਾ ਨਿਤ ਸਾਰਿਆਂ ਦੇ ਸੋ ਖੜੀ ਰਹਿੰਦੀ ਹੈ ਮੰਨੋ ਨਾ ਮੰਨੋ ਵਪਾਰਕ ਸੰਦੇਸ਼ 7:47 ਮਿੰਟ ਹੋਏ ਆ ਜੀ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 ਇਹ ਵਸਟੇਜ ਤੇ ਗੱਲ ਗੱਲ ਨਹੀਂ ਠੀਕ ਇਹ ਹੁੰਦੀ ਇਹ ਗੱਲ ਜਿਹੜੀ ਸਹੀ ਆ ਉਹ ਸਹੀ ਹੈ ਇੱਜ਼ਤ ਜਿਹੜੀ ਹੈ ਸਾਡੇ ਧਰਮ ਦੇ ਵਿੱਚ ਆਪਣੀ ਸੱਭਿਆਤਾ ਦੇ ਵਿੱਚ ਵੱਡੇ ਦੀ ਇੱਜ਼ਤ ਆ ਠੀਕ ਹੈ ਵਿਚਾਰਾਂ ਦਾ ਪਰਖੇਮ ਤੇ ਵਾਰ ਬਣਾਇਆ ਸੀਐਮ ਜਿਹੜੇ ਹੁਣ ਲੋਕੇ ਸੀ ਜੱਟ ਪਿੰਡਾਂ ਦੇ ਵੱਡੇ ਜਾਂਦੇ ਜੋ ਤੱਕੜੀ ਤੋਂ ਪਰਾ ਹੁੰਦੇ ਸੀ ਉਹ ਕਹਿੰਦੇ ਜਿਹੜੀ ਵੋਟ ਆ ਤੱਕੜੀ ਨੂੰ ਪਾਉ ਹਲੇ ਵੀ ਪਾਉਣਗੇ ਬਹੁਤ ਲੋਕ ਕਿਤੇ ਇਉਂ ਨਹੀਂ ਵੀ ਨਾਸ ਨਹੀਂ ਕਿਸੇ ਚੀਜ਼ ਦਾ ਹੋਣਾ ਠੀਕ ਆ ਨੰਬਰ ਗਰਮ ਹੈ ਪਰ ਇਸ ਗੱਲ ਨੂੰ ਉਤਸ਼ਾਹਤ ਨਾ ਕਰੋ ਪਲੀ ਗੁੱਸਾ ਜੇ ਕਿਉਂਕਿ ਜਦ ਤੇ ਕਿਸੇ ਤੇ ਤੇ ਹੱਥੋਂ ਪਾਈ ਫਿਰ ਕੀਤੇ ਫਿਰ ਆਪਾਂ ਨੇ ਕਹਿਣਾ ਬੰਦਾ ਇਸ ਤਰ੍ਹਾਂ ਨਹੀਂ ਸ਼ਰਦੇਰ ਸਿੰਘ ਜੀ ਲਾਈਨ ਨੰਬਰ 3 ਜੀ ਸਾਹਿਬ ਕਹਿੰਦੇ ਬਾਦਲ ਸਾਹਿਬ ਦੇ ਜੋ ਇਹਨਾਂ ਨੇ ਵੀ ਜਿਹਾ ਹੋਦਾ ਦਾ ਵੀ ਜਿਵੇਂ ਆਪਾਂ ਕਹਿ ਦਿੱਤਾ ਜੋ ਹੁੰਦਾ ਚੰਗਾ ਹੀ ਹੁੰਦਾ ਜੋ ਹੋਣਾ ਵਾ ਹੋ ਕੇ ਸਾਰੀ ਉਮਰ ਪੰਜਾਬ ਦੇ ਸੂਬੇ ਨਾਲ ਧੋਖਾ ਕੀਤਾ ਕੌਮ ਨਾਲ ਧੋਖਾ ਕੀਤਾ ਪਟੇ ਸ਼ਰੋ ਇਹਨਾਂ ਨੇ ਜਿਹਨਾਂ ਲੋਕਾਂ ਤੋਂ ਵੋਟਾਂ ਲਈਆਂ ਉਹਨਾਂ ਨੂੰ ਗੱਡ ਕੇ ਗੋਲੀਆਂ ਚਲਾਈਆਂ ਇਹਨਾਂ ਨੇ ਸੋ ਖਿਆਲ ਹੁੰਦਾ ਠੀਕ ਹੁੰਦਾ ਦੇਖੀ ਅੱਗੇ ਕੀ ਸ਼੍ਰੀ ਅਕਾਲ ਜੀ ਸਾਹਵਿੰਦਰ ਸਿੰਘ ਦੇ ਲਾਈਨ ਨੰਬਰ 4 ਸਤਿ ਆਪਾ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕਿਸੇ ਸਿਆਣੇ ਬਜ਼ੁਰਗ ਦੇ ਜੁੱਤੀ ਮਾਰਨੀ ਤਾਂ ਮਹਾਪਾਪ ਆ ਪਰ ਜਦੋਂ ਦਿੱਲੀ ਦੇ ਜਰਨੈਲ ਸਿੰਘ ਨੇ ਜੁੱਤੀ ਛੁੱਟੀ ਸੀ ਕਰਨ ਲਈ ਤਿਆਰ ਸੀ ਸ਼੍ਰੋਮਣੀ ਕਮੇਟੀ ਤਿਆਰ ਕਰਨ ਲਈ ਤਿਆਰ ਸੀ ਔਰ ਜਰਨੈਲ ਸਿੰਘ ਨੂੰ ਨੌਕਰੀ ਦਾ ਨੌਕਰੀ ਦੀ ਵੀ ਆਫਰ ਕੀਤੀ ਸੀ ਸੋ ਹੁਣ ਜੁੱਤੀ ਮਾੜੀ ਹੋ ਗਈ ਉਦੋਂ ਜੁੱਤੀ ਚੰਗੀ ਸੀ ਸਮਝ ਨਹੀਂ ਆਉਂਦੀ ਰਾਜਨੀਤੀ ਦੀ ਥੈਂਕ ਯੂ ਜੀ ਬਿਲਕੁਲ ਮੇਲਾ ਸਿੰਘ ਲਾਈਨ ਨੰਬਰ 5 ਮੇਲਾ ਸਿੰਘ ਜੀ ਹਾਂਜੀ ਜੀ ਜੀ ਬਾਈ ਜੀ ਪਹਿਲੇ ਮੈਂ ਹੈਗਾ ਆਪਣੇ ਟਾਂਡੀ ਦਾ ਫੈਨ ਪੂਰਾ ਵੱਡਾ ਹੂੰ ਵਾਰੀ ਰੇਡੀਓ ਤੇ ਮੇਰੀ ਬਾਤ ਸੁਣਦੇ ਤੁਹਾਨੂੰ ਜੀ ਬਿਲਕੁਲ ਸੁਣ ਰਹੀ ਆ ਜੀ ਅੱਛਾ ਜੀ ਉਹ ਬੇਨਤੀ ਹੈ ਨਾ ਕਈ ਵਾਰੀ ਨਾ ਯਾਰ ਇਹ ਕਹਿੰਦੇ ਹੁੰਦੇ ਆ ਡਾਂਡੀ ਸਾਹਿਬ ਆਪਣੇ ਜਿਹੜੇ ਕੁੜੀਆਂ ਮੁੰਡੇ ਬਾਹਰੋਂ ਆਉਂਦੇ ਆ ਬਈ ਆਉਣੇ ਵੀ ਮੈਨੂੰ ਬੜਾ ਸਵਾਦ ਆਉਂਦਾ ਪਰ ਜਿਹੜਾ ਇਹ ਬੱਚਿਆਂ ਬਾਰੇ ਬਾਹਰ ਜਿਹੜੇ ਆਉਂਦੇ ਆ ਹੋਰ ਭਰਾ ਵੀ ਕਈ ਕਹਿੰਦੇ ਹੁੰਦੇ ਆ ਕਿ ਉਹ ਬਹੁਤ ਮੁਲਕ ਪਿਆ ਹਜੇ ਇਹ ਉਹਨਾਂ ਨੂੰ ਹੋਰ ਭਾਈ ਕਰ ਤੁਹਾਡੀ ਗੱਲ ਸੁਣ ਲਈ ਸੁਣ ਲਈ ਜੀ ਗੱਲ ਤੁਹਾਡੀ ਸੁਣ ਲਈ ਧੰਨਵਾਦ ਤੇ ਅਗਲੀ ਜਿਹੜੀ ਕੱਲ ਪ੍ਰਾਪਰਟੀ ਅਸੈਸਮੈਂਟ ਦੀ ਗੱਲ ਹੋਈ ਸੀ ਕੋਸ਼ਿਸ਼ ਮੈਂ ਕੀਤੀ ਸੀ ਕਿ ਉਹਨਾਂ ਦਾ ਕੁਝ ਇਹਦੇ ਬਾਰੇ ਪਤਾ ਲੱਗ ਸਕੇ ਉਹਨਾਂ ਨੇ ਕਿਹਾ ਕਿ ਅਸੀਂ ਰੇਡੀਓ ਤੇ ਆ ਕੇ ਦੱਸਾਂਗੇ ਸਾਰਾ ਕੁਝ ਵੇਖਦੇ ਕਿਹੜੇ ਮੰਡੇ ਜਾਂ ਟਿਊਸਡੇ ਕਿਹਾ ਜਿਹਦੇ ਵਿੱਚ ਮੇਅਰ ਹੈਪਨਰ ਟੌਮ ਗੈਲ ਅਕੇ ਦੱਸਣਗੇ ਕਿ ਅਸੈਸਮੈਂਟ ਦਾ ਕਿਵੇਂ ਹੋ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਆ ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੋਏਗਾ ਕਿ ਤੁਹਾਡੀ ਅਸੈਸਮੈਂਟ ਜਿੰਨੀ ਆਈ ਆ ਉਹਦੇ ਤੇ ਅਸੀਂ ਟੈਕਸ ਲਾਵਾਂਗੇ ਅਸੀਂ ਟੋਟਲ ਵੈਲਿਊ ਨੂੰ ਦੇਖ ਸਾਰੇ ਸ਼ਹਿਰ ਦੇ ਵਿੱਚ ਉਹਦੀ ਅਸੈਸਮੈਂਟ ਦੀ ਟੋਟਲ ਵੈਲਿਊ ਕਿੰਨੀ ਆ ਸਾਨੂੰ ਬਜਟ ਕਿੰਨਾ ਚਾਹੀਦਾ ਉਹਦੇ ਨਾਲ ਅਸੀਂ ਉਹਦੀ ਰੇਸ਼ੋ ਲਾਉਨੇ ਆ ਫਿਰ ਤੇ ਜਿਹੜਾ ਪਿਛਲੀ ਵਾਰ ਕੱਲ ਆਪਾਂ ਗੱਲ ਕੀਤੀ ਸੀ ਜਿਸ ਵਿੱਚ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 ਚੀਨ ਦੇ ਵਿੱਚ ਕਪੜਾ ਕਰਕੇ ਆਏ 10 ਮਿਲੀਅਨ ਡਾਲਰ ਲਿਆ ਕੇ ਇੱਕ ਚਾਈਨੀਜ਼ ਨੇ ਚਾਰ ਘਰ ਲੈਦੇ ਕੈਸ਼ ਉਹਦੇ ਪਿੱਛੇ ਚਾਈਨਾ ਦੀ ਸਰਕਾਰ ਬਣੀ ਲੱਖ ਦੇ ਘਰਾਂ ਦੀ ਅਸੈਸਮੈਂਟ ਆ ਗਈ ਦੇ ਵਿੱਚ ਜਿਹੜਾ 14-15 ਲੱਖ ਦਾ ਘਰ ਸੀ ਉਹ 22 ਲੱਖ ਦਾ ਕਰਤਾ ਪੰਜ-ਛਤ ਉਹ ਏਰੀਏ ਦੀਆਂ ਪਰ ਇਹ ਟਰੈਕ ਕੌਣ ਕਰੂ ਇਹ ਸੂਬਾ ਕਿਵੇਂ ਸੋਚੂ ਹੁਣ ਤਾਂ ਲਾਤਾ 15% ਟੈਕਸ ਹੈ ਪਹਿਲਾਂ ਜਿਹੜੀ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 ਜਿਹੜੇ ਵਧੀਆ ਸ਼ਬਦ ਬੋਲਣ ਵਾਲੇ ਨੇ ਮਨਿਸਟਰ ਫਾਸਟ ਬੈਂਡਰ ਆਰਗੇ ਬਹੁਤ ਟਿਕਾ ਕੇ ਅੰਗਰੇਜ਼ੀ ਬੋਲਦਾ ਉਸ ਨੂੰ ਸੁਣਿਓ ਇਹ ਮਲਮਾ ਚੜੀਆਂ ਗੱਲਾਂ ਸੋਨਾ ਪਿੱਤਲ ਚ ਲੁਕਿਆ ਪਿੱਤਲ ਸੋਨੇ ਚ ਲੁਕਿਆ ਇਹ ਇਹ ਗੱਲਾਂ ਨਹੀਂ ਚੱਲਣੀਆਂ ਹੁਣ ਬਿਲਕੁਲ ਐਂਡੀਪੀ ਵਾਲਿਆਂ ਦਾ ਵੀ ਕੰਮ ਸਹੀ ਨਹੀਂ ਹੈ ਇਹਨਾਂ ਨੇ ਵੀ ਪਾਰਦਰਸ਼ੀ ਖਤਮ ਹੋ ਗਈ ਹੈ ਗ੍ਰੀਨ ਟੈਂਪਰ ਦੇ ਵਿੱਚ ਤੁਸੀਂ ਵੇਖ ਰਿਹਾ ਨਾਮੀਨੇਸ਼ਨ ਚ ਇਹ ਕਿਹੜਾ ਚੰਦ ਚਾੜਨ ਲੱਗੇ ਹੋਇਆ ਪਹਿਲਾਂ ਆਪਣੀਆਂ ਬਣਵਾ ਕੇ ਵੋਟਾਂ ਹੁਣ ਲੋਕਾਂ ਲਈ ਨਹੀਂ ਓਪਨ ਹੋਣਾ ਜੇ ਜਿਵੇਂ ਮੈਨੂੰ ਕੇ ਔਸਿਬਲ ਫੇਰ ਨੂੰ ਪੰਜਾਬੀ ਸੂਟ ਪਵਾ ਕੇ ਸੂ ਨੂੰ ਐਂ ਤੇ ਉਹ ਕਰਦੀ ਆ ਤੁਹਾਡਾ ਧੰਨਵਾਦ ਆ ਜੀ ਤੁਹਾਡਾ ਗੁਤਾ ਸਿੰਘ ਸ਼ਾਹ ਉਹਨਾਂ ਦੀ ਕਹਾਣੀ ਜਿਲ੍ਹਾ ਉਹ ਗਰਾਂਮ ਸਿਆ ਮੈਨੂੰ ਉਹ ਤੈਨੂੰ ਰੱਬ ਚੱਕ ਲੈ ਓਠੋ ਓਠੋ ਡੂਮਦਿਆ ਟਬਰਾ ਬਾਹਰ ਜਾ ਕੇ ਬੈਠੋ ਦੇਖੋ ਜਾ ਕੇ ਆਪਾਂ ਗਏ ਸ਼ਾਮ ਸਿੰਘ ਨੇ ਜਿਹਨੂੰ ਗੁਲਾਬਾ ਵੀ ਪਿੰਡ 'ਚ ਕਹਿੰਦੇ ਸੀ ਦਰ ਚ ਆਉਂਦੇ ਤੇ ਮਾਰੀ ਪਰ ਪਾਤਾ ਕੰਧਾਂ 'ਚ ਵੱਜਦਾ ਫਿਰੇ ਹਾਲੇ ਦਿਨ ਦੀ ਲੋ ਵੀ ਨਹੀਂ ਸੀ ਲੱਗੀ ਠੜੀਆਂ ਗੜੀਆਂ ਕੰਧਾਂ ਨਾਲ ਉਸ ਦੀ ਬੂਤ ਹਾਈ ਟਕਰਾ ਕੇ ਉੱਪਰ ਉੱਠ ਰਹੀ ਸੀ ਗਲੀਆਂ 'ਚ ਹਾਲੀ ਤਾਵਾ ਟਾਵਾ ਹੀ ਬੰਦਾ ਦੇਖਦਾ ਸੀ ਖਨਾੜੀਆਂ ਪਾ ਕੇ ਲੋ ਖੇਤਾਂ ਨੂੰ ਜਿਆਦਾ ਪਛੇਤੇ ਜਾਂ ਗੁਰੂ ਸਵਾਰੇ ਕਣਕ ਦੀ ਬਜਾਈ ਕਰਿਓ ਉੱਠ ਖੜਾ ਮਰ ਗਿਓ ਤੁਸੀਂ ਮਰਾਸੀਆਂ ਦੇ ਆ ਨੇ ਇੱਕ ਦੇ ਚੋਰ ਝਾਤ ਗਬਲੀ ਕੰਨ ਤੋਂ ਦੇਖੀ ਕਰਦਾ ਕੀ ਆ ਬਾਹਗਰੂ ਬਾਹਗਰੂ ਜਮਾ ਹੀ ਰਹਿ ਆਈ ਕੱਖ ਨਹੀਂ ਦਮਰੂ ਵਾਂਗੂ ਹਿਲ ਰਿਆ ਤੇ ਹੱਥ ਦੇ ਵਿੱਚ ਸੋਟੀ ਸੀ ਗੁੱਸੇ ਨਾਲ ਚੀਕਦਾ ਆਪਣੀ ਘਰ ਵਾਲੀ ਦੇ ਮੱਜੇ ਵਾਲਾ ਓਲਿਆ ਨਹੀਂ ਕਰਤਾਰੋ ਇਹ ਕਰਤਾਰੋ ਗੁਰੂ ਸਵਾਰਿਆ ਕਬਰਾ ਉੱਠ ਦੇਖੋ ਬਾੜੀ ਮੈਂ ਕਲਪਦਾ ਫਿਰਦਾ ਕੰਜਰ ਪਾਸਾ ਦੀ ਪਾਦਾ ਸੱਦ ਲਜਾਈਆਂ ਦੱਬੀ ਪਏ ਐ ਓਏ ਉੱਠ ਖੜੋ ਮਰਗੇ ਪੱਟੇ ਗਏ ਜਮਈ ਹੱਥਾਂ ਸੋਟੀ ਨਾਲ ਜੀ ਕਰੇ ਡਾਂਗ ਸਾਰਿਆਂ ਦੇ ਸਾਰੇ ਅੰਗ ਕੰਬ ਰਹੇ ਸੀ ਠੰਡੇ ਮੱਥੇ 'ਚ ਮੁੜ ਦੇ ਕਿਣਕੇ ਫੋਟੋਸ ਦੀਆਂ ਅੱਖਾਂ ਲਾਲ ਝੁਕਿਆ ਮਦਰਗ ਸਰੀਰ ਗਮ ਦੇ ਦੁੱਖ ਨਾਲ ਹੋਰ ਝੁਕ ਰਿਹਾ ਸੀ ਦੋਵੇਂ ਹੱਥ ਸੋਟੀ ਦੇ ਨੁਗਗੇ ਨੂੰ ਜਿਗਾ ਕੇ ਸਾਹ ਕਹਦਾ ਜਿਵੇਂ ਝੂਕਣਾਂ ਟੁੱਟਿਆ ਹੋਵੇ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 ਜਰਦਾ ਕੋਈ ਉਹਨੂੰ ਹੱਥ ਪਾਉਂਦਾ ਮਿਰਗਾ ਵਾਂਗੂ ਚੁੰਗੀਆਂ ਭਰਦਾ ਨਰਵੇਂ ਦੇ ਖੇਤਾਂ ਵਿੱਚ ਲਾਟ ਵਾਂਗੂ ਨਿਕਲ ਜਾਂਦਾ ਸਰਪੰਚ ਨੇ ਹਿੰਮਤ ਕਰਕੇ ਉਹਦਾ ਸਦਾ ਵਾਸਤੇ ਘੋਗਾ ਚਿੱਤ ਕਰਤਾ ਮਾਰਤਾ ਕੇਸ ਨਾ ਬਣਤਾ ਬੇੜੇ ਦੇ ਕੁਝ ਬੰਦਿਆਂ ਨੇ ਕੇਸ ਚੁੱਕਿਆ ਉਹ ਇਹ ਵੀ ਕਹਿੰਦੇ ਸੀ ਸਰਪੰਚ ਨੇ ਇਹ ਤਾਂ ਮਾਰਿਆ ਕਿਉਂਕਿ ਚੋਣਾ ਚ ਸਰਪੰਚ ਦੀ ਡਟਕੇ ਨੇ ਵਿਰੋਧਤਾ ਕੀਤੀ ਹੈ ਉਹ ਐਵੇਂ ਨਹੀਂ ਮਾਰਿਆ ਵੋਟਾਂ ਪਉ ਖੜਦਾ ਸੀ ਬਰਾਬਰ ਸਰਪੰਚ ਨੂੰ ਆਇਆ ਸੀ ਵੀ ਮੱਝ ਵੀ ਤੇ ਮੇਰੇ ਬਰਾਬਰ ਤਾਂ ਮਾਰਿਆ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 ਨਾ ਮੈਂ ਪ੍ਰਾਣੇ ਕਾਗਜ਼ ਕਰਕੇ ਅਧਿਆ ਲੈ ਕੇ ਆ ਕੇ ਹੈ ਬਈ ਰੱਬ ਹੋਰ ਸਰਪੰਚ ਕੀ ਹੈ ਇੱਕ ਬੈਠਾ ਆ ਜਾ ਮੇਰੇ ਵਾਲੇ ਪਾਸੇ ਆ ਜਾ ਆਪਣੇ ਵਾਲੇ ਛਤੜੇ ਦੇ ਥੱਲੇ ਚਲਦੇ ਆ ਉਹ ਜੀ ਕੱਪ ਚ ਪਾਈ ਵੀ ਹੈ ਐਨ ਲੀਕ ਕਰਦੀ ਹੈ ਜਦ ਮੂੰਹ ਤੋਂ ਜਾਂਦੀ ਹੈ ਸੌ ਖਾਲਾ ਇਹ ਕੀ ਰਾਤ ਬਣਾਈਆ ਰਾਤ ਇੱਧਰ ਨੂੰ ਆ ਜਾ ਕਰਤਾਰੋ ਗੁੱਸੇ ਹੋ ਮੈਂ ਦਾ ਪੈਸਾ ਰਗਮ ਆ ਰਗਮ ਕੱਢਣੀ ਆ ਜਾ ਕੇ ਕਰੇ ਇਹ ਜੀਆਂ ਗੱਲਾਂ ਹੁੰਦੀਆਂ ਪਰ ਇਸ ਸਾਲੇ ਬਿਮਾਰੀ ਹੈ ਲਪੀ ਹਨਦਰ ਬਹੁਤ ਸਖਤ ਰਾਤਾਂ ਨੂੰ ਢੇੜੇ ਮਾਰਦਾ ਉਹਦੀ ਹਿੰਮਤ ਕਰਕੇ ਪਿੰਡ ਚਮਨਾ ਕੇਵਲ ਇਸ ਪਿੰਡ ਚ ਹਿਲਜੁਲ ਸੀ ਜਿੱਦਣ ਦਾ ਸਰਪੰਚ ਹਜੂਰ ਸਾਹਿਬ ਨੂੰ ਗਿਆ ਉਦੋਂ ਦੇ ਚੋਰ ਪਿੰਡ ਚ ਆ ਬੜੇ ਜਾਨ ਬੜੇ ਜੱਕਾਂ ਤੱਕਾਂ ਕਰਦਾ ਰਿਹਾ ਪਰ ਜੱਕਾਂ ਤੱਕਾਂ ਕਰਕੇ ਕਈ ਸਾਲ ਕੱਢ ਤੇ ਸੁਖ ਉਹਦੇ ਲੋਹੜੀ ਸੀ ਮਗਰਲੇ ਕਤਲ ਦੀ ਪਿੰਡ ਦੇ ਪੈਂਚਿਆਂ ਨੂੰ ਇਕੱਠਿਆਂ ਕਰਕੇ ਕਰੇ ਕਹਿੰਦਾ ਮੈਂ ਚੱਲਿਆ ਜੂਰ ਸਾਹਿਬ ਸਨਾਨ ਕਰਨ ਤੇ ਛੋ ਪਿੰਡ ਤੁਹਾਡੇ ਜਿੰਮੇ ਆ ਖਬਰਦਾਰ ਹੋ ਜਿਓ ਰਫਨਾ ਆਪਣੀਆਂ ਫੁੱਲ ਤਰੂ ਫੇਰ ਕੇ ਰੱਖਿਓ ਚੋਰ ਨਾ ਕਿਤੇ ਪੈ ਜਾਣ ਪਿੱਛੇ ਮੇਰੀ ਕੀਤੀ ਕਰਾਈ ਖੂਹ ਚ ਪਾ ਦਵੂ ਦੋ ਸਾਲ ਨੂੰ ਇਲੈਕਸ਼ਨ ਆ ਕਿਤੇ ਮੇਰਾ ਖਰਾਬ ਕਰਦੇ ਹੂੰ ਕੰਮ ਸਵੇਰੇ ਚਾਹ ਦੇ ਨਾਲ ਟਾਂਕ ਕੇ ਸਰਪੰਚ ਤਿਆਰ ਹੋਇਆ ਬੈਠਾ ਸੀ ਪੂਰਾ ਗੱਲ ਸੁਣ ਲਿਓ ਨਾਲੇ ਨਾ ਬਰਾਨ ਕਰਦੇ ਹੋ ਪਿੱਛੋਂ ਤੂੰ ਗੱਲ ਸੁਣੋ ਭੇਜਦਾ ਗੱਲ ਤੇ ਲਿਆ ਗਿਆ ਦਾ ਖਿਆਲ ਰੱਖੀ ਪਿੱਛੋਂ ਇਹ ਆ ਵੀ ਨਵੀਂ ਹੋਈ ਕੋਈ ਰੌਲਾ ਨਾ ਪਾਈ ਅੱਛਾ ਦੱਬੀ ਦੀ ਹੁੰਦੀ ਆ ਗੱਲ ਆ ਮੈਂ ਤਾਂ ਹੋਰ 4 ਸਾਲ ਐ ਮੇਰੇ ਤੋਂ ਬਾਅਦ ਸਰਪੰਚ ਤੂੰ ਹੀ ਐ ਨਹੀਂ ਨਹੀਂ ਬੜੇ ਭਾਈ ਸਰਪੰਚ ਤੂੰ ਹੀ ਰਹਿਣਾ ਮੇਰਾ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 ਵਰਲੇ ਤੇ ਜਮਾਂ ਦੇ ਕਸੀਰਾ ਵਰਗੇ ਬਾਲਾਂ ਵਾਲੀ ਕਰਨ ਬੜਾ ਦਾੜੀ ਅੱਖਾਂ ਤੇ ਮੂੰਹ ਦਾ ਪਾਣੀ ਸਵੇਰ ਦੀਆਂ ਠਰੀਆਂ ਕਰ ਨਾਲ ਕੰਮ ਕਰਿਆ ਸੀ ਅਚੰਭਾ ਸੀ ਖਸਾਈਆਂ ਦਾ ਮਾਲ ਬੱਕਰੇ ਖਾਣ ਸਰਪੰਚ ਦੀ ਪਾਰਟੀ ਦਾ ਮੈਂ ਪੰਦਾ ਉਹ ਸਾਟਾ ਹੀ ਨੁਕਸਾਨ ਹੋ ਜੇ ਮੈਂ ਤਾਂ ਲੁਕਿਆ ਗਿਆ ਜਮਾਂਈ ਬਈ ਸਰਪੰਚ ਸਾਬ ਹੈ ਨਹੀਂ ਮੈਂ ਖੇੜੇ ਖੂਹ ਚ ਡਿਗਾ ਹੋਣਾ ਉਹਨੇ ਰੋਂਦੂ ਆਵਾਜ਼ ਚ ਕਿਹੜਾ ਸਰਦ ਰੰਗਾ ਮਾਰਾ ਹੋ ਗਿਆ ਚਾਰੇ ਪਾਸੇ ਚੁੱਪ ਲੋਕ ਨੀਵੇਂ ਕਿਉਂ ਲੱਗਿਆ ਪਤਾ ਹੁਣ ਨੁਕਸਾਨ ਕੀ ਹੁੰਦਾ ਹੈ ਕਰਮ ਸਿੰਘ ਨੇ ਕਰੋੜ ਤੇ ਗੱਲ ਰਗੜਾਈ ਉਸਦੇ ਬਜ਼ੁਰਗ ਚਿਹਰੇ ਨੂੰ ਦੇਖਿਆ ਤੈਨੂੰ ਕਰੋੜਾਂ ਆਉਂਦੀਆਂ ਮੈਂ ਮਰਿਆ ਪਿਆ ਤੇ ਉਦੋਂ ਦਾ ਆਇਆ ਸੱਦਿਆ ਜਦੋਂ ਜਦੋਂ ਦਾ ਮੈਂ ਪਿੱਟਦਾ ਸੀ ਜਦੋਂ ਸਾਡੇ ਖੇਤ ਝੁਗੇ ਸੀ ਉਦੋਂ ਦਾ ਸਰਪੰਚ ਵਾਲੇ ਪਾਸੇ ਗੱਲ ਸਿਰ ਤੇ ਡੱਕਾ ਹੁਣ ਕਰਮ ਸਿੰਘ ਦਾ ਵੱਡਾ ਲਾਣਾ ਸੀ ਗੁਜ਼ਾਰੇ ਪੱਖੋਂ ਪਿੰਡ 'ਚ ਸਾਦੇ ਸਾਰੇ ਉਹਦੇ ਘਰ ਸਰਪੰਚ ਦੇ ਉਲਟ ਪੈਸੇ ਤੇ ਬੰਦੇ ਪੂਰੇ ਸੀ ਥੋੜੇ ਦਿਨ ਪਹਿਲਾਂ ਉਹਦੇ ਦੋ ਖੇਤ ਝੁਗਲੇ ਰਾਖੀ ਪੈ ਸੀਰੀਆਂ ਨੂੰ ਪੱਗਾਂ ਨਾਲ ਬੰਨ੍ਹ ਕੇ ਮੁਸ਼ਕਾਂ ਦੇ ਕੇ ਨਰਮੇ ਦੀ ਤਾਲੀ ਨਾਲ ਖੱਬੇ ਖੜੀ ਤਾਲੀ ਨਾਲ ਬੰਨਤਾ ਸਾਰਾ ਪਿੰਡ ਜਾ ਕੇ ਵੇਖਿਆ ਸਾਨੂੰ ਖੋਲਿਆ ਸੀਰੀ ਤਾਂ ਉਸ ਦਿਨ ਦਾ ਉੱਠਿਆ ਨੀ ਉਹ ਤਾਂ ਚੋਰ ਨੂੰ ਵੇਖ ਕੇ ਦਹਿਲ ਗਿਆ ਚੋਰ ਕਾਦਾ ਸੀ 8 ਫੁੱਟ ਲੰਬਾ ਦਿਓ ਵਰਗੇ ਹੱਥ ਉੱਠਾਰਗੇ ਗੋਡੇ ਬੜੇ ਬੜੇ ਪੈਰ ਤੇ ਉਹਦੇ ਉਹਦੇ ਵੱਡੇ ਵੱਡੇ ਪੈਰਾਂ ਨੇ ਬੋੜ ਨਾਲ ਕਾ ਉਹ ਸੀਰੀਓ ਨੇ ਹੱਥਾਂ ਦਾ ਬਧੋ ਤੇ ਨਰਮ ਦਾ ਸਾਰਾ ਖੇਤ ਦੂਰ ਤੱਕ ਖਿਲਦਾ ਨਜ਼ਰ ਆਉਂਦਾ। ਕਰਮ ਸਿੰਘ ਬਾਕੀਆਂ ਨੇ ਥਾਣੇ ਜਾ ਕੇ ਰੌਲਾ ਪਾਇਆ ਥਾਣੇਦਾਰ ਪਿੰਡੇ ਬੌੜਿਆ। ਕਈ ਦਿਨ ੜੀਕਣ ਮਗਰੋਂ ਸਿੰਘ ਉਣੀ ਘਰੇ ਬੈਠੇ ਚਾਚੇ ਦੇ ਕਰਮ ਸਿੰਘ ਕਰੋ ਫਿਰ ਨਾ ਆਉਣਾ ਸਰਪੰਚ ਨੇ ਸਰਪੰਚ ਤਾਂ ਹੈ ਹੀ ਨਹੀਂ ਇੱਥੇ। ਥਾਣੇਦਾਰ ਦੀ ਆੜੀ ਆ ਸਰਪੰਚ ਨਾਲ ਚੱਕੋ ਫਿਰ ਅਸਲਾ ਇਹ ਕਹਾਣੀ। ਚਾਚੇ ਤਾਏ ਦੇ ਪੁੱਤ 11 ਭਾਈ ਰਸਨਾ ਲੈ ਕੇ ਮੋਟਰ ਦੇ ਕੋਠਿਆਂ ਤੇ ਚੜ੍ਹ ਕੇ ਜਾ ਕੇ ਟਿੱਗੀ ਰਾ ਅਤਜਤ ਪੀਰੀ ਬੋਲੀ ਤੀ ਕਰਦੀ ਜਦ ਬੈਂਤਲ ਚੜ੍ਹੀ ਨੂੰ ਮੁਰਕੇ ਕਾਲ ਦੇ ਖੇਤਾਂ 'ਚ ਤਾਂ ਨਾ ਕੋਈ ਗਿਆ ਅੱਜ ਗਲਾਬੇ ਕੱਲ ਉੱਠ ਲਿਆ ਕਨੂ ਸਿਆਂ ਹੁਣ ਮੌਣੋ ਮੇਣੀ ਹੋਣਾ ਨਹੀਂ ਭਾਈ ਇਹਦਾ ਬੰਦੋਬਸ ਕਰੋ ਇਉਂ ਤਾਂ ਘਰੇ ਖੁੱਟੀ ਕੌਡੀ ਨਹੀਂ ਆਉਣੀ ਇੱਕ ਬਜ਼ੁਰਗ ਬੋਲਿਆ ਮੈਂ ਤਾਂ ਪਹਿਲਾਂ ਹੀ ਪਿੱਟੀ ਜਾਣਾ ਕੋਈ ਬੰਦੋਬਸਤ ਕਰੇ ਤਾਂ ਸਹੀ ਪਿੰਡ ਚਾਹੇ ਤਾਕੀ ਨਹੀਂ ਹੋ ਸਕਦਾ ਇੱਕ ਗੱਭਰੂ ਨੇ ਪਿੱਛੋਂ ਥੁੱਕ ਲਾ ਕੇ ਮੁੱਛ ਜੜੀ ਹੋੜੀ ਹੋਊਗਾ ਫਿਰ ਕਾਇਮ ਐਂ ਕਿਵੇਂ ਗੱਲ ਬਣਨੀ ਚਾਹੇ ਜਾਂ ਤਾਂ ਚਸਾਰੇ ਸੌਹਾਂ ਚੱਕੋ ਤੇ ਰਫਲਾ ਲੈ ਕੇ ਚੱਲਿਆ ਕਰੋ ਰਾਖੀ ਤੇ ਨਹੀਂ ਤਾਂ ਘਰੇ ਬਹਿ ਜਾਓ ਫਿਰ ਰਫਲਾ ਦੀ ਕਿ ਲੋੜ ਐ ਉਨੀ ਕੁਝ ਹੁੰਦਾ ਸਾਮ ਸਿੰਘ ਨੇ ਜੁੜੀਆਂ ਬਾਚੀਆਂ ਕਿੰਨੇ ਚ ਰਫਲਾ ਬਿਨਾ ਹੋਣਾ ਲੰਮੇ ਲੰਮੇ ਹੱਥਾਂ ਵਾਲੇ ਸੂਤ ਨਹੀਂ ਆਉਂਦੇ ਬਾਕੀ ਜਿਹੜੇ ਮਗਰ ਪਰ ਇਹ ਖੜੇ ਹੁੰਦੇ ਆ ਉਹ ਸੋਟੀਆਂ ਦੇ ਨਾਲ ਡਕਰੇ ਨੇ ਉਹ ਵੀ ਜਾਣਗੇ ਸੋਟੀਆਂ ਨਾਲ ਨਹੀਂ ਉਹ ਭੱਜਣ ਲੱਗੇ ਜੇ ਤੁਸੀਂ ਫਿਰਦੇ ਹੋ ਇਹ ਤਾਂ ਨਰਿਆਂ 'ਚ ਨਹੀਂ ਪੈਂਦੀ ਕੋਈ 12 ਬੋਰ ਚੱਲ ਜੀ ਦਾ ਪਾਕਿਸਤਾਨ ਮਾਰਨ ਵਾਲਾ ਨਾਂ ਮਾਰਿਆ ਦੋ ਵਰਗਾ ਬੰਦਾ ਉਹਦੇ ਨੇ ਸੱਚਣਾ ਕਿਹੜੇ ਹੋਵੋ ਜੇ ਹੋਣਾ ਪਰ ਸ਼ਾਮ ਸਿਓ ਗਲਾਬਾ ਜਿਹੜਾ ਉਹ ਸਰਪੰਚ ਦੀ ਪਾਰਟੀ ਦਾ ਬੰਦਾ ਸੀ ਉਹਨੂੰ ਐ ਲੱਗੇ ਕਿ ਉਹ ਖਾਣਾ ਉਹ ਚਲੋ ਖੇਤ ਜਾ ਕੇ ਯਾਰ ਪੈੜ ਤਾਂ ਵੇਖੋ ਪਹਿਲਾਂ ਤੁਸੀਂ ਪੈੜ ਵੀ ਨਹੀਂ ਵੇਖਦੇ ਪਹਿਲਾਂ ਖੇਤ ਨੂੰ ਚਲੋ ਖੇਤਾਂ ਦੇ ਨਾਲ ਸਾਰੇ ਤੁਰਪੇ ਖੇਤ ਸਾਰਾ ਇੱਕ ਵੱਢਿਓ ਚੁੜਿਆ ਪਿਆ ਖੁਰ ਵੱਢ ਕੀਤੀ ਪਈ ਜਿਵੇਂ ਸਾਂਹ ਭਿਰਦੇ ਹੋਣ ਮੋٹے ਫੁੱਟ ਚੋਗਲੇ ਬਰੀਕ ਖੰਬੇ ਲਟਕਣ ਗਰਮ ਗਰਨਾਮ ਤੇ ਉਹਦੀ ਮਾਂ ਪਹਿਲਾਂ ਹੀ ਖਾਲੀ ਘੰਡਿਆਂ ਨੂੰ ਖੜਕਦਿਆਂ ਸਿਕਰੀਆਂ ਨੂੰ ਵੇਖਦੇ ਸੀ ਗਰਨਾਮ ਦੇ ਜਵਾਨ ਚਿਹਰੇ ਦੇ ਅਦਾਸੀ ਦਾ ਪਰਛਾਵਾਂ ਖੁੱਬਿਆ ਕਰ ਰਹੀ ਸੀ ਮਾਂ ਪਿਤਰ ਦੀ ਉਹਦੇ ਅੱਖਾਂ ਦਾ ਪਾਣੀ ਮੁੱਕ ਗਿਆ ਰੋਂਦੀ ਗਾਲਾਂ ਕੱਢਦੀ ਦਾ ਸੰਗ ਬਹਿ ਗਿਆ ਬੇੜਾ ਬਹਿ ਜੇ ਜਿਹੜਾ ਮਰ ਗਿਆ ਮੈਂ ਤਾਂ ਕੁੜੀ ਦਾ ਵਿਆਹ ਰੱਖਿਆ ਹੋਇਆ ਤੇਰਾ ਕੱਖ ਨਾ ਰਹ ਗਰਨਾਮ ਬੇਬੇ ਬਸ ਕਰ ਹੋਣਾ ਕੋਈ ਗੱਲ ਨਹੀਂ ਕਰਦੇ ਆ ਹੀਲਾ ਕੋਈ ਆਹ ਬੰਦੇ ਦੀ ਪੈੜ ਐ ਕਿਸੇ ਦੀ ਹਾਂ ਬੰਦੇ ਦੀ ਪੈੜ ਐ ਕਰਨ ਸਿੰਘ ਨੇ ਕਿਹਾ ਇਹ ਉਹੀ ਬੰਦਾ ਹੈ ਉਹ ਕੌਣ ਸ਼ਾਮ ਦੇ ਮੂੰਹ ਕਾਲ ਨਾ ਲੱਕਾ ਦੱਸਾਂ ਕਿ ਉਹ ਦਸਨਾਨੀ ਰਹਿਣ ਦੇ ਰਹਿਣ ਦੇ ਸੁਣ ਕੇ ਲੇਰਾ ਨਿਕਲਣ ਮੁੜ ਕੇ ਮੰਜੀ ਤੋਂ ਨਹੀਂ ਉੱਠੋਣਾ ਅਜੇ ਕੀ ਦੇ ਜਾਂਦੀ ਹੈ ਖੇਤਾਂ 'ਚ ਫਿਰ ਕੇ ਜਦੋਂ ਸਾਰੇ ਵਟ ਤੇ ਆ ਗਏ ਤਾਂ ਇੱਕ ਨੇ ਕਿਹਾ ਸਰਪੰਚ ਸਾਹਿਬ ਆਏ ਬਗੈਰ ਕੁਛ ਨਹੀਂ ਹੋਣਾ ਹਾਂ ਹਾਂ ਹੋ ਡੀਕ ਲੋ ਚਾਰ ਦਿਨ ਮਗਰੋਂ ਸਿਕਰੀਆਂ ਦੀ ਰਾਖੀ ਕਰ ਲਿਓ ਉਹਦੇ ਨਾਲ ਰਲ ਕਰਮ ਸਿੰਘ ਨੇ ਕਿਹਾ ਕਰਮ ਸਿੰਘ ਦੀ ਗੱਲ ਲੋਕ ਸੁਣਦੇ ਨਾ ਵੀ ਵਿਰੋਧੀ ਐ ਤੂੰ ਦਾ ਕਲਮ ਸਿਆ ਹਰ ਵੇਲੇ ਘਰੋੜ ਕੇ ਗੱਲ ਕਰਦਾ ਸਰਪੰਚ ਨੇ ਪਰ ਹੂਰ ਸਾਹਿਬ ਗਏ ਨਹੀਂ ਰਹਿ ਜਾਣਾ ਆਇਆ ਮੈਂ ਸਰਪੰਚ ਤਾਂ ਸੁਣਿਆ ਦੀ ਤੁਨੂੰ ਅਮਲੀ ਦੇ ਮੂੰਹ ਤੋਂ ਖੇਸੀ ਦੇ ਨਾਲ ਮੂੰਹ ਲਕੋ ਕੇ ਕਿਹਾ ਸਾਰੇ ਉਹਦੇ ਆਹੋ ਅੱਜੜ ਕੇ ਮੈਂ ਜਾਦ ਮੈਦਾਨ ਮਾਰਨ ਗਿਆ ਮੈਂ ਸਰਪੰਚ ਦੇ ਮੱਥੇ ਲੱਗੇ ਮੈਂ ਫਤੇ ਬੁਲਾਈਆ ਨਾਲੇ ਕਿਹਾ ਕਰਿਆ ਐ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 ਸਰਪੰਚ ਦਾ ਸੱਚੇ ਦਿਲੋਂ ਹਾਮੀ ਸੀ ਪਰ ਨਾਲੇ ਸਰਪੰਚ ਨੂੰ ਸ਼ੱਕ ਸੀ ਵੀ ਸਰਪੰਚ ਨਾਲ ਤਾਂ ਮੇਰੇ ਨਾਲ ਠੀਕ ਆ ਗਲਾਬੇ ਦੀ ਪਰ ਗਲਾਬੇ ਦਾ ਮੁੱਦਾ ਗਰਨਾਮ ਆ ਜਿਹੜਾ ਹੈ ਉਹ ਕਰਮਸਿਓ ਦੇ ਹੱਕ ਚ ਬੋਲਦਾ ਸਿੱਧੋ ਸਰਪੰਚ ਦੇ ਘਰੇ ਉਹਦੇ ਘਰ ਖੇਤਾਂ ਵਾਲੇ ਵਾਲੇ ਬਾਰੋਂ ਅੰਦਰੋਂ ਬੜੇ ਸਰਪੰਚ ਸਾਹਿਬ ਸਰਪੰਚ ਜੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸ਼ਾਮ ਜੋਦ ਲਾ ਕੇ ਕਹਿ ਰਹੇ ਸੋਟੀ ਨੂੰ ਠੋਡੀ ਨਾਲ ਆਰਾਮ ਨਾਲ ਲੱਤਾਂ ਚੌੜੀਆਂ ਕਰਕੇ ਖੜ ਗਿਆ ਅੰਦਰ ਇਸ ਤਰ੍ਹਾਂ ਉਹਦੇ ਕੁਤਕੁਤियां ਦੇ ਅੰਦਰੋਂ ਨਿਕਲਦੇ ਨਾਲ ਇੱਕ ਗੱਡਾ ਭਰਿਆ ਹੈ ਨਰਮੇ ਦਾ ਉਹਦੇ ਨਾਲ ਹੀ ਆ ਜਾਣਾ ਉਹਦੀ ਉਹਦੀ ਆਵਾਜ਼ ਦੀ ਤੂੜੀ ਵਾਲੀ ਸਵਾਤ 'ਚ ਝਾਤ ਸੀਗੀ ਉਹਦੀਆਂ ਅੱਖਾਂ 'ਚ ਮੂਰੇ ਭੰਬੂ ਤਾਰੇ ਆ ਗਏ ਕੰਨ ਬੰਦ ਪੈਰਾ ਥਲੋਂ ਧਰਤੀ ਰਿਸ ਕੇ ਉਹਨੂੰ ਲੱਗਿਆ ਜਿਵੇਂ ਲੱਤਾਂ ਤੋਂ ਫੜ ਕੇ ਕਿਸਨੇ ਵੰਜ ਕੱਟਤਾ ਹੋ ਸਵਾਤ ਚਕੂਠ ਉਸ ਜਿੰਦਾ ਬੰਦਾ ਬਲਦ ਦੀ ਪੂਛ ਅਰਗੀਆਂ ਮੁੱਛਾਂ ਕਾਲੀ ਪੱਗ ਕਾਲੇ ਚਾਦਰ ਤੇ ਜਲਾਦ ਵਰਗਾ ਲੱਗਦਾ 9 ਗਜਾ ਲੰਬਾ ਗਲਾਬੇ ਸ਼ਾਮੇ ਬਾਬੇ ਦੀ ਥੋੜੀ ਏਟ 베ਰੀ ਦੀ ਛੋਟੀ ਕੁੱਕਣ ਲੱਗੀ ਉਹਦੀਆਂ ਅੱਖਾਂ ਪੱਥਰ ਬਣ ਗਈਆਂ ਉਹਦੀ ਧੜਕਣ ਨਬਜ਼ਾਂ ਬੰਦ ਹੋ ਗਈਆਂ ਉਹ ਜੀ ਹਜੂਰ ਸਾਹਿਬ ਦਰਸ਼ਨ ਕਰਨ ਐ ਅੰਦਰੋ ਚੁੱਲ੍ਹੇ ਦੇ ਨੇੜੇ ਸਰਪੰਚ ਦੀ ਘਰ ਵਾਲੀ ਨੇ ਕਿਹਾ ਸ਼ਾਮੇ ਦੀਆਂ ਪੁਬਤਰੀਆਂ ਅੱਖਾਂ ਵੇੜੇ ਚਾਰੇ ਪਾਸੇ ਘੁੰਮੀਆਂ ਕੱਲਾ ਹੀ ਵੇੜੇ 'ਚ ਖੜਾ ਸੀ ਜਦੋਂ ਸਰਪੰਚ ਦੇ ਬਾਹਰੋਂ ਨਿਕਲਦੇ ਅੱਗੇ ਹੋ ਕੇ ਭਰਦੀ ਆਉਂਦੀ ਸੀ ਗਿੱਲੀਆਂ ਅੱਖਾਂ ਨਾਲ ਦੇਖ ਰੇ ਸੀ ਗਲਾਬਾ ਕੋ ਬੋਲਦਾ ਨੀ ਕਿਸੇ ਨੂੰ ਗੱਲ ਸਮਝ ਨਹੀਂ ਸੀ ਆ ਰਹੀ ਪਰ ਗਲਾਬੇ ਦਾ ਜਿਹੜਾ ਫਿਰ ਤੇ ਮੁਰਮੁਰ ਕੇ ਹਿਲ ਰਿਹਾ ਸੀ ਘਰ ਦੇ ਨੂੰ ਜਾਂਦੇ ਜਲਾਦ ਵਰਗਾ ਬੰਦਾ ਉਹਨੂੰ ਉਹੀ ਬੰਦਾ ਲੱਗ ਰਿਹਾ ਸੀ ਜਿਹਦੀ ਪੈੜ ਉਹਦੇ ਖੇਤਾਂ 'ਚ ਬਪਾਰਖ ਸਨੇਸ਼ ਉਟਸਨ ਸ਼ਾਦ ਹੋਣਾ ਦੀ ਕਹਾਣੀ ਤੁਸੀਂ ਸੁਣ ਰਏ ਸੀ ਜਲਾਦ ਨੌਂ ਗਜਾ ਬੰਦਾ ਜਰ ਬਾਬੇ ਸ਼ਾਮੇ ਨੇ ਦੇਖਿਆ ਉਹ ਖੜਾ ਤੂੜੀ ਵਾਲੇ ਤੱਕੀ ਬਣਿਆ ਹੋ ਗਿਆ ਹਜੂਰ ਸਾਹਿਬ ਗਿਆ ਨਹੀਂ ਅਮਲੀ ਨੇ ਮੂੰਹ ਤੇ ਖੇ ਸਿੱਧੇ ਦੇ ਕੇ ਦਾਸਤਾ ਹੋਲੀ ਦੇ ਕੇ ਕਹਿੰਦਾ ਮੈਂ ਤਾਂ ਸਵੇਰੇ ਜੰਗਲ ਪਾਣੀ ਗਿਆ ਮੈਨੂੰ ਮੱਥੇ ਲੱਗਿਆ ਉਹ ਪਰ ਮੈਂ ਆਵਾਜ਼ ਮਾਰੀ ਸਤਸ੍ਰੀਕਾਲ ਕਿਹਾ ਉਹ ਬੋਲਿਆ ਨਹੀਂ ਢਿੱਲਾ ਹੋਣਾ ਜਦੋਂ ਚੋਰ ਘਰੇ ਬੈਠਾ ਉਹ ਬਾਬੇ ਨੇ ਕਿਵੇਂ ਦੇਖਿਆ ਉਹ ਪੈਰ ਹੱਥੋਂ ਘੁੰਮ ਗਏ ਮਾਲਵੇ ਦੀ ਬੈਲਟ ਦੇ ਵਿੱਚ ਇਹ ਚੋਰਾ ਨੇ ਨਰਮੇ ਚੋਰੀ ਬਹੁਤ ਚੁਗਦੇ ਸਰਾ ਸ਼ਾਦ ਨੇ ਇਸ ਨੂੰ ਬਹੁਤ ਵਧੀਆ ਚਿਤਵੇ ਤੇ ਪਿੰਡ ਦੇ ਵਿੱਚ ਅਕਸਰ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਕਿਸੇ ਵੀ ਵਿਸ਼ੇ ਤੇ ਹੁਣ ਤੁਸੀਂ ਗੱਲਬਾਤ ਤੁਸੀਂ ਸੁਣਾ ਸਕਦੇ ਹੋ ਜੀ ਕੋਈ ਵੀ ਗੱਲ ਵਿਨਿੰਗ ਸਾਹਿਬ ਰੌਣ ਬਿਲਿੰਗ ਹੋਣਾ ਦਾ ਧੰਨਵਾਦ ਹੈ ਪੰਜਾਬ ਗਏ ਹੋਏ ਨੇ ਫਗਵਾੜੇ ਦੇ ਨੇੜੇ ਜੰਡਾਲੀ ਪਿੰਡ ਐ ਉੱਥੇ ਸੁਣ ਰਹੇ ਨੇ ਥੈਂਕ ਯੂ ਸੱਜਿੰਦਰ ਸਿੰਘ ਜੀ ਬਦੇਸ਼ਾਲਾ ਨੰਬਰ 2 ਆ ਸਦਾਰਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਜੀ ਕਹਾਣੀ ਤਾਂ ਤੁਸੀਂ ਵਧੀਆ ਲਿਉਣੀ ਆ ਪਰ ਤੁਹਾਡਾ ਜਿਹੜਾ ਸੁਣਾਉਣ ਅੰਦਾਜ਼ ਆ ਨਾ ਉਹ ਉਹ ਕਹਾਣੀ ਏ ਧੰਨਵਾਦ ਜੀ ਵਾਲੇ ਤੇ ਵੀ ਡਿਪੈਂਡ ਕਰਦਾ ਆ ਧੰਨਵਾਦ ਤੁਹਾਡਾ ਜੀ ਮੈਂ ਥੋੜੀ ਜੀ ਹਕੇ ਗੱਲ ਕਰਨੀ ਚਾਹੁੰਦਾ ਜਿਹੜਾ ਪਹਿਲਾਂ ਤੁਸੀਂ ਗੱਲਬਾਤ ਕੀਤੀ ਤੇ ਬੇਸਡ ਗੱਲ ਕਰੂੰਗਾ ਪਰ ਕਰੋ ਸਾਰੇ ਸਰੋਤਿਆਂ ਨੂੰ ਬੇਨਤੀ ਘਰਾਂ ਦੇ ਓਨਰ ਆ ਸਾਰੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਇਸ ਚੀਜ਼ ਤੇ ਧਿਆਨ ਦੇਣ ਜਿਹੜਾ ਬੀ ਕੀਤਾ ਜੀ ਵੀ 1.6 ਮਿਲੀਅਨ ਥ੍ਰੈਸ਼ਹੋਲਡ ਕਰ ਦਿੱਤੀ 2013 ਤੋਂ ਲੈ ਕੇ 2000 14 ਤੱਕ ਸਦਾਜੀਤ ਸਿੰਘ ਜੀ तकरीबन ਪ੍ਰਾਪਰਟੀਆਂ ਦੀ ਤੇ ਵਿੱਚ 71% ਤੱਕ ਦਾ ਵਾਅਦਾ ਹੋ ਗਿਆ ਹੈ ਕਈ ਘਰਾਂ ਦੇ ਵਿੱਚ ਮੋਸਟਲੀ 50 ਤੋਂ ਲੈ ਕੇ 71% ਕੇ 317 ਤੱਕ ਉਸੇ ਰੇਸ਼ੋ ਦੇ ਨਾਲ ਸਾਡੇ ਟੈਕਸ ਵੱਧ ਰਿਹਾ ਜੀ ਇੱਕ ਟੈਕਸ ਨਹੀਂ ਜਾਂਦਾ ਪ੍ਰਾਪਰਟੀ ਦੇ ਸਰੀ ਦੇ ਸਕੂਲਾਂ ਦਾ ਟੈਕਸ ਸਕੂਲ ਟੈਕਸ ਆ ਉਹਦੇ ਤੇ ਟੈਕਸ ਆ ਉਹਦੇ ਤੇ ਬੀ ਸੀ ਅਸੈਸਮੈਂਟ ਨੂੰ ਵੀ ਪੈਸੇ ਜਾਂਦੇ ਆ ਔਰ ਬੜੀਆਂ ਚੀਜ਼ਾਂ ਦੇ ਪੈਸੇ ਆ ਜੋ ਤੇ ਆ 213 ਤੋਂ ਲੈ ਕੇ 217 ਤੱਕ 19.71% ਵਧਿਆ ਨਹੀਂ ਮਿਲ ਰਹੀ। ਹੂੰ ਦੂਸਰੀ ਜਿਹੜੀ ਗੱਲ ਆ ਜੀ ਵੀ 500 ਤੋਂ 500 ਕੁ ਡਾਲਰ ਬੇਸਿਕ ਹੋਮ ਆਨਰ ਕਰਾਟ ਆ ਤੇ 800 ਕੁ ਡਾਲਰ ਜਾਂ 700 ਕੁ ਡਾਲਰ ਸੀਨੀਅਰ ਹੋਮ ਆਨਰ ਕਰਾਟ ਮਿਲਦੀ ਸਨ। ਜਿਹੜੀ ਕਰਾਦੇ ਉਹਨਾਂ ਦਾ ਉਹਦੇ ਵਿੱਚ ਉਸੇ ਰੇਸ਼ਿਓ ਦੇ ਨਾਲ ਬੀਸੀ ਸਰਕਾਰ ਨੇ ਕਿਉਂ ਨਹੀਂ ਵਾਅਦਾ ਕੀਤਾ ਜੀ ਬੀਸੀ 213 ਤੋਂ ਲੈ ਕੇ 217 ਤੱਕ ਤੀਸਰਾ ਫੈਕਟਰ ਇਹ ਆ ਜੀ ਵੀ ਜੇ ਇੱਕ ਏਰੀਏ ਦੇ ਵਿੱਚ 1000 ਘਰ ਆ ਉਹਦੇ ਚੋਂ 5 ਘਰ ਵਿਕ ਗਿਆ ਜੀ ਉਹ 5 ਘਰਾਂ ਦੇ ਬੇਸ ਦੇ ਉੱਤੇ ਬਾਕੀ ਜਿਹੜਾ 995 ਘਰਾਂ ਦੀ ਪ੍ਰਾਈਸ ਵਧਾਤੀ ਜਾਂਦੀ ਹੈ ਜੀ ਇਹ ਕਿਹੜਾ ਕ੍ਰਾਈਟੇਰੀਆ ਹੋਇਆ ਜੀ 5 ਜਿਹੜੇ ਕੋਲ ਕਈ ਤੇ ਬਾਇਰਾਂ ਦੇ ਕੋਲ ਬਲੈਕ ਮਨੀ ਆ ਜਾਂ ਕਈ ਬੰਦੇ ਆ ਜਿਵੇਂ ਤਾਂ ਕਹਾਣੀ ਆ ਇੱਥੇ ਵੀ 3.5 ਮਿਲੀਅਨ ਦਾ ਬੰਦੇ ਨੇ ਫਰਾਡ ਕਰਕੇ ਦੂਸਰੇ ਕੰਟਰੀ ਕੇ ਕੈਸ਼ ਖਰੀਦਿਆ ਸਰੀ ਦੇ ਵਿੱਚ। ਸੋ ਸਾਰੇ ਆਲੇ ਦੁਆਲੇ ਦੀ ਅਸੈਸਮੈਂਟ ਤਾਂ ਨੇ ਵਧਾਤੀ ਨੇ ਜੀ ਜਿਹਨੂੰ ਬੇਸ ਲੈਂਦੇ ਆ। ਆ ਕਰਦੇ ਆ ਨ ਦਸੰਬਰ ਦੇ ਵਿੱਚ। ਇਹਨਾਂ ਨੂੰ ਅਸੈਸਮੈਂਟ ਕਿਵੇਂ ਪਤਾ ਲੱਗ ਜਾਂਦੀ ਵੈਲਿਊ ਜਦੋਂ ਤੱਕ ਬੀਸੀ ਅਸੈਸਮੈਂਟ ਕਰਦੀ ਜੀ। ਬੀਸੀ ਅਸੈਸਮੈਂਟ ਰਿਲੀਜ਼ ਕਰਦੀ ਆ ਬਾਅਦ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 ਇਹ ਉਸ ਹਾਬਨਾ ਵਧਾਉਣ ਨਾਲ ਕਿ ਮੇਰਾ ਮੇਰੇ ਘਰ ਦੀ ਅਸੈਸਮੈਂਟ ਜਿਹੜੀ ਅਸੈਸਮੈਂਟ ਵਾਲਿਆਂ ਨੇ ਚੱਕ ਕੇ 30 ਤੋਂ 50% ਅੱਪ ਕਰਤੀ ਇਹਨਾਂ ਨੇ ਉਸ ਹਾਬਨਾ ਉਹਨੂੰ ਕਰਨਾ ਜੀ ਹੁਣ ਇਹਨਾਂ ਨੇ ਬਜਟ ਜਿਵੇਂ ਤੁਸੀਂ ਦੱਸਿਆ ਸੀ ਬਜਟ ਉਦੋਂ ਨੂੰ ਆਉਣਾ ਜੀ ਇਹਨਾਂ ਦੇ ਕੋਲ ਟੀਮ ਆ ਬਹੁਤ ਇਹਨਾਂ ਦੇ ਕੋਲ ਦੇ ਹਿਸਾਬ ਨਾਲ ਸਟਾਫ ਆ ਪਾਲਿਸ਼ਡ ਕਰਕੇ ਗੱਲਾਂ ਲੈ ਕੇ ਆਉਣੀਆਂ ਜੀ ਪਾਲਿਸ਼ਡ ਕਰਕੇ ਲੋਕਾਂ ਨੂੰ ਆਨਸਰ ਦੇਣੇ ਆ ਸਾਰਾ ਕੁਝ ਪ੍ਰੀ ਪਲਾਨਡ ਇਹਨਾਂ ਦੇ ਖੜਾ ਦੇਣਾ ਸਾਨੂੰ ਜੀ ਅਸੀਂ ਆਹ ਸਿਟੀ ਦੀ ਆਹ ਇਧਰ ਬਣਾ ਰਹੇ ਉਹ ਬਣਾ ਰਹੇ ਜੇ ਬਣਾ ਰਹੇ ਪਰ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 ਇਹ ਗੱਲਾਂ ਸਾਨੂੰ ਇਹ ਗੱਲਾਂ ਸਾਨੂੰ ਪੁੱਛਣੀਆਂ ਚਾਹੀਦੀਆਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਵੋਟਾਂ ਪਾਉਣੇ ਆ ਵੋਟਾਂ ਪਾਉਣ ਵਾਲਿਆਂ ਨੂੰ ਕਾਉਂਸਲ ਸਿਟੀ ਦੇ ਟੈਕਸ ਬੀਸੀ ਦੇ ਹੋਮ ਆਨਰਜ਼ ਆ ਉਹਨਾਂ ਨੂੰ ਇਸ ਟੈਕਸ ਦੇ ਵਿੱਚ ਕੋਈ ਬ੍ਰੇਕ ਮਿਲ ਸਕੇ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਹਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਮੈਂ ਨਾ ਇਨਫੋਰਮੇਸ਼ਨ ਤੁਹਾਨੂੰ ਦੇਣੀ ਐ ਅਸੈਸਮੈਂਟ ਬਾਰੇ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਕੁਝ ਆ ਜਿਹੜੇ ਇੱਕ ਤਾਂ ਹੁੰਦੀ ਐ ਅਸੈਸਮੈਂਟ ਵੈਲਿਊ ਕਰਦੇ ਆ ਵੈਲਿਊ ਦੇ ਹਿਸਾਬ ਨਾਲ ਜਿੰਨਾ ਇਹਨਾਂ ਨੇ ਪੈਸੇ ਰੀਸ ਕਰਨੇ ਹੁੰਦੇ ਆ ਨਾ ਉਹਨੂੰ ਵਧਾਉਂਦੇ ਘਟਾਉਂਦੇ ਮੈਂ ਤੁਹਾਨੂੰ ਐਗਜ਼ਾਮਪਲ ਪਿਛਲੇ 40 ਸਾਲ ਤੋਂ ਹਾਂਜੀ 25 ਸਾਲ ਤੋਂ ਮੈਂ ਰੀਅਲ ਟਰਵੀਐਂਟਰੀ। ਅੱਛਾ ਜੀ। 33% ਕੋਈ ਸਾਡੇ ਇਨਕਰੀਜ਼ ਹੋਈ ਹੈ ਐਵਰੇਜ ਜਿਹੜੀ ਹਾਊਸ ਪ੍ਰਾਈਸ ਦਾ ਪਿਛਲੇ ਸਾਲ ਘਰ 33% ਤੁਹਾਡਾ ਟੈਕਸ ਆ ਵਧਣਾ ਹੈਗਾ ਜਿਹੜਾ ਕਿ ਇਹਨਾਂ ਨੇ ਇਨਕਰੀਜ਼ ਕਰਿਆ ਇਸ ਸਾਲ ਵਾਸਤੇ। ਸਪੋਜ਼ ਤੁਸੀਂ 3000 ਡਾਲਰ ਪਿਛਲੇ ਸਾਲ ਟੈਕਸ ਦਿੱਤਾ ਹੈਗਾ। ਹੂੰ ਉਹਦਾ 2.3% ਤੁਸੀਂ ਕਰਕੇ ਵੇਖੋ ਵੀ ਤਕਰੀਬਨ 70 ਕ ਡਾਲਰ ਤੁਹਾਡਾ ਜਿਹੜਾ ਟੈਕਸ ਵਧਣਾ ਹੈਗਾ।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 ਤੇ 33 ਜੇ 33% ਵਧਿਆ ਸਿਰਫ ਤੁਹਾਡਾ ਤਾਂ ਤੁਹਾਨੂੰ ਸਿਰਫ 2.2.13% ਟੈਕਸ ਦੇ ਉੱਤੇ ਇਨਕਰੀਜ਼ ਹੋਣਾ ਕੱਲੇ ਟੈਕਸ ਅਮਾਉਂਟ ਤੇ ਸੋ 33 ਤਾਂ ਸਾਰਿਆਂ ਦਾ ਵਧੇ ਗਿਆ ਜੀ 30 ਤਾਂ ਹੋ ਗਿਆ ਨਾ 33 ਦੇ ਉੱਤੇ 2.3% ਮਤਲਬ ਤੁਸੀਂ ਸਾਰੇ ਬਰਾਬਰ ਇੱਕ ਤਕੜੀ ਕਹ ਤੁਸੀਂ ਜਿਨ੍ਹਾਂ ਦੇ 33 ਵਧੇ ਹੈਗੇ ਹੂੰ ਜੇ ਥੋੜਾ ਫਰਜ਼ ਕਰੋ 50% ਵਧ ਗਿਆ ਫਰਜ਼ ਕਰੋ ਸਾਡੇ ਆਰਸਰਟ ਦੇ ਵਿੱਚ ਠੀਕ ਜੀ ਹੋ ਗਈ ਤੁਹਾਡੀ ਪ੍ਰਾਈਸ ਆ ਜਿਹੜੀ ਸਾਫ ਦੇ ਵਿੱਚ ਹਮ ਤਾਂ ਤੁਹਾਡੇ 550 ਡਾਲਰ ਹੋਰ ਟੈਕਸ ਲੱਗਣਾ ਤੁਹਾਨੂੰ 550 ਡਾਲਰ ਸੋ ਜੇ ਜੇ ਮਤਲਬ ਜਿਹੜਾ 2.3% ਆ ਫਿਰ ਜਿਹੜਾ ਕੀਮਤਾਂ ਵਧੀਆਂ ਉਸ ਆਮਾਉਂਟ ਤੇ ਵਧਣਾ ਜੀ ਇਹ ਕਨਫਿਊਜ਼ਨ ਹੈ ਆ ਉਸ ਅਸੈਸਮੈਂਟ ਵੈਲਿਊ ਤੇ ਨਹੀਂ ਹੁੰਦਾ ਉਹ ਟੈਕਸ ਦੇ ਮੈਂ ਸਮਝ ਗਿਆ ਜੀ ਟੈਕਸ ਪਿਛਲੇ ਉਹਦੇ ਪਰਸੈਂਟੇਜ ਤੇ ਵਧਣਾ 2.5 2.13 ਇਹਨਾਂ ਪ੍ਰਪੋਜ਼ ਕਰਿਆ ਹੋਇਆ ਜਦੋਂ ਅਸੀਂ ਜਿਹੜੀ ਸਾਰੀ ਟੋਲ ਹੈ ਨੀ ਜਿਹੜੀ 50% ਵੱਧ ਰਹੀ ਹੈ ਜੀ ਉਹਦਾ ਕਿੰਨਾ ਪਰਸੈਂਟ ਵਧਣਾ ਤੇ ਪਲੱਸ ਕਿੰਨੇ ਪਰਸੈਂਟ ਹੋਣਾ ਆਪਸਪੋਰਟ ਦੇ ਵਿੱਚ ਕੋਈ 550 ਡਾਲਰ ਸੋ ਜੇ 4 ਲੱਖ ਵਾਲਾ ਘਰ ਦਾ ਹੋ ਜੇ 4 ਵਾਲਾ ਘਰ 6 ਦਾ ਹੋ ਗਿਆ ਉਹ 50% ਵੱਧ ਗਿਆ 50% ਵੱਧ ਗਿਆ ਜੀ ਉਹਦੇ ਉਹਨੂੰ 550 ਵਧਣਾ ਆਸੋਪੜਿਆ ਟਾਲ ਇੰਟੈਕਸ ਵਧਣਾ ਹੈਗਾ ਸਾਡੀ ਐਪਸ ਵਰਡ ਦੇ ਵਿੱਚ ਜੇ ਫਰਕ ਅਕੇ ਤੁਸੀਂ ਤੁਸੀਂ ਇਸ ਨੂੰ ਠੀਕ ਸੁਣ ਰਹੇ ਹੋ ਠੀਕ ਸਮਝ ਰਹੇ ਹੋ ਬਰਾਰ ਸਾਹਿਬ ਜਿਹੜਾ ਘਰ ਮਤਲਬ 20 25 ਸਾਲ ਕਿਸੇ ਨੇ ਦੂਸਰਾ ਹੈਗਾ ਜੇ ਜੇ ਮੈਨੂੰ ਕਲੀਅਰ ਕਰ ਤੁਹਾਡਾ ਘਰ 33% ਨਹੀਂ ਵਧਿਆ 20% ਵਧਿਆ ਤੁਹਾਡਾ ਟੈਕਸ ਜਿਹੜਾ ਉਹ ਘਟਣਾ ਹੈਗਾ ਪਿਛਲੇ ਸਾਲ ਨਾਲ ਓਕੇ ਦੂਸਰਾ ਤੁਹਾਨੂੰ ਜਿਹੜੀ ਬਿਲਡਿੰਗ ਕਰਿਆ ਸੀ ਅਸ ਤੋਂ ਪਹਿਲਾਂ ਵੀ ਬਿਲਡਿੰਗ ਤਾਂ ਹੁਣ ਤੁਸੀਂ ਮੇਰਾ ਘਰ ਹੈ 26 ਸਾਲ ਅੱਜ ਕਿੰਨੇ ਚ ਬਣਦਾ ਨਵਾਂ ਘਰ ਜਿਹੜਾ ਕਿੰਨੇ ਚ ਬਣਦਾ ਉਹਦੇ ਤੇ ਇਹ ਡੈਪ੍ਰੀਸੀਏਸ਼ਨ ਆਉਂਦੀ ਹੈ ਪਰਸੈਂਟੇਜ ਹਰ ਸਾਲ ਦੀ ਫਰਜ਼ ਕਰੋ ਜਿਹੜੀ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 ਦੇ ਸਰੀ ਦੇ ਵਿੱਚ ਜਿਹੜੀ ਗੱਲ ਹੈ ਜੀ ਸਰੀ ਸਿਟੀ ਨੇ ਵੀ ਇਸ ਨੂੰ ਦੱਸਣਾ ਪਰ ਤੁਸੀਂ ਐਡਜੈਕਟਲੀ ਕੈਲਕੂਲੇਟ ਕਿਵੇਂ ਹੁੰਦਾ ਤੁਹਾਡੇ ਸ਼ਹਿਰ ਚ ਕਿਵੇਂ ਹੋਇਆ ਤੁਸੀਂ ਦੱਸਿਆ ਬਰਾੜ ਸਾਹਿਬ ਥੈਂਕ ਯੂ ਇਹ ਸਾਰੀਆਂ ਮਿਊਂਸਪਲਟੀ ਜਨ ਸਾਹਿਬ ਇਸ ਤਰ੍ਹਾਂ ਹੀ ਹੁੰਦਾ ਸਿਰਫ ਇਹ ਇਹ ਜਿਹੜਾ ਮਿਲ ਰੇਟ ਆ ਨਾ ਜੇ 5 ਕਰੋੜ ਦੀ ਟੋਟਲ ਵੈਲਿਊ ਜਿਹੜੀ ਪ੍ਰਾਪਰਟੀ ਦੀ ਬਹੁਤੀ ਵਧ ਗਈ ਆ ਸਿਟੀ ਦੇ ਵਿੱਚ ਉਹਨਾਂ ਨੇ ਮਿਲ ਰੇਟ ਕਟਾ ਦੇਣਾ ਹੈ ਠੀਕ ਹੈ ਜੀ ਜਿਹੜਾ ਬਜਟ ਆ ਨਾ ਕਿੰਤ ਸੀ ਮੈਕਸਪਲ ਦੇਣਾ ਉਹਨਾਂ ਨੂੰ 10 ਮਿਲੀਅਨ ਚਾਹੀਦਾ ਸੀ ਪਿਛਲੇ ਸਾਲ ਪਰ ਕਿਉਂ ਸਾਡੀ ਮਿਊਨਿਸਪੈਲਟੀ ਮੈਂ ਰੌਂਡ ਫਿਗਰ ਐਵੇਂ ਇੱਕ ਕੱਲ ਕਰਦਾ ਤੁਹਾਡੇ ਕੋਲੇ ਸਹੀ ਹੈ ਤੇ ਉਹਨਾਂ ਨੂੰ 11 ਮਿਲੀਅਨ ਲੈਣਾ ਅੱਛਾ ਜੇ ਜੇ ਬਰਾੜ ਸਾਹਿਬ ਜੇ ਮਿਊਨਿਸਪੈਲਟੀ ਕਹੇ ਕਿ ਵੀ ਮੈਨੂੰ ਪਿਛਲੇ ਸਾਲ 10 ਚਾਹੀਦਾ ਐ ਕਿ 15 ਚਾਹੀਦਾ ਫੇਰ ਤਾਂ ਵਧੂਗਾ ਹੀ। ਹਾਂਜੀ ਉਹ ਤੁਹਾਨੂੰ ਦੱਸ ਦਿੰਦੇ ਆ ਜਿਵੇਂ ਸਾਡੇ ਕਹਿੰਦੇ ਹੈਗੇ ਵੀ ਸਾਨੂੰ 2.3% 2.1 3% 2% ਸਾਨੂੰ ਹੋਰ ਚਾਹੀਦਾ ਬਜਟ ਆ ਜਾਂ ਪਿਛਲੇ ਸਾਲ ਨਾਲੋਂ ਹੂੰ ਉਹ ਸਿਟੀ ਹਰ ਇੱਕ ਕੰਪਨਸਲਟੀ ਦੱਸਦੀ ਆ ਤੁਹਾਨੂੰ ਹੋ ਸਕਦਾ ਸਾਰੀ ਚ 3% ਹੋਵੇ ਹੋ ਹਰ ਸਿਟੀ ਨੇ ਦੱਸਿਆ ਹੁੰਦਾ ਵੀ ਸਾਡੇ ਕੋਲੇ ਪਿਛਲੇ ਸਾਲ ਦਾ ਬਜਟ ਇੰਨਾ ਸੀ ਇਸ ਲਈ ਇੰਨਾ ਚਾਹੀਦਾ ਠੀਕ ਆ ਸਰਾਜ ਯੂ ਉਸ ਹਿਸਾਬ ਨਾਲ ਮਿਲ ਰੇਟ ਆ ਜੀ ਅਡਜਸਟ ਕਰਦੇ ਹੈਗੇ ਵੀ ਤੁਹਾਡੀ ਇਹ ਪ੍ਰਾਈਸ ਦਾ ਦੁਨੀਆ ਹੋ ਗਿਆ 10 ਬਿਲੀਅਨ ਦੀ بجائے 20 ਬਿਲੀਅਨ ਕਹਿੰਦਾ ਇਹ ਬਿਲਕੁਲ ਗਲਤ ਫਹਮੀ ਹੈਗੀ ਆ ਇਹ ਮੇਰਾ ਕੋਈ ਸਿਟੀ ਨਾਲ ਲੈਣ ਦੇ ਨੂੰ ਕੋਈ ਨਹੀਂ ਮੈਂ ਕੋਈ ਮੈਂ ਸਮਝ ਗਿਆ ਜੀ ਤੁਹਾਡੀ ਗੱਲ ਠੀਕ ਥੈਂਕ ਯੂ ਜੀ ਥੈਂਕ ਯੂ ਸੋ ਮਚ ਅੱਜ ਮੈਂ ਸ਼ੁਰੂ ਦੇ ਵਿੱਚ ਅੱਜ ਮੈਂ ਪ੍ਰੋਗਰਾਮ ਯਾਦ ਆ ਮੈਂ ਦੱਸਿਆ ਹੋਣਾ ਸਿਟੀ ਮੈਨੂੰ ਇਹ ਪਤਾ ਲੱਗਿਆ ਟੋਟਲ ਅਸੈਸਟ ਵੈਲਿਊ ਅਸੀਂ ਆਪਣੇ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 ਵੈਲਿਊ ਤਾਂ अबाउट 33 ਦਾ ਬਹੁਤ ਘੱਟ ਹੈ 50% ਤੱਕ ਵਧੀਆਂ ਹੋਈਆਂ ਤੁਹਾਡੇ ਵੀ 50% ਤੱਕ ਬਹੁਤ ਕੱਲ ਲੋਕਾਂ ਨੇ ਦੱਸਿਆ ਸੋ 5 550 ਐਵਰੇਜ ਜਿਹੜੇ ਡਾਲਰ ਨੇ ਉਹ ਇੱਕ ਘਰ ਦੇ ਵੱਧ ਰਹੇ ਨੇ ਪਰ ਲੋਕਾਂ ਦਾ ਤਰਕ ਇਹ ਸੀ ਕਿ ਵੀ ਹੁਣ ਜੇ ਅਸੀਂ ਵੇਚਣਾ ਹੀ ਨਹੀਂ 25 ਸਾਲ ਅਸੀਂ ਕਾਦੇ ਲਈ ਹਰ ਸਾਲ ਅਗਲੇ ਸਾਲ ਹੋਰ ਪਰ ਸਿਟੀ ਇਹ ਕਹਿੰਦੀ ਆ ਵੀ ਸਾਨੂੰ ਬਜਟ ਚਾਹੀਦਾ ਤੁਹਾਡੇ ਉੱਪਰ ਪੈਸੇ ਖਰਚ ਔਰ ਸੋਝੇ ਤੋਂ ਲੈਣਾ ਵਪਾਰਕ ਸੁਨੇਸ਼ laljosh laljosh singh ji tusi air te ho hanji bhai hanji bhai rajesh singh ji satkar sahab aap te aap de srotte nu sat sri akal ji sat sri kal ji hanji je ਹਰਮੰਦਰ ਸਾਹਿਬ ਦਾ ਜਾਂ ਹਰਮੰਦਰ ਪਟਨਾ ਸਾਹਿਬ ਦਾ ਇਸ ਤਰ੍ਹਾਂ ਜੋੜ ਦਿੱਤਾ ਕਿ ਮੈਂ ਉਹਦੇ ਤੇ ਆਪਜੀ ਦੇ ਜੇ ਆਪੀ ਆ ਗਿਆ ਹੋਵੇ ਗੱਲਬਾਤ ਜਿਹੜੀ ਗੁਰਬਾਣੀ ਦੇ ਵਿੱਚ ਭਾਈ ਮਰਜੀਤ ਸਿੰਘ ਜੀ ਹੁਣ ਇੱਕ ਆ ਤੋਪਾਂ ਮੈਂ ਭਾਈ ਸਾਹਿਬ ਦੇ ਵਿਚਾਰ ਵਿੱਚ ਸੌਂ ਰਿਹਾ ਕਹਿੰਦਾ ਅੰਮ੍ਰਿਤਸਰ ਦੇ ਜਿਹੜੇ ਆ ਉਹ ਅੰਮ੍ਰਿਤਸਰ ਛੱਗਾ ਦਾ ਘਰ ਕੋਈ ਏਦਾਂ ਦਾ ਕਰਕੇ ਉਹਨੂੰ YouTube ਤੇ ਪਾਇਆ ਕਿ ਇਹਦੇ ਵਿੱਚ ਜਿਹੜਾ ਲਾਹੌਰ ਸਹਿਰ ਅੰਮ੍ਰਿਤਸਰ ਸਫਦੀ ਦਾ ਘਰ ਇਹਨੂੰ ਅਸੀਂ ਲੈ ਲਿਆ ਅੰਮ੍ਰਿਤਸਰ ਸ਼ਹਿਰ ਦੇ ਨਾਲ ਲਾਤਾ ਵੀ ਉੱਥੇ ਲਿਖਿਆ ਵੀ ਮੇਰਦਾ ਵੀ ਅੰਮ੍ਰਿਤਸਰ ਸੈਕਟਰੀ ਦੇ ਘਰ ਇਹਦੇ ਵਿੱਚ ਅੰਮ੍ਰਿਤਸਰ ਦਾ ਸ਼ਹਿਰ ਦਾ ਨਾਮ ਕੋਈ ਨਹੀਂ ਜਿੱਥੇ ਕਹਿੰਦੇ ਅੰਮ੍ਰਿਤ ਨਾਮ ਰੂਪੀ ਦਾ ਉਹ ਸ਼ਿਫਤ ਬਣ ਜਾਂਦਾ ਕਿ ਲਾਹੌਰ ਸ਼ਹਿਰ ਇੱਕ ਇੱਕ ਗੁਰਨਾਨਕ ਸਾਹਿਬ ਦੀ ਪੰਗਤੀ ਹੈ ਵੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਸਵਾ ਪਹਿਰ ਰਹਿੰਦੇ ਆ ਲਾਹੌਰ ਦੇ ਵਿੱਚ ਬੜੇ ਹੀ ਕੂਕਰਮ ਹੁੰਦੇ ਹੁੰਦੇ ਸੀ ਤੇ ਉਹ ਜਦੋਂ ਆਪਣੇ ਗੁਰੂ ਰਾਮਦਾਸ ਜੀ ਦਾ ਉੱਥੇ ਪੁਰਬ ਹੋਇਆ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 ਤੇ ਜਿਹੜੀਆਂ ਗੁਰਬਾਣੀ ਦੇ ਆਧਾਰ ਦੇ ਉੱਤੇ ਵੀ ਜਿਸ ਉਹ ਹਰ ਵਾ ਜਿੱਥੇ ਪ੍ਰਮਾਤਮਾ ਦਾ ਨਾਮ ਜਿੱਥੇ ਪ੍ਰਮਾਤਮਾ ਦੀ ਬੰਦਗੀ ਜਿੱਥੇ ਪ੍ਰਮਾਤਮਾ ਦੀ ਭਗਤੀ ਹੁੰਦੀ ਜਿੱਥੇ ਨਾਮ ਲਿਆ ਜਾਂਦਾ ਉਹੋ ਹੀ ਵਾ ਉਹ ਸਾਡਾ ਸਰੀਰ ਵੀ ਪਰ ਸਕਦਾ ਜਿਸ ਸਾਧਾਰਨ ਤੋਂ ਪਈ ਹਰਿਆਵਲੀ ਜਿੱਥੇ ਤੁਸੀਂ ਬਹਿ ਕੇ ਕਰਦੇ ਉਹ ਵੀ ਹੋ ਸਕਦਾ ਇਹ ਨਹੀਂ ਕਿ ਕਿਤੇ ਇੱਕ ਹਸਤਾਨ ਨੂੰ ਕਿਰਿੰਦਰ ਕਹੋ ਜਿੱਦਾਂ ਨਾਨਕ ਸਰ ਭਗਤੀ ਦਾ ਘਰ ਉਹ ਨਾਨਕ ਸਰ ਇੱਟਾਂ ਦਾ ਬਣਿਆ ਉਹ ਭਗਤੀ ਦਾ ਘਰ ਥੋੜੋ ਆ ਨਾਰ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 ਹਾਂਜੀ ਕਹਾਣੀ ਬਹੁਤ ਵਧੀਆ ਸੀ ਤੇ ਜਦੋਂ ਸਕੂਲੇ ਪੜਦੇ ਹੁੰਦੇ ਕਹਾਣੀ ਤੋਂ ਬਾਅਦ ਹਨਾ ਪਈ ਉਹਦਾ ਮੋਰਲ ਜਾਂ ਸਿੱਟਾ ਕਰਦੇ ਹੁੰਦੇ ਸੀ ਹਨਾ ਪੂਰੀ ਕਹਾਣੀ ਦਾ ਹਾਂਜੀ ਡਾਲ ਤਾਂ ਹੋਇਆ ਤੁਸੀਂ ਠੀਕ ਕਰਦੇ ਹੋ ਕਿਤੇ ਹਨਾ ਤੇ ਸਿੱਟਾ ਇਹ ਅੱਜ ਟੌਪਿਕ ਚੱਲ ਰਿਹਾ ਉਹਦੇ ਵਾਰਈ ਹੈ ਨਾ ਪਿੰਡ ਦਾ ਸਰਪੰਚ ਸੀਆ ਉਹ ਪੰਜਾਬ ਦਾ ਫਸਰੇ ਕੌਮ ਆ